ਤੇ ਜੋ ਪਾਈਏ ਆਤਾਪਨਾਥ ਤਾਪਨਾ अनेक ਤਨ ਕਾਇਲ ਸਹਿਤ ਹੈ ਉਹ ਜਿਹੜੇ ਤਪ ਕਰਦੇ ਨੇ ਜਪ ਕਰਦੇ ਨੇ ਪਹਿਲਾਂ ਤਾਂ ਥੱਲੇ ਪਿੱਛੇ ਪਿੱਛੇ ਜਿਹੜੇ ਥੱਲੇ ਦੀ ਕੈਟਾਗਰੀ ਦੇ ਨੇ ਉਹ ਜਿਹੜੇ ਵਾਕਈ ਤਰਪ ਕਰਦੇ ਨੇ ਸੀਰੀਅਸਲੀ ਜਿਹਨਾਂ ਨੂੰ ਲੋਕ ਤਰਪਾਉਣ ਦੀ ਮੰਦੇ ਵੀ ਨੇ ਉਹਨਾਂ ਦੀ ਗੱਲ ਸ਼ੁਰੂ ਕਰਦੇ ਕਨ ਜੇ ਤਾਪ ਸਹੇਤੇ ਤਪ ਕਰੇ ਤੇ ਸ਼ਿਵ ਜੀ ਤਪ ਕਰਦੈ। ਸਰੀਰ ਨੂੰ ਦੁੱਖ ਦਿੱਤੇ, ਤਾਪ ਨਾਲ ਸਰੀਰ ਨੂੰ ਦੁੱਖ ਦਿੱਤੇ। ਕੈਸੇ ਦੇਣਾ ਸਰੀਰ ਨੂੰ? ਜੇ ਅਤਾਪ ਨਾਲ ਪਾ ਲਈਏ, ਅਤਾਪ ਹੈ ਉਹ ਨੂੰ ਕੋਈ ਕਸ਼ਟ ਹੈ ਨਹੀਂ। ਫੋੜਾ ਅਤਾਪ ਨੂੰ ਤੁਸੀਂ ਤਪਦੇ ਹੋ, ਤਪਦੇ ਗਾਤੇ ਹੋ। ਜੇ ਉਹ ਅਤਾਪ ਆ ਅਤਾਪੇ ਬੜਨਾ ਪੂਰ ਉਹ ਤਾਂ 3 ਮੇ ਦਾਫਲਵਾਣਾ ਹਰੇ ਤੁਸੀਂ ਦਾਪ ਚੜਾਉਦੇ ਹੋ ਸਮ ਇਹਦੇ ਨਾਲ ਤੁਸੀਂ ਉਹਦੇ ਨਾਲ ਨੇੜੇ ਨਹੀਂ ਜਾ ਸਕੋ ਤੇ ਦੂਰੇ ਰਹੋ ਜੈਸਾ ਹੁੰਦਾ ਹਰ ਜੈਸਾ ਹਰ ਜਾਨੂ ਬੜਨਾ ਪੈਂਦਾ ਜੇ ਉਹਦੇ ਨਾਲ ਉਹਦੇ ਵਰਗਾ ਹੋਣਾ ਹੋਵੇ ਇਸ ਕਰਕੇ ਤਾਪ ਤਪਣ ਦੀ ਲੋੜ ਈ ਹੈ ਕਿਉਂਕਿ ਅਤਾਪ ਨੂੰ ਬੋੜ ਸਗੋਂ ਜਿਹੜੇ ਦੁੱਖ ਤਕਲੀਫਾਂ ਨੇ ਇਹਨਾਂ ਨੂੰ ਭੁੱਲਣ ਦੀ ਲੋੜ ਹੈ ਦੁੱਖ ਸੰਸਾਰੀਆਂ ਨੂੰ ਸਭ ਕਰਕੇ ਜਾਣ ਦੀ ਲੋੜ ਹੈ ਸਰੀਰ ਨੂੰ ਦੁੱਖ ਦੇਣ ਦੀ ਲੋੜ ਨਹੀਂ ਜੇ ਕੁਦਰਤੀ ਤੌਰ ਤੇ ਦੁੱਖ ਜਿਹੜੇ ਆਉਂਦੇ ਨੇ ਉਹ ਲਈ ਨੇ ਹਿੱਸੇ ਬਣੇ ਜੋ ਚਾਹਗੇ ਰਹਾਂਗੇ ਦੁੱਖ ਤਕਲੀਫਾਂ ਹੁੰਦੀਆਂ ਜਾਂਦੀਆਂ ਰਹਿਣਗੀਆਂ ਬਹੁਤ ਸਭ ਬਦਲਦੇ ਰਹਿਣਗੇ ਉਹਨਾਂ ਤੋਂ ਤਕਲੀਫਾਂ ਨੂੰ ਪਾਣਾ ਬੰਦ ਕੇ ਬਰਦਾਸ਼ਤ ਕਰ ਲੋ ਬਸ ਅਤਾਪ ਹੋ ਗਿਆ ਉਹ ਦੁੱਖ ਤਕਲੀਫਾਂ ਕਿਉਂ ਹੋ ਨੇ ਸਵਾਲ ਇਹ ਉਹ ਟੈਸਟ ਹੈ ਕਿ ਦੁੱਖ ਤਕਲੀਫਾਂ ਜੇ ਅਤਾਪ ਰਹਿੰਦੇ ਨੇ ਇਹ ਬੇਰੇ ਵਰਗੇ ਰਹਿੰਦੇ ਨੇ ਇਹਦਾ ਅਤਾਪ ਰਹੇਗੇ ਦੁੱਖ ਤਕਲੀਫਾਂ ਦੇ ਵਿੱਚ ਅਤਾਪ ਰਹੇਗਾ ਫਿਰ ਤਾਂ ਅਤਾਪ ਨਾ ਗਿਆ ਬੜਾ ਅਤਾਪ ਨਾ ਥਣਾਉ ਤਾ ਨਾ ਅਤਾਪ ਨਾਥ ਵਰਗਾ ਇਸ ਵਾਰ ਖੈਨੇ ਆਪਣਾ ਅਡੋਲ ਸਭਾਤ ਆਪਣਾ ਦਾ ਬਸਾ ਅਡੋਲ ਦੁੱਖ ਤਕਲੀਫਾਂ ਦੇ ਵਿੱਚ ਅਡੋਲ ਰਹਾ ਫਿਰ ਤਾਂ ਠੀਕ ਪਾਸ ਹੋ ਜੇ ਡੋਲ ਗਿਆ ਫਿਰ ਨਹੀਂ ਪਾਸ ਹੁੰਦਾ ਤਾਂਪ ਸੈਂਟ ਹੋਰ ਤਾਪਤਾ ਜਿਹੜਾ ਉਹ ਤਾਬ ਦੇ ਰਿਹਾ ਨਾ ਜਿੱਦੀ ਉਹ ਕਸ਼ ਦੇ ਰਿਹਾ ਕੁਦਰਤ ਵੱਲੋਂ ਦੇ ਰਿਹਾ ਉਹ ਹੀ ਉਹ ਤੇ ਨਵੇਂ ਕਸ਼ ਦੀ ਲੋੜ ਨਹੀਂ ਨਵੇਂ ਕਸ਼ ਆਪਣੇ ਆਪ ਨੂੰ ਦੇ ਕੇ ਇਹ ਗੱਲ ਕਰਦੀ ਇਹ ਮਨ ਮੁਕਤ ਉਹ ਜੋ ਦੇ ਰਿਹਾ ਪਰਚੇ 'ਚ ਟੈਸਟ ਉਸੇ ਦਾ ਦੇਣਾ ਤੁਸੀਂ ਜੋ ਪਰਚੇ 'ਚ ਲਿਖਿਆ ਹੋਇਆ ਆਪਣੇ ਕੋਲੋਂ ਫालतू ਨਹੀਂ ਲਹਿਣਾ ਬਿਬਲਵਾ ਵੀ ਆਉਂਦਾ ਆ ਵੀ ਆਉਂਦਾ ਆ ਵੀ ਆਉਂਦਾ ਕੋ ਦਾ ਵੀ ਕੋਈ ਬਰਦਾ ਤਾਪਨਾ ਜਿਹੜੇ ਕਾਇਲ ਹੋ ਜਾਂਦੇ ਨੇ ਆਦਮੀ ਕਿਸੇ ਚੀਜ਼ ਵਜ੍ਹਾ ਨਾਲ ਚਾਹ ਐਕਸੀਡੈਂਟ ਚ ਕਾਇਲ ਹੋ ਜਾਏ ਚਾਹ ਜੰਗ ਚ ਕਾਇਲ ਹੋ ਜਾਏ ਸਮਝਦੇ ਉਹ ਵੀ ਬਥੇਰੇ ਦੁੱਖ ਦੇ ਸਹੇਲ ਹੈ ਦੁਨਿਆ ਖਤ ਤਕਲੀਫ ਸਹੇਤੇ ਹੀ ਨੇ ਲੋਕ ਬਿਮਾਰ ਵੀ ਹੋ ਜਾਂਦੇ ਨੇ ਆਪਰੇਸ਼ਨ ਵੀ ਕਰਾਉਣੇ ਪੈ ਜਾਂਦੇ ਨੇ ਦੁੱਖ ਬਰਦਾਸ਼ਤ ਕਰਦੇ ਹੀ ਨਾ ਹੋ ਸਾਰੇ ਤਾਂ ਫਿਰ ਉਹਨਾਂ ਨੂੰ ਵੀ ਪਰਮੇਸ਼ਰ ਦੇ ਵਰ ਜਿਵੇਂ ਭਗਤੀ ਹੋ ਜੇ ਤਾਂ ਤਾਂ ਇਹ ਸਮਝਾ ਲਵੇ ਇਹ ਭਗਤੀ ਹੈ ਨਵੀਂ ਜਿਹੜਾ ਐਕਸੀਡੈਂਟ ਹੋ ਗਿਆ ਗਈ ਵਧੀਆ ਇਹ ਨਹੀਂ ਸਿੱਖੇਗਾ ਇਹ ਰੱਦ ਕਰਤਾ ਇਹ ਕਹਿ ਕੇ ਕਾ ਇਲਾਜ ਨੇ ਨੇ ਸਾਰੇ ਦੁੱਖ ਤਾਂ ਉਹ ਵੀ ਸਲਕ ਤੇ ਤੇ ਤੁਹਾਡਾ ਦੁੱਖ ਸਹਣਾ ਕੋਈ ਭਗਤੀ ਵਾਲੀ ਗੱਲ ਨਹੀਂ ਇਹ ਜਾਪ ਕੇ ਕੀਤੇ ਜੋਪ ਹੈ ਪਾਇਤ ਅਜਾਪ ਦੇਵ ਜਾਪ ਕਰਦੇ ਆ ਫਿਰ ਦੁਏ ਤੁਸੀਂ ਜਿਵੇਂ ਜਪਦੇ ਨੇ ਮਾਲਾ ਫੜ ਕੇ ਉਹ ਅਜਾਪ ਹੈ ਜਪੜਨ ਦੇ ਭਰੇ ਜਪੜਾ ਅਸਲ ਵਿੱਚ ਉਹ ਨੂੰ ਸਮਝੇ ਨਹੀਂ ਸਕਦੇ ਸਮਝਣ ਦੇ ਵੀ ਭਰੇ ਅਜਾਪ ਹੈ ਉਹ ਇਸ ਕਰਕੇ ਅਜਬਾ ਜਾਪ ਹੋਦਾ ਐ ਜਾ ਜਾ ਫਰੀ ਜਾ ਇਹ ਦਰਸ਼ਨ ਸੁਣੂ ਮੈਂ ਕਹਿਆ ਸੀ ਵੀ ਤੂੰ ਤਾਂ ਜਫਾ ਜਾਪ ਹੈ ਤੂੰ ਜਦ ਕਿਹੜਾ ਕਰਦਾ ਮਾਲਾ ਨਾਲ ਕਾਹੇ ਬਥੇਨਾ ਆਇਆ ਸੀ ਉਹ ਨੂੰ ਉਹ ਜਫਾ ਜਾਪ ਕਿਥੋਂ ਤਾਂ ਕਹਿੰਦੇ ਹੋ ਤੁਸੀਂ ਅਜਾ ਬਾਜਾ ਜਾਪ ਹੈ ਤੂੰ ਨਿਕੜਾ ਭੜੀ ਫਿਰਦਾ ਥੋਤੀ ਟਿਕਾ ਕੇ ਥਪਾ ਲਿਆ ਇਥੇ ਮਾਲਾ ਆਈਏ ਥੋਤੀ ਟਿਕਾ ਨਾਲ ਉਹ ਕਿਥੇ ਛੱਡ ਆਇਆ ਬਦੋਤੀ ਟਿਕਾ ਨਾਲ ਸ਼ਾਇਦ ਸੀ ਮਾਲਾ ਦੇ ਇੱਥੇ ਤੋਤੀ ਟਿੱਕਾ ਨਾਲ ਵਾਲਾ ਹੈ ਤੋਤੀ ਟਿੱਕਾ ਨਾਲ ਜਾਈਦਾ ਵਾਲਾ ਤੇ ਤੋਤੀ ਟਿੱਕਾ ਵਾਲਾ ਬਾਣਾ ਨਾਲ ਇਕੱਠੇ ਨੇ ਤੈਨੂੰ ਤੋਤੀ ਟਿੱਕਾ ਝੜਦਾ ਮਾੜਾ ਲੈ ਲਈ ਇਹ ਨਾ ਰਹੇ ਸਖ ਨਾ ਰਹੇ ਪਰਲਤ ਕੁਝ ਬਣਾ ਰਹੇ ਇਹ ਹੋ ਗਏ ਮਨੁੱਖ ਸਾਰੇ ਕੋਕਾ ਬਾਣਾ ਹੈ ਤੋਤੀ ਟਿੱਕਾ ਵਾਲਾ ਬਾਣਾ ਅਰ ਉਹਨਾਂ ਵਰ ਕੀਤਾ ਲੋਗਾਂ ਨੂੰ ਖਿਲਾਉਣ ਲਈ ਜਾਣਾ ਖਿਲਾਉਣਾ ਨਹੀਂ ਸਮਝਿਆ ਫਿਰ ਆਪ ਦੂਰ ਹੋ ਗਏ ਬੂਰ ਤੇਰਾਗੇ ਖੇਲਦੇ ਰਹਿੰਦੇ ਰਹਿੰਦੇ ਮਨ ਪਰ ਚਾਵਾ ਨਿਆਣੇ ਖੇਲਦੇ ਨੇ ਇਹ ਖੇਲਦੇ ਸੀ ਪੂਦਨਾ ਸਦੀਪ ਤੂੰ ਹੀ ਹੈ ਪੂਦਨਾ ਉਹਦਾ ਇੱਕ ਪੰਛੀ ਛੋਟਾ ਜਿਹਾ ਉਹਦੀ ਆਵਾਜ਼ ਇਹ ਜੀ ਹੈ ਜਿਵੇਂ ਕੁੱਗੀ ਬੋਲਦੀ ਹੈ ਨਾ ਉਹ ਐਂ ਲੱਗਦੀ ਤੂੰ ਦਾਦਾ ਤੂੰ ਦਾਦਾ ਤੂੰ ਐਂ ਕਹਦੀ ਹੈ पर ਕਹਿ ਦਿੱਤਾ तो ਬੋਲੀ ਉਹਦੀ ਹੈ ਜੀ ਐਵੇਂ ਕਪੂਦਨਾ ਹੁੰਦਾ ਜਾਨਵਰ ਉਹ ਜੇ ਬੋਲਦਾ ਤੁਸੀਂ ਤੁਸੀਂ ਦੀ ਆਵਾਜ਼ ਆਉਂਦੀ ਹੈ ਤੁਸੀਂ ਤੁਸੀਂ ਕਹਿੰਦਾ ਪੂਦਨਾ ਫਿਰ ਤੁਸੀਂ ਤੁਸੀਂ ਕਰਦਾ ਹਰ ਹਰਡ ਨੂੰ ਵੀ ਇਹੀ ਕਿਹਾ ਹੈ ਹਰਡ ਲੱਕੜਦੇ ਹੁੰਦੇ ਸੀ ਅੱਜ ਉਹ ਹਾਰੇ ਹਟ ਵੀ ਤੂੰ ਤੂੰ ਕਰੇ ਬੋਲੇ ਭਲੀ ਬਾਣ ਇਸ ਕਰਕੇ ਇਹਨਾਂ ਲੋਕਾਂ ਨੂੰ ਉਹਨਾਂ ਚੀਜ਼ਾਂ ਦੇ ਬਾਰੇ ਸਮਝਿਆ ਹੋਇਆ ਜਿਹੜੇ ਇਦਾਂ ਕਰਦੇ ਨੇ ਵਿਸ਼ਾ ਸੀ ਗਿਆਨ ਦਾ ਲੈ ਲੈ ਅਗਿਆਨਤਾ ਨਾਲ ਗਿਆਨ ਦੇ ਵਿਸ਼ੇ ਨੂੰ ਅਗਿਆਨਤਾ ਨਾਲ ਹੱਲ ਕਰਨਾ ਚਾਹੁੰਦੇ ਨੇ ਗਿਆਨ ਦੇ ਵਿਸ਼ੇ ਨੂੰ ਅਗਿਆਨਤਾ ਨਾਲ ਹੱਲ ਕਰਨਾ ਚਾਹੁੰਦੇ ਨੇ ਕਿਵੇਂ ਹੱਲ ਹੋ ਜੂਗਾ ਅਗਿਆਨਤਾ ਬੜਾ ਫੇੜ ਗਿਆਨਤਾ ਰਟਣ ਯੋਗ ਤਪ ਕਰਨਾ ਅਗਿਆਨਤਾ ਸਭ ਅਗਿਆਨਤਾ ਉਹ ਉਹ ਤੇ ਆ ਰੰਗਾਂ ਕੇ ਪੀੜ ਪਿੱਛੇ ਸਭ ਗਿਆਨ ਤੋਂ ਬਿਨਾਂ ਗਿਆਨਹੀਨ ਅਗਿਆਨ ਪੂਜਾ ਇਹ ਸਭ ਕੁਝ ਅਗਿਆਨਤਾ ਵਿੱਚ ਕਰ ਰਹੇ ਨੇ ਨਭ ਕੇ ਉਡੇ ਤੇ ਜੋ ਪੈ ਪੈ ਜੇ ਆਕਾਸ਼ ਚੜਨ ਦੀ ਪ੍ਰਾਪਤੀ ਹੋ ਜਾਂਦੀ ਹੋਵੇ ਤਾਂ ਪੰਛੀ ਨੇ ਦੇ ਵਿੱਚ ਪੰਛੀ ਡੋਲਦੇ ਹੀ ਫਿਰਦੇ ਨੇ ਇਹ ਜਿਹੇ ਪੰਛੀ ਨਹੀਂ ਜਿਹੜੇ ਬਿਸ਼ਾ ਆਕਾਸ਼ ਚ ਉੱਡਦੇ ਰਹਿੰਦੇ ਬਹੁਤ ਚਿਰ ਤਾਂ ਇਹਨਾਂ ਦੀ ਪਹਿਲਾਂ ਮੁਕਤੀ ਹੋਣੀ ਚਾਹੀਦੀ ਆਦਮੀ ਨੂੰ ਇਹ ਵੀ ਰੱਦ ਕਰਦੀ ਇਹ ਸਭ ਉਹ ਅਧਿਆਨਤਾ ਦੀ ਪੂਜਨ ਆਗ ਆਗਮੈ ਜਰੇ ਤੇ ਗਤ ਰਾਡ ਕੀ ਪਰਤ ਕਰ ਪਤਾਲ ਕੇ ਵਾਸੀ ਜੂ ਭੁਜੰਗ ਨਾਲ ਤਰਤ ਹੈ ਉਹ ਕਹਿੰਦਾ ਔਰਤ ਵਿਧਵਾ ਹੋ ਜਵੇ ਵਿਆਹ ਹੀ ਉਹਦਾ ਹੋਣਾ ਚਾਹੀਦਾ ਤਾਂ ਕਿ ਉਹ ਬਯੋਗ ਦੇ ਵਿੱਚ ਰਹੇ ਉਹਦਾ ਤਪ ਹੈ ਕਹਿੰਦੇ ਜੇ ਇੱਕ ਔਰਤ ਵਿਧਵਾ ਹੋ ਜਵੇ ਉਹਨੂੰ ਇਦਾਂ ਹੀ ਤੁਸੀਂ ਸਾਲਣਾ ਬਿਰਾ ਦੀ ਅੱਗ ਦੇ ਵਿੱਚ ਉਹਦੇ ਚੱਤੇ ਕੀ ਤਾਂ ਸੱਪ ਜਿਹੜੇ 6-6 ਮਹੀਨੇ ਪਏ ਰਹਿੰਦੇ ਨੇ ਉਹਦੇ ਵਿੱਚ 33 ਚ ਭੁੱਖੇ ਉਹਨਾਂ ਦੀ ਗਤੀ ਪਹਿਲਾਂ ਹੋਣੀ ਚਾਹੀਦੀ ਇਹ ਗੱਲ ਗਲਤ ਹੈ ਵੀ ਉਹਨੂੰ ਕੋਈ ਪ੍ਰਾਪਤੀ ਹੁੰਦੀ ਹੈ ਉਹ ਜਰਾ ਕੁਝ ਵੀ ਪ੍ਰਾਪਤੀ ਨਹੀਂ ਹੁੰਦੀ ਹਾਂ ਤੁਸੀਂ ਧੱਕਾ ਕੀਤਾ ਹੈ ਕਰਦੇ ਹੋ ਉਵੇਂ ਮਜਬੂਰੀ ਨੂੰ ਪਿਆ ਸਭ ਡਰਦਾ ਵੀ ਬਾਹਰ ਆਊਗਾ ਕੋਈ ਮਾਰ ਦੂਗਾ ਸੱਪਨੇ ਵੀ ਮਜਬੂਰੀ ਆ ਥੱਲੇ ਪਿਆ ਤੇ ਉਹ ਵੀ ਮਜਬੂਰੀ ਹੈ ਥੱਲੇ ਜ਼ਬੀਰ ਹੈ ਜ਼ਬੀਰ ਤੇ ਗਰਮੀ ਚ ਪਿਆ ਭੁੱਖ ਭੁੱਖ ਖਾ ਰਹੀ ਆ ਉਹਨੂੰ ਭੁੱਖ ਸਭ ਤੇ ਬਹੁਤ ਹੁੰਦੀ ਹੈ ਭੁੱਖ ਬਹੁਤ ਹੁੰਦੀ ਹੈ ਲੇਕਰ ਮਜਬੂਰੀ ਹੈ ਥੱਲੇ ਸਾਲ ਦੇ ਮਹੀਨੇ ਬਾਹਰ ਨਿਕਲ ਨਹੀਂ ਸਕਦਾ ਕੋਊ ਪਇਓ ਮੁੰਡੀਆਂ ਸੰਿਆਸੀ ਕੋਊ ਜੋਗੀ ਪਇਓ ਉਹ ਪਇਓ ਮੁੰਡਿਆ ਕੋਈ ਮੁੰਡਿਆ ਹੋ ਗਿਆ ਸਿਆਸੀ ਜੋਗੀ ਪਇਓ ਕੋਈ ਜੋਗੀ ਹੋ ਗਿਆ ਜੋਗਧਾਨ ਕਰ ਲੈ ਉਹਨੇ ਜਟਾਂ ਰਖਾ ਦੂਏ ਜਿਹੜੇ ਹੁੰਦੇ ਨੇ ਸਿਆਸੀ ਐ ਕੋ ਦੂਏ ਇਹਨਾਂ ਦੇ ਹੁੰਦੇ ਨੇ ਆਪਣੇ ਬੋਧੀਆਂ ਦੇ ਉਹ ਤਾਂ ਜਿਹੜਾ ਥੱਲੇ ਵਾਲ ਕੁੱਟ ਦਿੰਦੇ ਨੇ ਕੋਈ ਸਿਰ ਬਣਾ ਲੈਂਦਾ ਕੋਈ ਲੰਬੀਆਂ ਜਟਾਂ ਕਰਾ ਲੈਂਦਾ ਜੋਗੀ ਪਇਓ ਉਹ ਬ੍ਰਹਮਚਾਰੀ ਕੋ ਉ ਜੋਤੀ ਜਤੀ ਅਨੁਮਾਨਵ ਕੋ ਕੋਈ ਬ੍ਰਹਮਚਾਰੀ ਜਤੀ ਚ ਫਰਕ ਹੈ ਬ੍ਰਹਮਚਾਰੀ ਕਿਸੇ ਖਾਸ ਉਮਰ ਤੱਕ ਉਦੇਸ਼ੀਅਕ ਜੇ 25 ਸਾਲ ਤੱਕ ਬ੍ਰਹਮਚਾਰੀ ਆਸ਼ਰਮ 25 ਸਾਲ ਤੇ ਬਾਅਦ ਕ੍ਰਿਸ਼ਤ ਆਸ਼ਰਮ ਉਹ ਕਿਸੇ ਖਾਸ ਉਮਰ ਤੱਕ ਨਹੀਂ ਜਤੀ ਜਿਹੜਾ ਹੈਗਾ ساری ਜ਼ਿੰਦਗੀ ਵਾਸਤੇ ਦੋ ਕੈਟਗਰੀ ਉਹਨਾਂ ਦੇ ਨਾਮ ਜੇ ਤੇ ਰੁਮਚਾਰੀ ਦੇ ਨਾਅ ਅੱਡ ਅੱਡ ਤਾਂ ਹੀ ਦੇ ਜੇ ਤੇ ਜ਼ਿੰਦਗੀ ਵਾਸਤੇ ਰੁਮਚਾਰੀ ਕਿਸੇ ਖਾਸ ਹੱਦੀ ਵਾਸਤੇ ਤਾਂ ਹੀ ਵਾਸਤੇ ਟਾਈਮ ਲੀ ਗਏ ਹੂੰ ਹਿੰਦੂ ਤੁਰਕ ਕੋ ਰਾਫਜੀ ਇਮਾਮ ਸਾਫੀ ਮਾਨਸਕੀ ਜਾਤ ਸਭੇ ਇੱਕ ਹੈ ਪਹਿਚਾਣ ਹਿੰਦੂ ਹੈ ਕੋਈ ਤੁਰਕ ਹੈ ਤੁਰਕ ਮੁਸਲਮਾਨ ਹੈ ਰਾਫਸੀ ਹੈ ਰਾਫ ਜੀ ਰਾ ਇਹ ਇਮਾਮ ਸਾਫੀ ਸਾਫੀ ਸਾਫੀ ਸੁੰਨੀ ਇਹਨਾਂ ਨੇ ਕਿਸਿਆ ਮੁਸਲਮਾਨ ਨੇ ਇੱਕ ਸੁੰਨੀ ਦੇ ਸਾਫੀ ਸ਼ੀਆ ਨੂੰ ਕਹਿੰਦੇ ਨੇ ਇਮਾਮ ਤੋਂ ਹਾਂ ਵਿਚਰਦੇ ਨੇ ਇੱਕ ਸੁੰਨੀ ਆ ਇੱਕ ਸ਼ੀਆ ਮੁਸਲਮਾਨ ਹੈ ਹਿੰਦੂ ਤੁਰਕ ਕੋ ਰਾਫ ਜੀ ਇਮਾਮ ਸਾਫੀ ਰਾਫ ਜੀ ਵਾਹ ਰਾਫ ਜੀ ਮਤਲਬ ਹੈਗਾ ਕੋਈ ਉਹ ਤਾਂ ਹੈਗਾ ਸੁੰਨੀਆਂ ਦਾ ਸਾਫੀ ਜਿਹੜਾ ਹੈਗਾ ਉਹ ਜਿਹੜੇ ਸ਼ੀਆ ਮੁਸਲਮਾਨ ਨੇ ਉਹਨਾਂ ਦਾ ਮਾਣੋ ਉਹ ਦੋ ਉਹ ਵੀ ਦੋ ਸਭ ਦੇ ਤਨੇ ਆਪਣੇ ਵਾਸਤੇ ਡੱਡ। ਅੱਖਰੇ ਸਮਝਦੇ ਰਹੋ ਇੱਕ ਦੂਏ ਨੂੰ ਚਾਹੇ ਦੋਏ ਮੁਸਲਮਾਨ ਦੀ ਜਾਤ ਤੇ ਕੋਈ ਪਛਾਣ ਨਹੀਂ ਇੱਕੋ ਵਨ ਚੱਲਣੀ ਚਾਹੀਦੀ। ਦੋਏ ਕੋਈ ਸਾਡੇ ਵਾਸਤੇ ਐਨੀ ਪਰਮੈਸ਼ਰ ਦੀ ਨਗਾਇਜ਼ ਦੇ ਦਰਵਾਜ਼ੇ ਤੋਂ ਸਾਰੇ ਕੋਈ ਚਾਹੇ ਮੁਸਲਮਾਨ ਆ ਚਾਹੇ ਹਿੰਦੂ ਆ ਚਾਹੇ ਇਸਾਈ ਹੈ। ਚਾਹੇ ਰਾਫੀ ਹੈ। ਜੈ ਸੁੰਨੀਆਂ ਜੈ ਸਹੀਆ ਮੁਸਲਮਾਨ ਇੱਕੋ ਹੀ ਨੇ ਕੋਈ ਫਰਕ ਨਹੀਂ ਹੈ ਦਰਗਾਹ ਕੋਈ ਫਰਕ ਨਹੀਂ ਹੈ ਇੱਥੇ ਜਿਹੜੇ ਫਰਕ ਅਸੀਂ ਸਮਝਦੇ ਆ ਪਏ ਅਗਿਆਨਤਾ ਸਾਡਾ ਫਰਕ ਸਮਝਣਾ ਅਗਿਆਨਤਾ ਅਗਿਆਨਤਾ ਦੇ ਵਿੱਚ ਨਫ਼ਰਤ ਵੀ ਹੈ ਨਫ਼ਰਤ ਵੀ ਅਗਿਆਨਤਾ ਕਰ ਕਹੀਏ ਜਿਹੜੇ ਫਰਕ ਸਮਝਦੇ ਉੱਥੇ ਨਫ਼ਰਤ ਆ ਜਾਂਦੀ ਹੈ ਨਫ਼ਰਤ ਅਗਿਆਨਤਾ ਹੂੰ ਕਰਤਾ ਕਰੀਮ ਸੋਈ ਰਾਜ਼ਕ ਰਹੀਮ ਹੋਈ ਕਰਤਾ ਜਿਹਨੂੰ ਅਸੀਂ ਕਹਿੰਨੇ ਆ ਕਰੀਮ ਮੁਸਲਮਾਨ ਕਹਿੰਦੇ ਨੇ ਇੱਕੋ ਹੀ ਐ ਅਸੀਂ ਕਰਤਾ ਕਹਿੰਨਾ ਉਹ ਕਰੀਮ ਕਹਿੰਦੇ ਨੇ ਇੱਕੋ ਹੀ ਐ ਰਾਜ਼ਕ ਰਹੀਮ ਹੋਈ ਰਾਜ਼ਕ ਰੋਜੀ ਦੇਣ ਵਾਲਾ ਹੈ ਰਹੀਮ ਰਹਿਮ ਕਰਨ ਵਾਲਾ ਉਸੇ ਦੇ ਇੱਕਦੇ ਹੀ ਨਾਮ ਵਿਚਾਰੇ ਚਾਰੇ ਗੱਲਾਂ ਚਾਰੇ ਨਾਮ ਇੱਕਦੇ ਹੀ ਨੇ ਇੱਕੋ ਹੀ ਐ ਰਾਜਗਰ ਰਹੀਬ ਹੋਈਏ ਕਰਤਾ ਕਰੀਬ ਹੋਈਏ ਦੂਸਰੋਂ ਨਾ ਭੇਦ ਕੋਈ ਭੂਲ ਪ੍ਰਮਾਨਵੋ ਦੂਸਰਾ ਕੋਈ ਨਹੀਂ ਹੈਗਾ ਇਹਨਾਂ ਦੇ ਵਿੱਚ ਇਹਨਾਂ ਦੇ ਭ੍ਰਮਨਾ ਕਰ ਲਿਓ ਵੀ ਰਾਜਕ ਹੋ ਰਹਾ ਰਹੀਬ ਹੋ ਰਹਾ ਕਰਤਾ ਹੋ ਰਹਾ ਪਰਮਚਿਨਾਂ ਬਹਿਜੋ ਦੂਸਰਾ ਬਣ ਕੇ ਕੋਈ ਭੁੱਲ ਕਰਕੇ ਤਾਂ ਪਰਮ ਹੋ ਜੂਗਾ ਜੇ ਭੁੱਲ ਕਰ ਲਈਏ ਤੁਸੀਂ ਦੂਸਰਾ ਬੰਨਾ ਨਹੀਂ ਉਲਟੇਰਾ ਬਹਿ ਜੂਗੇ ਫਿਰ ਉਲਟੇਰਾ ਬੈ ਹੈ ਦੁਸਾਰੀ ਫਿਰ ਵੀ ਉਲਟੇਰਾ ਬੈ ਹੋਏ ਨੇ ਹੇ ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ ਸਭ ਏਕ ਹੀ ਕੀ ਦੇਖੋ ਗੁਰੂ ਨੇ ਇੱਕ ਕਿਆ ਗੁਰਦੇਵ ਕੋ ਕਿ ਗੁਰੂ ਦਾ ਸੰਬੰਧ ਆਦਮੀ ਨਾਲ ਜਿਹੜਾ ਜਨਮ ਲਿਆ ਹੋਇਆ ਜੀ ਦਾ ਉਹਦੇ ਨਾਲ ਨਹੀਂ ਹੁੰਦਾ ਸਿੱਧਾ ਗੁਰੂ ਦਾ ਸੰਬੰਧ ਗੁਰਦੇਵ ਨਾਲ ਹੁੰਦਾ ਗੁਰਦੇਵ ਦਾ ਜਿਹੜਾ ਗੁਰਦੇਵ ਹੈ ਨਾ ਗਾਂ ਗੁਰਦੇਵ ਦਾ ਵਾਪਤਾ ਹੈਗਾ ਗੁਰੂ ਜਿਹੜਾ ਜੀਵਾਤਮਾ ਉਹਦਾ ਹੈਗਾ ਗੁਰਦੇਵ ਜਦੋਂ ਅਸੀਂ ਬੋਲਾਂਗੇ ਜਿਹੜਾ ਦੇਹ ਧਾਰੀ ਹੈ ਉਹ ਗੁਰਦੇਵ ਕਹੂਗਾ ਗੁਰਦੇਵ ਮਾਤਾ ਗੁਰਦੇਵ ਪਿਤਾ ਇਹਦੀ ਗੁਰਦੇਵ ਤੋਂ ਕਾਹ ਫਰੋਚੇ ਨਹੀਂ ਨਾਮ ਬਣ ਲਾ ਗੁਰੂ ਕੋਲ ਉਹ ਮਿਲਨ ਦਾ ਗੁਰੂ ਗੁਰਦੇਵ ਨੂੰ ਇੱਦਾਂ ਮਿਲਣਾ ਨਹੀਂ ਇਸ ਕਰਕੇ ਬਾਬਾ ਵੀ ਲਖਦਾਇਆ ਹੋਇਆ ਜੀ ਵਾਸਤੇ ਗੁਰੂ ਬਾਪ ਨਹੀਂ ਹੈ ਗੁਰੂ ਗੁਰੂ ਬਾਪ ਹੈ ਉਹਨਾਂ ਵਿਚਾਲੇ ਗੁਰਦੇ ਬੈਠਾ ਦਾ ਬਾਬ ਵਿਚਾਲੇ ਬੈਠਾ ਹੈ ਗੁਰੂ ਦਾ ਸਬੰਧ ਨਹੀਂ ਸਾਡੇ ਨਾਲ ਗੁਰੂ ਸਰ ਸ਼ਬਦ ਹੈ ਸੱਚਖਾਨੇ ਕੋਈ ਗੁਰੂ ਨਹੀਂ ਹੁੰਦਾ ਸੱਚਖੰਡ ਸਾਰੇ ਬਰਾਬਰ ਨੇ ਸਾਰੇ ਭਗਤ ਨੇ ਕੋਈ ਕਿਸੇ ਦਾ ਗੁਰੂ ਨਹੀਂ ਜਿਹੜਾ ਇੱਥੇ ਗੁਰੂ ਉਹ ਸੱਚਖੰਡ ਨਹੀਂ ਵਿਚਾਰੀ ਗੁਰੂ ਬਣੂ ਸੱਚਖੰਡ ਕਿਉਂਦਾ ਬਿੱਲਾ ਘਰੇ ਆਈਦਾ ਕੋਈ ਲਾਹ ਢੀ ਲਊਗਾ ਜੇ ਇੱਥੇ ਘਰੇ ਆਈਦਾ ਬਿੱਲਾ ਲੱਗਿਆ ਸੱਚਖੰਡ ਨਾਲੇ ਜਾਊਗਾ ਜੋ ਇੱਥੇ ਸੀਟ ਹੈ ਨਾ ਉਹਦੀ ਉਹੀ ਆ ਕੇ ਵਜੂਗਾ ਜੇ ਇੱਥੇ ਦਾਸਾ ਤਾਂ ਕहां ਜਾ ਕੇ ਦਾਸੇ ਵਜੂਗਾ ਜੇ ਇੱਥੇ ਗੁਰੂ ਹੈ ਤਾਂ ਜਾ ਗੁਰੂ ਵਜੂਗਾ ਤੇ ਗੁਰੂ ਜੇ ਕਹਾਂ ਚਲੇਗਾ ਗੁਰੂ ਕੀਦਰ ਫਿਰ ਉਹ ਭਗਤਾਂ ਦਾ ਗੁਰੂ ਹੈ ਜੇ ਗੁਰੂ ਕੋਲ ਜਾ ਕੇ ਜਨਤਾ ਤਾਂ ਇੱਥੇ ਬੈਠੀ ਹੈ ਸਾਰੀ ਜਿਨ੍ਹਾਂ ਦਾ ਗੁਰੂ ਬਣਨਾ ਉਹ ਤਾਂ ਇੱਥੇ ਨੇ ਇਹ ਕਹਿੰਦੇ ਗੁਰੂ ਇੱਥੇ ਹੀ ਰਹਿੰਦੇ ਨੇ ਗੁਰੂ ਨਰਕ 'ਚ ਰਹਿੰਦੇ ਨੇ ਉੱਥੇ ਨਹੀਂ ਗੁਰੂ ਕੋਈ ਹੁੰਦਾ ਸੱਚਖੰਡ ਗੁਰੂ ਕੋਈ ਹੁੰਦਾ ਹੀ ਨਹੀਂ ਇਹ ਜਿਹੜੇ ਗੁਰੂ ਬਣਦੇ ਨੇ ਯਾਰ ਗੁਰੂ ਕਹਿੰਦੇ ਨਰਕੀ ਜੀਵ ਨੇ ਸਾਰੇ ਭਗਸਾ ਘਰ 'ਚ ਰਹਿੰਦੇ ਹੁੰਦੇ ਨੇ ਗੁਰੂ ਇਹ ਸੱਚਖੰਡ ਤਾਂ ਸਾਰੇ ਬਰਾਬਰ ਨੇ ਉੱਤਨਾ ਕੋਈ ਦੋਇ ਮਨੱਸ ਕੋਈ ਬੇ ਉਹ ਨਾ ਜਿਹੜਾ ਸਾਰਾ ਨਾ ਇਕੱਠਾ ਆਇਆ ਨਾ ਇਕੱਠਾ ਫਰਮਾਨ ਦਰਗਾਹ ਦਾ ਪਾਰਲੀਮੈਂਟ ਜੋ ਪਾਸ ਕਰਦੇ ਨੇ ਬੈਠ ਕੇ ਉਹ ਗਰੂ ਹੈ ਵਿਅਕਤੀ ਕੋਈ ਗਰੂ ਨਹੀਂ ਜੋtheta ਵੀ ਹੈ ਉਹ ਫਰਮਾਨ ਜ਼ਾਰੇ ਦੇ ਲਾਗੂ ਹੋਣ ਤੇ ਫਰਮਾਨ ਲਾਗੂ ਆ ਉਹਦਾ ਸ਼ਬਦ ਹੈ ਸ਼ਬਦ ਦੇ ਸ਼ਬਦ ਗੁਰੂ ਆ ਹੁਕਮਾਂ ਕੋ ਗੁਰੂ ਆ ਹੋਰ ਕੋਈ ਗੁਰੂ ਨਹੀਂ ਪਰਸਨਲੀ ਕੋਈ ਵਿਅਕਤੀ ਗੁਰੂ ਨਹੀਂ ਸਾਰਿਆਂ ਦੀ ਆਵਾਜ਼ ਗੁਰੂ ਹੈ ਸਾਰਿਆਂ ਦੀ ਜੋ ਫਰਮਾਨ ਹੈ ਹੁਕਮ ਹੈ ਉਹ ਗੁਰੂ ਹੈ ਅੱਜ ਅਸੀਂ ਸਾਰਿਆਂ ਦੀ ਇਕੱਠੀ ਹੈ ਉੱਥੇ ਜੇ ਕੋਈ ਗੁਰੂ ਹੋਵੇ ਤੇ ਕਿਹਦਾ ਗੁਰੂ ਹੈ ਭਈ ਉਹ ਤੇ ਗੁਰੂ ਕੀ ਦਾ ਸਾਰੇ ਭਗਤ ਨੇ ਸੱਚ ਖੜਾ ਰਹਿ ਬਿਚੋ ਤੇ ਤੇ ਭਗਤ ਬਸੈ ਤੇ ਲੋ ਉੱਥੇ ਤੇ ਭਗਤ ਬਸੈ ਸੱਚ ਗੱਲ ਨਾਲ ਨਕਾਰਵਾਦ ਨਹੀਂ ਸਾਤ ਸਾਰੇ ਰੱਬ ਨੇ ਸੱਚ ਖਾਨ ਦੋਸਤ ਕੋਈ ਹੁੰਦਾ ਕਾਇਮ ਢਾਇਮ ਸਦਾ ਪਾਸ਼ਾਹੀ ਸਦਾ ਪਾਸ਼ਾਹੀ ਕਾਇਮ ਹਥੇ ਜੇ ਉਤੇ ਗੁਰੂ ਜਾਊਗਾ ਨਾਨਕ ਜੀ ਵੱਡਾ ਉੱਥੇ ਜਾਊਗਾ ਤਾਂ ਨਾਨਕ ਕੀ ਵੱਡਾ ਹੋਊਗਾ ਫਿਰ ਅਰਦਾਸ ਨਾ ਰਬ ਦਾ ਭਗਤਾਂ ਨਾਲ ਗੁਰੂ ਹੈ ਕਾਹਾਂ ਜਾ ਕੇ ਵੱਡਾ ਛੋਟਾ ਹੋਊਗਾ ਇਹਨਾਂ ਲੋਕਾਂ ਨੂੰ ਸਮਝੇ ਨਹੀਂ ਕਾਹਾਂ ਜਾਣ ਦੀ ਗਾਹਾਂਦਾਰੀਆਂ ਨੂੰ ਪਤਾ ਵੀ ਕਾਹਾਂ ਵੀ ਜਾਣਾ ਕੋਈ ਗੱਲ ਹੈ ਨਾ ਇਹ ਭੰਦੇ ਨੇ ਨਾ ਇਹਨਾਂ ਲੋੜ ਹੈ ਨਾਲ ਨੂੰ ਸਮਝ ਇਹਦਾ ਐਵੇਂ ਝਗੜਾ ਕਰਨ ਵਾਲੇ ਨੇ ਮੂਰਖ ਇਹਨਾਂ ਨੂੰ ਧਰਮ ਮਰ ਕੀ ਪਤਾ ਧਰਮ ਕੀ ਹੁੰਦਾ ਨਾਲ ਧਰਮ ਤੇ ਲੈਣਾ ਵੀ ਕੀ ਹੈ ਇਹਨਾਂ ਤਾਂ ਆਪਣੀਆਂ ਹੋਰ ਰੋਟੀਆਂ ਸੱਕੜੀਆਂ ਹੁੰਦੀਆਂ ਨੇ ਮਤਵਾਂ ਨਾ ਕੋਈ ਨਾ ਕੋਈ ਝਗੜਾ ਖੜਾ ਕਰਾ ਗੱਲ ਰੋਟੀਆਂ ਸੇਕੀ ਗਏ ਵਿਆਹ ਦਈ ਗਏ ਸਾਰਾ ਚ ਜੀ ਇੱਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਇੱਕ ਸਭ ਕਰਨੀ ਏ ਉਹ ਕੌਣ ਹੈ ਗੁਰਦੇਵ ਹੈ ਇੱਕ ਅੰਤਰਾਤਮਾ ਦੀ ਆਵਾਜ਼ ਆ ਸਾਹ ਜੀ ਉਹ ਵੀ ਆਵਾਜ਼ ਏ ਅਸਲ ਚ ਗੁਰਦੇਵ ਵੀ ਆਵਾਜ਼ ਹੈ ਉਹ ਅੰਤਰਾਤਮਾ ਦੀ ਆਵਾਜ਼ ਹੈ ਅੰਤਰਾਤਮਾ ਆਬਰੀ ਬੋਲਦੀ ਕਰੇ ਵੀ ਬਲਾਈ ਬੋਲਦੀ ਉਹ ਉਹ ਹੈ ਹੈ ਬਲਾਈ ਬੋਲਦਾ ਆਬਲੀ ਬੋਲਦਾ ਆ ਬੋਲਦਾ ਫਾਨੇ ਸਾਇਜ ਜਿਹੜਾ ਹੈਗਾ ਇਹ ਬੋਲਦਾ ਤੇ ਝੁਪਨੀ ਕਰਦਾ ਉਹ ਬੋਲਦਾ ਨਹੀਂ ਉਹ ਤਾਂ ਬਲਾਇਆ ਬੋਲਦਾ ਬਸ ਉਹ ਗੁਰਦੇਵ ਕਿ ਕੋਈ ਆਹੋ ਸਾਰਿਆਂ ਦਾ ਸਭ ਇੱਕੋ ਗੁਰਦੇਵ ਏ ਗੇਕ ਇੱਕ ਹੀ ਸਰੂਪ ਸਭ ਹੈ ਹੈ ਜੋਤ ਜਾਣ ਬੋ ਇੱਕੋ ਹੀ ਸਰੂਪ ਹੈ ਸਾਰਿਆਂ ਦਾ ਜੋਤ ਫਿਰ ਕੋਈ ਹੋ ਗਏ ਦੋ ਅੱਡ ਅੱਡ ਕੇ ਮੇ ਹੋ ਗਏ ਚਾਹ ਦੂਆ ਕਰਕੇ ਦੇਤਾ ਸਿੱਖ ਨੂੰ ਸਿੱਖਾਂ ਵੀ ਨਹੀਂ ਬੰਦੀ ਫੇਰ ਇਹ ਜੋ ਕੌਮ ਕਹੀ ਜਾ ਤੇ ਕੌਮ ਕੀ ਦੀ ਸਿਕ ਕੌਮ ਦੀ ਤਾਂ ਫੱਟੀ ਪੋਚੀ ਪਈ ਐ ਇੱਥੇ ਆਵਾਜ਼ ਮੋਰਖਾਲਦੀ ਆਉਂਦੀ ਫੋਰਖਾਲਦੀ ਉਹਨਾਂ ਨੇ ਜੋ ਗੱਲ ਕੀਤੀ ਸੀ ਨਾ ਕੌਮ ਤੇ ਸੁਆਗਾ ਫੇਰਿਆ ਸੀ ਦੁਬਾਰਾ ਕਿਉਂਕਿ ਇਹਨਾਂ ਨੇ ਕਰਨਾ ਰਾਜ ਅਸਰ ਚ ਸੁਰਤਾ ਹੁੰਦਾ ਉਹ ਰਾਜ ਦਾ ਵੀ ਜੇ ਕੌਮ ਨਾ ਬਣਾਈਂ ਤਾਂ ਅਸੀਂ ਤਾਂ ਕਹੇ ਤੁਸੀਂ ਜਾਉਂ ਗਈ ਤੁਸੀਂ ਤੁਹਾਨੂੰ ਨਹੀਂ ਕੋਈ ਪਜਾ ਸਕਦਾ ਹੁਣ ਜਿਹੜਾ ਆਪਣੇ ਗੁਰੂ ਨੂੰ ਛੱਡ ਜਵੇ ਉਹ ਜਾਊਗਾ ਉਹ ਰੋੜੋ ਉਹ ਕਿੱਥੇ ਮਿਲਣੀ ਹੈ ਉਹ ਤੈਨੂੰ ਨਉ ਕੌਣ ਹੈ ਤਾਂ ਗੁਰੂ ਨੂੰ ਛੱਡ ਕੇ ਤੁਸੀਂ ਆਪਣੇ ਰੂਹ ਤੁਹਾਨੂੰ ਕੋਈ ਟਿਕਾਣਾ ਤੁਸੀਂ ਛੁੱਟੀ ਕਰੋ ਉਹ ਛੁੱਟੀ ਕਰ ਦੋਗੀ ਸਤਿਗੁਰਾਂ ਦੇ ਨਤੀਜੇ ਜੋ ਪਤਾ ਲੱਗੂਗਾ ਰੌਲਾ ਧਮ ਰੰਦਾ ਤਾਂ ਪੜਨਗੇ ਉਹ ਸਾਰੇ ਪੜਨਗੇ ਸਮਝ ਆ ਸਮਝ ਆ ਜੂ ਇਹਨਾਂ ਦੀ ਫੱਟੀ ਆਪੇ ਪੋਜੂ ਇਹ ਲੋਕ ਕਰਤਾ ਬੁਰ ਕਰ ਰਿਹਾ ਜੋ ਕੁਛ ਕਰ ਰਿਹਾ ਜੇ ਰੋਲਾ ਪਾਇਆ ਕਿਨੇ ਪਾਇਆ ਇਹ ਆਪ ਕੋਈ ਨਹੀਂ ਬੋਲਦਾ ਇਹ ਵੀ ਬਰਾਏ ਬੋਲਦੇ ਨੇ ਸਾਰੇ ਖਸਮ ਦੇ ਉਹ ਖਬਰਾਂ ਕੀ ਕੀ ਡੰਗਾ ਮਾਰ ਦਿੰਦਾ ਇਹਨਾਂ ਨੂੰ ਬੋਲਣ ਵਾਲੇ ਨੂੰ ਕੋਈ ਨਿਬਤ ਉੜ ਕੇ ਢੋਲ ਪਿਆ ਤਮ ਪਿਆ ਨਾਲਾ ਨਾਣਾ ਤੇ ਇੱਟ ਮਾਰ ਦਿੰਦੇ ਬੋਲਣਗੇ ਅਬ ਜਰ ਇਹ ਨਾਣਾ ਨੇ ਇੱਟ ਜੋਗਨਾ ਮਾਰਦੀ ਉਹਨੇ ਬੋਲਣਾ ਨਹੀਂ ਇਹਦੇ ਖਬਰਾਂ ਕੌਣ ਇੱਟ ਮਾਰ ਲੈਣਾ ਦਰਸ਼ਨ ਨੂੰ ਬੋਲੀ ਜਾਂਦੇ ਨੂੰ ਆਫਰੀ ਪਤਾ ਇੱਟ ਕੌਣ ਮਾਰਦਾ ਇਹ ਤਾਂ ਕੋਈ ਇੱਟ ਮਰਾਉਂਦਾ ਗਿਆ ਤੇ ਤਾਂ ਬੋਲ ਪੈਂਦਾ ਉਹ ਕਿਸਨ ਨੇ ਕਹਤੇ ਇੱਟ ਮਰਾਦਦਾ ਬੋਲ ਪੈਂਦਾ ਕਾਰਨ ਕਰਨਾ ਤੇ ਕੋਈ ਬੋਲਣਾ ਦਾ ਹਾਂਜੀ ਇੱਕ ਹੀ ਸਰੂਪ ਸਭ ਹੈ ਇੱਕ ਹੈ ਜੋਤ ਜਾਨਵੀ ਇਹਨਾਂ ਦੇ ਕੋਈ ਭਰਮ ਜਿਹੜਾ ਮੰਨਣ ਵਾਲਾ ਮੂਰਖ ਪਰਪੇ ਮੰਨਣਾ ਚਾਹੀਦਾ ਬਿਲਕੁਲ ਵੀ ਦੇਹਰਾਮ ਸੋਈ ਪੂਜਾ ਔ ਨਿਵਾਜ ਹੋਈ ਦਿਉਰਾ ਵੀ ਉਹੀ ਹੈ ਇੱਟਾਂ ਬਣਿਆ ਹੈ ਫਗਲੇ ਹੈ ਕਹੇ ਜੀ ਉਗੜ ਘਰ ਕੋਟੀ ਕੋਈ ਕਹੇ ਜੀ ਹੋਣਾ ਲੋ ਇਟਾ ਸੋਣ ਤਾਂ ਹੋਈ ਹੈ ਜੇ ਦੋਰਾ ਮਸਜਿਦ ਦਾ ਗੁਰਦਾਰੇ ਦਾ ਕੋ ਨਕਸ਼ਾ ਦੂਆ ਬਣ ਕੇ ਫੇਰ ਕੀ ਹੋ ਗਿਆ ਉਹਦੇ ਵਾਸਤੇ ਲੜੀ ਜਾਂਦੇ ਢਾਂਚਾ ਜੀ ਫਲਾਨਾ ਜੀ ਕਿਦੋਂ ਦੋਨੋਂ ਦੱਸੋ ਕੀ ਹੁੰਦਾ ਕਹਿ ਜਾਓ ਬੇਟਾ ਚੇ ਦਾ ਕੀ ਹੈ ਅਸਲ ਦੇ ਵਿੱਚ ਧਰਮ ਤਾਂ ਇਹਨਾਂ ਨੇ ਕਰਨਾ ਇਹ ਨਹੀਂ ਝਗੜਾ ਤਾਂ ਹੋਰ ਕਰਨਾ ਇਹ ਤਾਂ ਹੋਵੇ ਧਰਮ ਦੇ ਕੋਈ ਰੌਲਾ ਨਹੀਂ ਰੌਲਾ ਤਾਂ ਹੋਰ ਗੱਲ ਦਾ ਧਰਮ ਵਾਲੇ ਪਾਸੇ ਤਾਂ ਜਾਣਾ ਨਹੀਂ ਰੌਲਾ ਪਾਉਣ ਸੂਣ ਘੜੀ ਰਖੜੀਏ। ਦੇਗਰਾ ਮਸਜਿਦ ਸੋਈ ਪੂਜਾ ਆ ਨਵਾਜ ਹੋਈ। ਪੂਜਾ ਉਹੀ ਗੱਲ ਆ ਮਾਨਸ ਸਭ ਏਕਪੈ ਅਨੇਕ ਕੋ ਪਰਮਾਉ ਹੈ। ਅੱਜ ਵੀ ਵੀ ਕੋਈ ਨਾ ਸਾਰੇ ਪਿਛਲਾ ਬਣੇ ਹੋਣੇ ਸਾਰਿਆਂ ਦਾ ਨਾਂ ਆਦਮੀ ਹੈ। ਮਾਨਸ ਸਭ ਏਕਪੈ ਉਈ ਕੋਈ ਨਾ ਆਦਮੀ ਜਨ ਨਾ ਆਦਮੀ ਰਖਤਾ ਇਤਕੋ ਹੀ ਹੋ ਗਿਆ ਫਿਰ ਅਨੇਕ ਉਹ ਭਰਮਾ ਹੋ ਹਾਂ ਜਿਹੜੇ ਅਨੇਕ ਬੰਦੇ ਨੇ ਉਹ ਪਰਮਾਉ ਹੈ ਉਹ ਪਰਮਾਉ ਹੈ ਜਿਹੜੇ ਅਡਾ ਅਡਵੰਦੇ ਨੇ ਉਹ ਪਰ ਉਹਨਾਂ ਨੂੰ ਭਰਮਾ ਉਹਨਾਂ ਦੀ ਗਿਆਨਤਾ ਉਹਨਾਂ ਦੇ ਮੂਰਖਤਾ ਵਕਰੇ ਵਖਾ ਨੇ ਬੁਝਣਾੜੇ ਮੂਰਖ ਨੇ ਅਗਿਆਨੀ ਨੇ ਪਰਮਚਰ ਨੇ ਸਭੇ देवता अदेव जाच गंधर्व तुर्क हिंदू देवता ने अदेव तुर्क हिंदू तुर्क ने चाहे दुने न्यारे न्यारे के भेष को प्रभाव है हां भेष न्यारे हो सकदा ऊपर पाए है जणा के भेष को प्रभाव है ਉਹਦਾ ਪ੍ਰਭਾਵ ਜ਼ਰੂਰ ਪਿਆ ਹੋਇਆ ਕਿਤੇ ਗਰਮ ਕੱਪੜੇ ਪਾਈਦੇ ਨੇ ਕਿਤੇ ਗਰਮ ਪਾਈ ਨਹੀਂ ਪਾਈਦੇ ਕਿਤੇ ਜ਼ਿਆਦਾ ਨਹੀਂ ਮੇ ਨੇ ਕਿਤੇ ਜ਼ਿਆਦਾ ਢੀਮੇ ਨਹੀਂ ਪੌਦ ਨੇ ਉਹਦਾ ਹੈ ਮੌਸਮ ਦੇ ਉੱਤੇ আর ਹੋਰ ਦੇਸਾਂ ਦੇ ਪ੍ਰਭਾਵ ਪੇਸ ਦਾ ਤਾਂ ਪ੍ਰਭਾਵ ਜ਼ਰੂਰ ਹੈ ਆ ਡੰਡ ਪਰ ਕੁਦਰਤ ਨੇ ਨਹੀਂ ਪੇਸ ਆਦਮੀ ਬਣਾਏ ਨੇ ਕੁਦਰਤ ਨੇ ਤਾਂ ਸਰੀਰ ਬਣਾਇਆ ਨਾ ਕੁਦਰਤ ਨੇ ਪੇਸ ਨਹੀਂ ਬਣਾਇਆ ਹੈ ਤੁਹਾਡਾ ਵਾਲਾ ਪੇਸ ਨਹੀਂ ਕੁਦਰਤ ਨੇ ਬਣਾਇਆ ਜਿਹੜਾ ਅਸੀਂ ਬਣਾਇਆ ਕੁਛ ਉਹ ਵੱਖਰਾ ਵੱਖਰਾ ਹੈ ਜਿਹੜਾ ਕੁਦਰਤ ਨੇ ਬਣਾਇਆ ਉਹ ਇੱਕੋ ਹੀ ਹੈ ਇੱਕ ਹੈ ਕਾਨ ਇੱਕ ਹੈ ਕਾਨ ਇੱਕ ਹੈ ਦੇਹ ਇੱਕ ਹੈ ਬਾਣ ਦੇਖੋ ਅੱਖਾਂ ਬਣਾਈਆਂ ਨੇ ਕੁਦਰਤ ਨੇ ਕੋਈ ਬਣਾਈਆਂ ਨੇ ਸਾਰਿਆਂ ਦੀ ਦੋ ਦੋ ਨੇ ਕਿਸੇ ਦੀ ਢਾਈ ਨਹੀਂ ਤੇਰੇ ਨੇ ਨਾ ਇੱਕ ਹੈ ਵੀ ਦੋ ਦੋ ਨੇ ਸਾਰਿਆਂ ਨੇ ਬਣਾਏ ਇੱਕ ਹੈ ਦੇਹ ਦੇਹ ਵੀ ਇੱਕੋ ਜਿਹੀ ਦਿੱਤੀ ਹੈ ਸਰੀਰ ਵੀ ਇੱਕੋ ਜਿਹਾ ਦਿੱਤਾ ਸਾਰਿਆਂ ਨੂੰ ਇੱਕ ਹੈ ਬਾਣ ਕੋਈ ਆਦਤ ਆ ਸਾਰਿਆਂ ਦੀ ਇੱਕ ਬਾਣ ਵਾ ਹੋਰ ਨਾ ਜਬਣਾ ਖਾਕ ਬਾਦ ਆਤਸ਼ ਹੋ ਆਪ ਕੋ ਰਲਾਉ ਹੈ ਆ ਸਰੀਰ ਦਾ ਕੀ ਹੈ ਮਿੱਟੀ ਹੈ ਖਾਕ ਹਵਾ ਆਗਾ ਪਾਣੀ ਹੈ ਆਪ ਕੋ ਰਲਾਉ ਹੈ ਪਰ ਰਲਿਆ ਹੋਇਆ ਚਾਰਾਂ ਤਤਾਂ ਨਾਲ ਸਰੀਰ ਪੰਜਵਾਂ ਆਕਾਸ਼ ਵਿੱਚ ਹੈਗਾ ਹੀ ਹੈ ਇਹ ਪੰਜੇ ਤਤ ਰਿਆ ਸਾਰਿਆਂ ਵਿੱਚ ਹੀ ਨੇ ਕੁਦਰਤ ਦਾ ਨਾ ਘਟਵਾ ਤਾਂ ਕੁਝ ਨਹੀਂ ਸਾਰਿਆਂ ਨੂੰ ਕੋਈ ਜੀਤੀ ਦਿੱਤੀ ਹੈ ਹਾਂ ਅਸੀਂ ਜਿਹੜਾ ਭੇਖ ਭੂਖ ਬਣਾ ਲਿਆ ਹੋਰ ਬਣਾ ਲਿਆ ਇਹ ਪ੍ਰਭਾਵ ਪੈ ਗਿਆ ਸਾਡੇ ਤੇ ਇਲਾਕੇ ਦਾ ਰਿਵਾਇਜ਼ ਦਾ ਉਹ ਵਖਰਾ ਵਖਰਾ ਰੰਗ ਦਾ ਕਿਸੇ ਨੂੰ ਕੋਈ ਰੰਗ ਪਸੰਦ ਆ ਕਿਸੇ ਨੂੰ ਉਹ ਦਾ ਫਰਕ ਹੈਗਾ ਉਹ ਪ੍ਰਭਾਵ اٹਹ ਅੱਲਾ ਹੈ ਅਪੇਖ ਸੋਈ ਪ੍ਰਾਨ ਉਹ ਕਰਾਨ ਹੋਈ ਅੱਲਾ ਭੇਖ ਅੱਲਾ ਸਾਰੇ ਬੰਦੇ ਨੇ ਉਹ ਦੇਖ ਹੈ ਜਦੋਂ ਮਾਰ ਵੀ ਬੰਦ ਦੇਣਾ ਵੇਖ ਹੈ ਸਰੀਰ ਨਹੀਂ ਹੈ ਜਿੱਦੂ ਵੀ ਬੰਦ ਦੇਣਾ ਸਰੀਰ ਨਹੀਂ ਹੈਗਾ ਕੇ ਦੇਖ ਜੋ ਕੁਰਾਨ ਦੇ ਵਿੱਚ ਨਹੀਂ ਹੋਈ ਪੁਰਾਣ ਗੱਲਾਂ ਅੱਲਾਹ ਸੋਈ ਬਈ ਜੋ ਭਾਈ ਤੁਸੀਂ ਸੱਚ ਤੇ ਜਿਹੜਾ ਨਹੀਂ ਰਹਿੰਦਾ ਉਹ ਧੋਖਾ ਖਾਂਦਾ ਕੁਰਾਨ ਚ ਵੀ ਇਹੀ ਥੋਨੂੰ ਅੱਲਾਹ ਨੇ ਕਿਤਾਬ ਦਿੱਤੀ ਸੀ ਗਿਆ ਸੀ ਵੀ ਤੁਸੀਂ ਛੋਲੇ ਕੰਮ ਕਰਿਓ ਆ ਕਰਿਓ ਹੋ ਕਰਿਓ ਤੁਸੀਂ ਕੀਤਾ ਨਹੀਂ ਤੁਸੀਂ ਠਗੀਆਂ ਮਾਰਨ ਲੱਗੇ ਉਹ ਥੋੜੇ ਦੇ ਗਫਤਾ ਆ ਗਈ ਤੁਸੀਂ ਬੁਰੇ ਕੰਮ ਕਰਨ ਲੱਗੇ ਇਹ ਹੀ ਘਰਾਂ ਦੇ ਵਿੱਚ ਆਈ ਦੇ ਵਿੱਚ ਜਿਹੜਾ ਬੁਰਾਈ ਕਰੋਗਾ ਉਹਦਾ ਰਿਜ਼ਲਟ ਨੂੰ ਹੋਊਗਾ ਸਾਖੀਆਂ ਦੇ ਵਿੱਚ ਗੱਲਾਂ ਸਮਝਾਈਆਂ ਹੋਈਆਂ ਨੇ ਉੱਥੇ ਵੀ ਸਾਖੀਆਂ ਕਾਹੜੀਆਂ ਉਲਟੇ ਪਾਸੇ ਰੁਜਾਂਗਾ ਜੇ ਦੁੱਖ ਨਿਕਲਣਗੇ ਹੀ ਸਰੂਪ ਸਭ ਹੈ ਬਣਾਓ ਹੈ ਇੱਕੇ ਰੂਪ ਹੈ ਸਾਰਿਆਂ ਦਾ ਇਹ ਗ੍ਰੰਥਾਂ ਦਾ ਇੱਕ ਰੂਪ ਹੈ ਬਤਲਮ ਕੀ ਸੀ ਇਹ ਬਣਾਉਲਦਾ ਆਜ ਵੀ ਵੀ ਸਿੱਧੇ ਰਸਤੇ ਪਾਉਣ ਦੁਨੀਆਂ 'ਚਾਂ ਮਨ ਸ਼ਾਂਤੀ ਰਹੇ ਸਾਰਿਆਂ ਨੂੰ ਸੁਖ ਰਹੇ ਇਹ ਬਣਾਉਣ ਦਾ ਕੁਰਾਨ ਔਰ ਪੁਰਾਣ ਬਣਾਉਲਦਾ ਇਹ ਉਹਨਾਂ ਦਾ ਬਣਾਉਣ ਵਾਲਿਆਂ ਦਾ ਲਿਖਣ ਵਾਲਿਆਂ ਦਾ ਇਹ ਬਤਲਮ ਬਸਲਾ ਸੀ ਬਣਾਉਣ ਵਾਸਤੇ ਇਹ ਉਹਨਾਂ ਦਾ ਪ੍ਰਯੋਜਨ ਸੀ ਅਬਲ ਸ਼ਾਂਤੀ ਰਹੇ ਲੋਕਾਂ ਨਾਲ ਮਿਲ ਕੇ ਰਹਿਣ ਇਹਦੇ ਵਾਸਤੇ ਕੁਰਾਨ ਬਣੀ ਸਾਰਿਆਂ ਦਾ ਪ੍ਰੇਮ ਰਹੇ ਇਹਦੇ ਵਾਸਤੇ ਸਾਰੇ ਗ੍ਰੰਥ ਬਣਦੇ ਨੇ ਡਾਓ ਜੋ ਜੋ ਮਰਜੀ ਰਖ ਲੋ ਨਾ ਤੇ ਆ ਡੱਡ ਉਹ ਕਹਿੰਦਾ ਸਾਡੇ ਫਲਾਣਾ ਨੇ ਬਣਾਇਆ ਜੱਗਾ ਆ ਵਧੀਆ ਦੀ ਹੈ ਕੁਛ ਜਿਹੜੀ ਮਰਿਆਦਾ ਬਣਦੀ ਹੈ ਉਹ ਤੇ ਆ ਕੇ ਰੌਲਾ ਪੈਂਦਾ ਜੋ ਰਹਿਤ ਬਣਦੀ ਉਹ ਹੋਰ ਉਹਦੀ ਮਰਿਆਦਾ ਹੋਰ ਵੱਧ ਜਾਂਦੀ ਹੈ ਮਰਿਆਦਾ ਬਣ ਮੁੱਕ ਬਣਤ ਵੱਧਦੀ ਜਾਂ ਆ ਕੇ ਮਰੀਅਾ ਦਾ ਤੇ ਆਗੇ ਫਰਕ ਪੈਂਦਾ ਰਹਤ ਤੇ ਨਹੀਂ ਬਹੁਤਾ ਫਰਕ ਪੈਂਦਾ ਹਾਂ ਜੈਸੇ ਇੱਕ ਆਗ ਤੇ ਕਨੂਕਾ ਕੋਟ ਆਗ ਉੱਠੇ ਜਿਵੇਂ ਇੱਕ ਜਿਹੜੇ ਉੱਠਦੇ ਨੇ ਫਲੂਏ ਛੋਟੇ ਛੋਟੇ ਉੱਠਦੇ ਨੇ ਕਰੋੜਾ ਹੀ ਉੱਠਦੇ ਨੇ ਨਿਆਰੇ ਨਿਆਰੇ ਹੋਏ ਕਾ ਫਿਰ ਆਗ ਮੈਂ ਮਲਾਹੇਗੇ ਵੱਖਰੇ ਵੱਖਰੇ ਲੱਗਦੇ ਨੇ ਪਰ ਇਕੱਠੀ ਦਾ ਅੱਗ ਹੀ ਲੱਗਦੀ ਹੈ ਨਾ ਉਹ ਅੱਗ ਕੋਈ ਨਾ ਹਾਸਾ ਦਾ ਅੱਗ ਹੀ ਹੈ ਨਾ ਕੁੱਲਾ ਬਣਾ ਕੇ ਤਾਂ ਅੱਗੇ ਕਹਾਂਗੇ ਉਹਨੂੰ ਸਾਰਿਆਂ ਨੂੰ ਲੱਗਦੇ ਧੂੜ ਤੇ ਅਨੇਕ ਧੂੜ ਫੜਤ ਹੈ ਜਿਵੇਂ ਇੱਕ ਕਣ ਧੂੜ ਦੇ ਉਸਵਾਨ ਦੇ ਵਿੱਚ ਉੜਦੇ ਫਿਰਦੇ ਰਹਿੰਦੇ ਜੀ ਵੱਖਰੇ ਵੱਖਰੇ ਅਨੇਕ ਧੂੜ ਫੜਤ ਹੈ ਹਾਂ ਧੂੜ ਤੇ ਕਨੂਕਾ ਫਿਰ ਧੂੜ ਹੀ ਸਮਾਹੇ ਜਿੰਨੇ ਧੂੜ ਦੇ ਕਣ ਨੇ ਸਾਰੇ ਧੂੜੇ ਐ ਉਹਨਾਂ ਸਾਰੇ ਦਾ ਧੂੜ ਐ ਕੱਲਾ ਕੱਲਾ ਕਣ ਵੈਸੇ ਸਾਰੇ ਦਾ ਨਕਲ ਬਲਾਸੇ ਧੂੜ ਹੈ ਧੂੜ ਤੇ ਕਨੂਕਾ ਫਿਰ ਧੂੜ ਹੀ ਸਮਾਹੇਗੇ ਆ ਉੱਥੇ ਹੀ ਸਮਾਜ ਜਾਣਾ ਜਿੱਥੋਂ ਉੱਠੇ ਗਏ ਨੇ ਉੱਥੇ ਹੀ ਆੜਗਣਾ ਧਰਤੀ ਦੇ ਝਗੜਾ ਉਹਨਾਂ ਨੇ 20 ਬਾਈ ਦੇ ਡੇ ਪਹਿਣਗੇ ਜੇ ਬੋਤਾ ਜੇ ਰੁੱਟਦੇ ਰਹੇ ਮੌਸਮ ਦੇ ਵਿੱਚ ਆਪਾਂ ਕਹਿਣਾ ਵੀ ਪੈ ਗਿਆ ਹੁਣ ਰਸਵੰਤ ਸਾਫ ਹੋ ਗਿਆ ਉਡੀ ਗਨ ਦਫਰ ਦਸੀ ਸਾਰੀ ਦਬ ਗਈ ਤੂੜੀ ਜਿਹਾ ਦੀ ਜਵਗੀ ਜੈਸੇ ਇੱਕ ਨਦ ਤੇ ਤਰੰਗ ਕੋਟ ਉਪਜਤ ਹਨ ਜਿਵੇਂ ਇੱਕ ਨਦੀ ਤੋਂ ਕੋ ਕਰੋੜੇ ਤਰੰਗਾ ਪੈਦਾ ਹੁੰਦੀ ਹੈ ਹਵਾ ਚਲਦੀ ਹੈ ਜਿੱਥੇ ਤੇ ਨਦੀ ਜਾਂਦੀ ਹੈ ਤਰੰਗਾ ਉੱਥੇ ਸਭ ਪਾਣ ਹੀ ਪਾਣੀ ਦੇ ਜਿੱਦੀ ਲਹਿਰਾ ਹੁੰਦੀਆਂ ਨੇ ਉਹਨਾਂ ਨੂੰ ਪਾਣੀ ਉਹ ਜਾਊਗਾ ਪਾਣੀ ਹੁੰਦਾ ਲਹਿਰ ਹੋਰ ਕੀ ਦੀ ਨਦੀ ਜੋ ਪੈਦਾ ਹੁੰਦੀ ਹੈ ਨਦੀ ਜਿਹਾ ਸਮਾ ਜਾਂਦੀ ਹੈ ਪਾਣੀ ਪਾੜੀ ਜਿਹੜਾ ਜੰਦ ਤੈਸੇ ਹੀ ਬਿਸਮਰੂਪ ਤੇ ਅਭੂਤ-ਪੂਤ ਪ੍ਰਗਟ ਹੋਏ ਤੈਸੇ ਬਿਸਮਰੂਪ ਤੇ ਅਭੂਤ-ਪੂਤ ਪ੍ਰਗਟ ਹੋਏ ਐਵੇਂ ਬਿਸ਼ਵਰੂਪ ਹੈ ਜਿਹੜਾ ਨਾ ਸੱਚਖੰਡ ਬਿਸ਼ਵਰੂਪ ਹੈ ਜਿਹਦੀ ਆਤਮਾ ਬਸ ਸੱਚਖੰਡ ਦੀ ਬਈ ਨਾ ਖਜ਼ਾਨਾ ਜਿਹਨੂੰ ਕਹਿੰਦੇ ਨੇ ਉਹ ਖਜ਼ਾਨਾ ਸਾਰਾ ਬਿਸ਼ਵਰੂਪ ਹੈ खरे ਖਜ਼ਾਨੇ ਚ ਪੈਂਦੇ ਨੇ ਉਹ ਖਜ਼ਾਨੇ ਜੋ ਆਏ ਹੋਏ ਨੇ ਸਾਰਿਆਂ ਜਿਵੇਂ ਧੂੜ ਦੇ ਵਿੱਚੋਂ ਕਣਕੇ ਉੱਠ ਖੜੇ ਉੱਤੇ ਨੂੰ ਉੱਡਦੇ ਆਏ ਆਕਾਸ਼ ਤੱਕ ਪਹੁੰਚੇ ਐਵੇਂ ਆਕਾਸ਼ ਉੱਡਦੇ ਨੇ ਉੜਕੇ ਨੂੰ ਕਾਤ ਬਾਬਾ ਤਾਹੀ ਤੇ ਉਪਜ ਸਭੇ ਤਾਹੀ ਮੈਂ ਜਾਂ ਬੀ ਪੈਦਾ ਜਿਹਦੇ ਛੱਟਾ ਪੈ ਜਾਂਦਾ ਜਾ ਨੇ ਤਾਹੀ ਤੇ ਉਪਜ ਸਭ ਕੇ ਇਹਨਾਂ ਨੇ ਇਹ ਖਿਆਲ ਨੇ ਜੋ ਹੋਏ ਨੇ ਜਿਹੜਾ ਖਰਾ ਹੋ ਜਾਂਦਾ ਖਜ਼ਾਨੇ ਪਹਿ ਜਾਂਦਾ ਜਾ ਕੇ ਖਜ਼ਾਨਾ ਜਾਨਣ ਵਾਲੀ ਗੱਲ ਆਦੂ ਨੂੰ ਵਿਸਰੀ ਹੋਈ ਖਜ਼ਾਨਾ ਵੀ ਹੈ ਕਾਇ ਖਿਆ ਲੈ ਕਵਜਨ ਪਰ ਖਜ਼ਾਨੇ ਦੇ ਰੁਪਈਆ ਕਦੀ ਹੁੰਦਾ ਪਤਾ ਨਹੀਂ ਕਦੇ ਹੁੰਦਾ ਖਿਆਨਾ ਤਾਂ ਕੋਈ ਹੈ ਸਿਕਾਇ ਕਰੀਆ ਦੇ ਵਿੱਚ ਵੀ ਕੋਈ ਸਿਕਾ ਦੇ ਵਿੱਚ ਸਿਕਾ ਨਹੀਂ ਕਰਨਾ ਪਤਾ ਵੀ ਕਿਤੇ ਨਹੀਂ ਅਸ ਫਰਕ ਨਹੀਂ ਸਮਝਾਈ ਇਹ ਸਭੰਦ ਨੇ ਵੀ ਕੁਰਾਲੇ ਕੁਰਲੇ ਕਿਵੇਂ ਸਾਰੇ ਸਮਾਜਾਂਗੇ ਇੱਕ ਚੋਕਵੇਂ ਪੈਦਾ ਹੋਗੇ ਸਾਰੇ ਐ ਕਹੀ ਜਾਂਦੇ ਖਜ਼ਾਨਾ ਵੀ ਤਾਂ ਕੋਈ ਖਜ਼ਾਨਾ ਜਿਹੜੀ ਆਤਵਾਣਾ ਹੈ ਜਿਹੜੇ ਪਈ ਨੇ ਖਜ਼ਾਨੇ ਪਈ ਨੇ ਜਾ ਕੇ ਖਜ਼ਾਨਾ ਜੋ ਕਟਣੇ ਵੀ ਇਕੱਠੇ ਜਿੰਨੇ ਵਰਦੀ ਕੱਢ ਲੋ ਉੱਤ ਧਰਤੀ ਦੇ ਕੰਨੀਆਂ ਜਿਹਦੀ ਵਰਦੀ ਧੂੜ ਡਪੇ ਧੱਤੀਓ ਬਣ ਜੜੀ ਨਾ ਜਿਹਦੀ ਵਰਦੀ ਧੂੜ ਉੱਡ ਵੀ ਤੇ ਸਕਦੀ ਹੈ ਬਾਅਦ ਚ ਫਿਰ ਬੱਸ ਇਹ ਗੱਲ ਧਰਤੀ ਕੌਣ ਨਹੀਂ ਜਾਊਗੀ ਉਹ ਕਿਤੇ ਕੱਛ ਮੱਛ ਕਿਤੇ ਉਹਨਾਂ ਕੋ ਕਰਤਪਛ ਕਿੰਨੇ ਕੱਛ ਮੱਛ ਨੇ ਤੇ ਸਮੁੰਦਰ ਦੇ ਵਿੱਚ ਪਾਣੀ 'ਚ ਕਿੰਨੇ ਉਹਨਾਂ ਨੂੰ ਖਿਲਵਾਲੇ ਨੇ ਕਰਤਪਛ ਪਛਣ ਵਾਲੇ ਖਾਣ ਵਾਲੇ ਜੀ ਵੀ ਤਾਂ ਹੈਗੇ ਨੇ ਜਾਨਵਰਾਂ ਨੂੰ ਖਾਣ ਵਾਲੇ ਵੀ ਨੇ ਤੇ ਤੇ ਅੱਛ ਹੋਏ ਸਪੱਸ਼ ਉੱਡ ਜਾਣਗੇ ਕੀੜੇ ਕਿੜੇ ਹੁੰਦੇ ਨੇ ਆਪਣੇ ਉਹਨਾਂ ਨੂੰ ਖੱਬ ਲੱਗ ਜਾਂਦੇ ਨੇ ਉਹ ਕਹਿੰਦੇ ਸਾਨੂੰ ਖਬਰ ਆ ਕਿ ਇਹ ਕੀੜਿਆਂ ਨੂੰ ਖੱਬ ਲੱਗਦੇ ਨੇ ਇਹ ਦੇਖਿਆ ਉੱਡਦੇ ਹੁੰਦੇ ਨੇ ਸਪੱਛ ਹੋ ਕੇ ਉੱਡਦੇ ਨਹੀਂ ਸਪੱਛ ਹੁੰਦੇ ਨੇ ਪੰਛੀ ਵਰਗੇ ਸਪੱਛ ਖੰਭਾਂ ਸਾਇਤ ਪੰਛੀ ਕਹਿੰਦੇ ਨੇ ਖੰਭ ਨੂੰ ਸਪੱਛ ਹੋ ਜਾਂਦੇ ਨੇ ਖੰਮਾਂ ਦੇ ਨਾਲ ਜਦੋਂ ਉਹਨੂੰ ਖੰਬ ਨਿਕਲਿਆ ਉਹ ਉੱਡ ਜਾਂਦੇ ਨੇ ਬਰਸਾਤਾਂ ਦੇ ਪਹਿਲਾਂ ਉੱਡਦੇ ਉਹਦੇ ਉੱਡ ਜਾਣਗੇ ਕੇਤੇ ਨਭ ਵਿੱਚ ਅਛ ਪਛ ਕੋ ਕਰਨਗੇ ਮੈਨੂੰ ਖੰਬ ਲੱਗੇ ਨਾ ਕੀੜਿਆਂ ਲੱਗਦੀ ਇਹਦੀ ਲੱਗਦੇ ਮੌਤ ਹੁੰਦੀ ਆ ਉਹਦੀ ਕਹਿੰਦਾ ਕੀੜਿਆਂ ਨੂੰ ਖੰਬ ਲੱਗੇ ਇਹ ਤਾਂ ਉਲਟੀ ਗੱਲ ਹੈ ਖੰਬ ਲੱਗਣਾਂ ਤਾਂ ਸਵਾ ਖੰਬ ਲੱਗਣੇ ਕਿਦੇ ਹੁੰਦੇ ਕਿ ਇੱਥੇ ਨਭ ਵਿੱਚ ਅੱਛ ਪੱਛ ਕੋ ਕਰਾਂਗੇ ਪੱਛ ਫੇਰ ਕਾਜ ਦੇ ਵਿੱਚ ਉਹਨਾਂ ਨੂੰ ਖਾਣ ਵਾਲੇ ਬਥੇ ਨੇ ਉਹ ਖਾਣ ਵਾਲੇ ਵੀ ਉਦੋਂ ਹੀ ਉੜਦੇ ਨੇ ਤਾਂ ਉਹਨਾਂ ਦੀ ਖੁਰਾਕ ਪੈਦਾ ਹੋਏ ਨੇ ਉਹਨਾਂ ਨੂੰ ਇਹ ਵੀ ਸਾਨੂੰ ਖਬਲਾ ਕੇ ਅਸੀਂ ਉੜਦੇ ਨਾਲ ਕਾਜ ਚ ਪੱਛ ਕਿ ਖਾਏ ਜਾਣਗੇ ਕਿੰਨੇ ਪੱਤੇ ਛੋ ਕੇ ਪਿਛਾ ਖਾ ਜਾਂਦੇ ਨੇ ਜਿਵੇਂ ਕੋਈ ਬਹੁਤ بڑا ਕੋਈ ਜਾਨਵਰ ਮਰ ਗਿਆ ਉਹ ਜਾਫੀ ਕੀੜੇ ਪੈਦਾ ਹੋ ਜਾਂਦੇ ਸੀ ਬਈ ਜਾਨ ਉਪਰ ਪੱਤੇ ਛੋਏ ਨੇ ਉਹ ਕੀੜੇ ਪਹਿਲਾਂ ਤਾਂ ਹੈ ਨਹੀਂ ਸੀ ਹੁਣ ਦਬਦਲ ਦੇ ਥੱਲੇ ਉਹਦੇ ਆਲੂ ਉਹ ਵੀ ਕੀੜੇ ਪੈਦਾ ਹੋ ਜਾਂਦੇ ਨੇ ਉਹ ਪੱਤੇ ਛੋਗੇ ਪੱਤੇ ਖੋਗੇ ਜਿਹੜੇ ਪੈਦਾ ਹੋਗੇ ਨਾ ਉਹ ਖਾ ਜਾਂਦੇ ਨੇ ਸਾਰੀ ਲਾਸ਼ ਨੂੰ ਉਹ ਇਹੜਾ ਕੁਝ ਲਾਉਂਦੇ ਨੇ ਨਾ ਇਹ ਲਾਸ਼ਾਂ ਨੂੰ ਟ੍ਰੀਟਮੈਂਟ ਕਰਦੇ ਨੇ ਉਹ ਤਾਂ ਕਰਦੇ ਨੇ ਵਿੱਚ ਕੀੜੇ ਪੈਦਾ ਹੀ ਨਾ ਹੋਣ ਇਹ ਸੁੱਕ ਜਵੇ ਨੂੰ ਨਾ ਪੌਦੇ ਜਨਾ ਕੁਝ ਪੌਦੇ ਨੇ ਕੀੜੇ ਨਾ ਪੈਦਾ ਹੋਣ ਤਾਂ ਪੌਦੇ ਤੇ ਕੀੜੇ ਤਾਂ ਹਰ ਚੀਜ਼ ਪੈਦਾ ਆਪੇ ਹੋ ਜਾਂਦੇ ਨੇ ਹਰ ਚੀਜ਼ ਕੀੜੇ ਪੈਦਾ ਹੋ ਜਾਂਦੇ ਨੇ ਚ ਕੀੜੇ ਕਾਕਰੋਚ ਪੈਦਾ ਹੋ ਜਾਂਦੇ ਨੇ ਸਭ ਕੁਝ ਪੈਦਾ ਹੋ ਜਾਂਦਾ ਆ ਵੀ ਪੈਦਾ ਹੋ ਜਾਂਦਾ ਇਹ ਆ ਪਰਤਾਂ ਛੋਏ ਇਹ ਪਟਾਚੋਏ ਪਚਾਏ ਖਾਏ ਜਾਣਗੇ ਪਾ ਖਾ ਕੇ ਪਚਾਏ ਜਾਣਗੇ ਉਹ ਉਸੇ ਟੀ ਨੂੰ ਖਾ ਥਾਲ ਕਹਾ ਗਗਨ ਤੇ ਗਾਉਣ ਕਹਾ ਜਲ ਕਤੇ ਕੀ ਥਲ ਕੀ ਆਕਾਸ਼ ਜਾਲ ਕਹਾ ਦਲ ਥਲ ਕਹਾ ਕਹਾ ਲੱਭਦਾ ਇਸ ਦੀ ਲੱਭਦਾ ਕਹਾ ਕਹਾਂ ਦੀ ਗਗਨ ਕੇ ਗਾਉਣ ਕਹਾ ਕੀ ਤਾਂ ਗਗਨ ਦਾ ਗੌਣ ਕਹਿੰ ਲੋ ਗਗਨ ਦੇ ਵਿੱਚ ਉੱਡਣਾ ਕਹਿੰ ਲੋ ਕੀ ਜਲ ਦੇ ਵਿੱਚ ਪਹਿਲਾਂ ਕੁੱਬਣਾ ਫਿਰਨਾ ਕੀ ਥਲ ਦੇ ਉੱਤੇ ਕੁੱਬਣਾ ਫਿਰਨਾ ਤਿੰਨੇ ਜਗ੍ਹਾ ਨੇ ਤੇ ਆਕਾਸ਼ ਕਾਲਖੇ ਕਾਲੇ ਬਣਾਉਂਦਾ ਹੁਕਮ ਨਾਲੇ ਬਣਦੇ ਨੇ ਕਾਲੇ ਚਬਾ ਹੋਰ ਚੀਜ਼ ਪੈਦਾ ਕਰਨ ਦੇ ਵਾਸਤੇ ਕਾਲ ਕੇ ਬਣਾਏ ਸਭੇ ਕਾਲ ਹੀ ਚਬਾਹੇਗੇ ਚਬਾਹੇਗੇ ਤੇਜ ਜਿਉਂ ਉਹ ਤੇਜ ਮੈਂ ਅਤੇਜ ਜਿਵੇਂ ਐਸੇ ਤੇਜलीन ਤੇਜ ਕਹਿੰਦੇ ਹਾਂ ਤੇਜ ਦੇ ਵਿੱਚ ਸਮਾਇਆ ਹੋਇਆ ਹੁੰਦਾ ਦੁਨਵੇ ਰਹਿਣ ਰਹਿਣ ਵਿੱਚ ਦੁਨੀਆਰ ਉਹ ਗੱਲ ਹੈ ਤੇਜ ਹੈ ਲਾਈਟ ਅਤੇਜ ਹੈ ਨੇਰਾ ਨੇਰੇ ਵਿੱਚ ਤੇ ਭਰਵ ਵਿੱਚ ਗਿਆਨ ਹੁੰਦਾ ਜਦ ਗਿਆਨ ਸੌ ਜਾਂਦਾ ਨਾ ਉਹ ਭਰਵ ਦਿਖਾਈ ਦਿੰਦਾ ਜਿੰਨੇ ਜਿੰਨਾ ਇਹਦਾ ਹਿੱਸਾ ਸੁੱਤਾ ਪਿਆ ਹੈ ਉਹ ਗਿਆਨ ਉਹਦੇ ਵਿੱਚ ਛੁਪਿਆ ਛੁਪ ਗਿਆ ਅਸਲ ਚ ਗਿਆਨ ਟਕ ਲਿਆ ਉਹਨੇ ਹਨੇਰੇ ਨੇ ਉਹ ਗਿਆਨ ਹੈ ਪ੍ਰਗਟ ਹੋਣਾ ਗਿਆਨਵਤ ਨੇ ਜਾਗਣਾ ਉਪਜਾ ਸਹਿਜ ਗਿਆਨਵਤ ਜਾਗ ਉਹ ਜਿਹੜਾ ਜਿੱਥੇ ਹਨੇਰਾ ਚ ਦੂਰ ਹੋ ਜਾਣਾ ਤੇਜ ਵਿੱਚ ਤੇਜ ਛੁਪਿਆ ਹੋਇਆ ਹੈ ਸੁੱਤੇ ਪੈ ਦਾ ਤੇਜ ਤੇਜ ਵਿੱਚ ਛੁਪਿਆ ਹੋਇਆ ਹੈ। ਨੇਰੇ ਵਿੱਚ ਗਿਆਨ ਛੁਪਿਆ ਹੋਇਆ ਹੈ। ਅਤੇਜ ਦਾ ਪਰਦਾ ਆ ਗਿਆ ਉੱਤੇ। ਪਰਮ ਦਾ ਥੱਲੇ ਕੀ ਹੈ? ਥੱਲੇ ਲਾਈਟ ਹੈ। ਪਰਦੇ ਤੇ ਥੱਲੇ ਕੀ ਹੈ ਲਾਈਟ ਹੈ। ਪਰਦੇ ਨਾਲ ਢੱਕੀ ਹੋਈ ਹੈ ਲਾਈਟ ਉਹ। ਪਰਮ ਦਾ ਪਰਦਾ ਪਿਆ ਹੋਇਆ ਪਰਮਦੇ ਪਰਦੇ ਦੇ ਥੱਲੇ ਜੋ ਹੁੰਦਾ ਵਿੱਚੋਂ ਜੋਤ ਨਿਕਲਦੀ ਅਤੇਜ ਵਿੱਚ ਤੇਜ ਹੁੰਦਾ ਤੇਜ ਵਿੱਚ ਅਤੇਜ ਹੁੰਦਾ ਜਿੱਤੇ ਗਿਆਨ ਆ ਪਰਮੋਂ ਦੇ ਵਿੱਚ ਹੀ ਹੁੰਦਾ ਪਰਮ ਕਿੱਥੇ ਗਿਆ ਹੁਣ ਸੂਰ ਚੜੂਗਾ ਮੇਰਾ ਕਿੱਥੇ ਗਿਆ ਵਿੱਚੇ ਸੁਭਾ ਉਹਦੇ ਜੇ ਸੂਰ ਛੁਪ ਜਾਏ ਮੇਰਾ ਫਰਗੜ ਹੋ ਜਾਂਲ ਵਿੱਚੋਂ ਨਿਕਲੇ ਉਹ ਐਦਾਂ ਹੈ ਦਿਨ ਵਿੱਚ ਰਹਿਣ ਰਹਿਣ ਵਿੱਚ ਦਿਨ ਇਹ ਗੱਲ ਹੈ ਉੱਥੇ ਕਹੀ ਹੋਈ ਆ ਵਿੱਚ ਉਹੀ ਗੱਲ ਇੱਥੇ ਕਹੀ ਹੋਈ ਹੈ ਹੁਣ ਇਹ ਤੋਂ ਪਤਾ ਲੱਗਦਾ ਵੀ ਜਿਹਨੇ ਗੱਲ ਲਿਖੀ ਹੈ ਉਹਨੂੰ ਗੁਰਮਤਿ ਕਿੰਨੀ ਫਰੀਕ ਸੋਝੀ ਹੈ ਕਿੰਨੀ ਫਰੀਕ ਸੋਝੀ ਹੈ ਗੁਰਮਤਿ ਤੇਜ ਵਿੱਚ ਤੇਜ ਹੁੰਦਾ ਹੈ ਤੇ ਤੇਜ ਤੇਜ ਦਾ ਉਹ ਤੋਂ ਹੀ ਨਹੀਂ ਪਤਾ ਕਿਹਨੂੰ ਕਹਾ ਤੇਜ ਕਿਹਨੂੰ ਕਹਾ ਉਹਨੂੰ ਤਾਂ ਇਹੀ ਨਹੀਂ ਪਤਾ ਔਰ ਕਿਵੇਂ ਛੁਪਿਆ ਹੁੰਦਾ ਛੁਪ ਜਾਂਦਾ ਇਹਨਾਂ ਨੂੰ ਕੀ ਪਤਾ ਇਹਨਾਂ ਗੱਲਾਂ ਦਾ ਉਹਨਾਂ ਦਾ ਸਮਝ ਨਹੀਂ ਹੈ ਨਾ ਗੱਲਾਂ ਦੀ ਉਦੇ ਵਿੱਚ ਆਣ ਆਣ ਵਿਦਿਅਰ ਕਿਵੇਂ ਹੁੰਦਾ ਜੇ ਹੁੰਦਾ ਤਾਂ ਸਮਝ ਉੱਤੇ ਕਰ ਲਾ ਦਿੰਦੇ ਅਰਥ ਠੀਕ ਹੈ ਜ ਕਿਸੇ ਜ ਨਹੀਂ ਅਰਥ ਕਿਉਂ ਨਹੀਂ ਹਣ ਵਿਦਵਾਨ ਕਵੇਂ ਸਮਝ ਇਹ ਗੱਲ ਤਾਹੀ ਤੇ ਪੈਦਾ ਹੁੰਦਾ ਹੈ ਵਿੱਚੋਂ ਪੈਦਾ ਹੋ ਗਿਆ ਉਹਦੇ ਵਿੱਚ ਸਮੋ ਜਾਂਦਾ ਹੈ ਕੂਕਤ ਫਿਰ ਰੋਬਤ ਮਰਤ ਕਹਤੇ ਕਿੰਨਾ ਕੂਕਦੇ ਫਿਰਦੇ ਨੇ ਕਹਿੰਦੇ ਰੋਦੇ ਫਿਰਦੇ ਨੇ ਰੋਦੇ ਫਿਰਦੇ ਨੇ ਪਰਦੇ ਫਿਰਦੇ ਪਰਦੇ ਦੇ ਅੰਦਰ ਝਾਲ ਮੈਂ ਡੁੱਬੋ ਤੱਕੇ ਤੇ ਆਗ ਮੈਂ ਜੜਤਾ ਹਾਂ ਰੋਦੇ ਨੇ ਜਿਹੜੇ ਸਰੇਵੜੇ ਨੇ ਜੋੜ ਕੇ ਕੂਕੋ ਤਾਂ ਫਿਰ ਤੱਕੇ ਮਾਰਦੇ ਫਿਰਦੇ ਹੁੰਦੇ ਨੇ ਰੋਬਾ ਮਰਤ ਕੇ ਜਲ ਮੈਂ ਡੁੱਬੋ ਤੱਕੇ ਉਹ ਨੇ ਕਨੈ ਜਾਨੋ ਉਹ ਪਤਾ ਕਾ ਦੇ ਸਾਨੂੰ ਛੇਤੀ ਮੌਤ ਕਿਉਂ ਨਹੀਂ ਹੁੰਦੀ ਉਹ ਮੌਤ ਨੂੰ ਮੁਕਤੀ ਬੰਦੇ ਨੇ ਕਨੈ ਛੇਤੀ ਮੌਤ ਆਵੇ ਇਹ ਕਿਹੜਾ ਛੁੱਟੇ ਕੋ ਤਪਜੋ ਕਰਦੇ ਪੈਰ ਜੋ ਨਗੇ ਰਹੇ ਨੇ ਦੁੱਖ ਜੀਵਨ ਨੂੰ ਦੁੱਖ ਬਣਾ ਰਿਹਾ ਲੋਰੀ ਬਹੁਤ ਆਪਣਾ ਦੁਖੀ ਗੱਲ ਹੈ ਜੀ ਫਿਰ ਉਹ ਤਾਂ ਖੜਾ ਹੀ ਥਾ ਮੇ ਛੇਤੀ ਮੌਤ ਆਵੇ ਸਾਨੂੰ ਸਭ ਛੇਤੀ ਮੁਕਤੀ ਮਿਲੇ ਬੋਤਨੂ ਮੁਕਤੀ ਸਮਝਦੇ ਰਹੋ ਜਲ ਮੈਂ ਡੁੱਬਤ ਕਿਤੇ ਅਗ ਮੈਂ ਜਲਦ ਹਨ ਕਿਨੇ ਜਲ ਚ ਡੁੱਬ ਕੇ ਮਰ ਜਾ ਕੇ ਬਸਦੇ ਨੇ ਕਨਾਰੇ ਤੇ ਕਿਤੇ ਮਦੀਨਾ ਮੱਕਾ ਨਿਵਾਸੀ ਦੇ ਵਿੱਚ ਨਿਵਾਸ ਕਰਨ ਲੈਦੇ ਨੇ ਜਾ ਕੇ ਉਦਾਸੀ ਕੇ ਭਰਮਾਇ ਹੀ ਫਿਰਤ ਹਨ ਕੋਰੇ ਹੀ ਫਿਰਦੇ ਨੇ ਉਹ ਟਿਕਦੇ ਹੀ ਨਹੀਂ ਕਿਥਾਂ ਉਹ ਚਲਦਾ ਹੀ ਫਿਰਦੇ ਰਹਿੰਦੇ ਨੇ ਕਰਵਤ ਸਹਿਤ ਕੇਤੇ ਭੂਮ ਮੈਂ ਗੜਦ ਕੇਤੇ ਕਿੰਨੇ ਉਹ ਉੱਥੇ ਕਾਸ਼ੀ ਜਾ ਕੇ ਆਰੇ ਦਾ ਆਪਣੇ ਆਪ ਨੂੰ ਚਰਾ ਦੇ ਵਰਤੇ ਕਾਦੇ ਵਾਸਤੇ ਮੁਕਤੀ ਵਾਸਤੇ ਸ਼ਾਂਤੀ ਵਾਸਤੇ ਗਿਆਨ ਨਹੀਂ ਹੈ ਗਿਆਨ ਵਾਲਾ ਮਾਰਗ ਛੱਡਿਆ ਹੈ ਸੰਸਾਰ ਦਾ ਗਾਨ ਵਾਲਾ ਮਾਰਗ ਛੱਡ ਕੇ ਬੇਦ ਵਾਲਾ ਮਾਰਗ ਬੇਦ ਗਿਆਨ ਨੂੰ ਕਹਿੰਦੇ ਨੇ ਬੇਦ ਵਾਲਾ ਮਾਰਗ ਛੱਡ ਕੇ ੱਟਕੇ ਖਾਂਦੇ ਫਿਰਦੇ ਨੇ ਹੁਣ ਆੜ ਪਤਾਲ ਘਾਉਂਦੇ ਫਿਰਦੇ ਨੇ ਬੇਦ ਦਾ ਮੈਂ ਨਾਮ ਉਤਮ ਸੁਣਿਆ ਨਹੀਂ ਬੇਦ ਦੇ ਵਿੱਚ ਨਾਮ ਨੂੰ ਉਤਮ ਕਿਹਾ ਤਾਂ ਸੁਣਿਆ ਨਹੀਂ ਹੁਣ ਬੇਤਾਲੇ ਫਿਰੇ ਜਿਉ ਬੇਤਾਲੇ ਬੇਤਾਲੇ ਹੋਏ ਫਿਰਦੇ ਨੇ ਪਤਾ ਨਹੀਂ ਕੀ ਕਰੀਏ ਕਿੱਧਰ ਨੂੰ ਜਾਈਏ ਕਰਦੇ ਫਿਰਦੇ ਨੇ ਕੋਈ ਕੁਛ ਕੋਈ ਫਿਰ ਜਾ ਜਾ ਮਾਰ ਆ ਗਿਆ ਕੋਈ ਕਿਵੇਂ ਕਰਦਾ ਕੋਈ ਕਿਵੇਂ ਕਰਦਾ ਆ ਪਾਪੜੀ ਬੁੱਧੀ ਅਨਸਾਰ ਕਰਦੇ ਮੈਂ ਗੱਡ ਤੇ ਕੇ ਖੜੇ ਜਾਂਦੇ ਰਹਿੰਦੇ ਆਪਣੇ ਆਪ ਨੂੰ ਗੱਡ ਰੱਖਦੇ ਵੀ ਇਹ ਤਪੱਸੇ ਸੂਹਾ ਪੈ ਦੁੱਖ ਕਿਤੇ ਸੂਲਾਂ ਦੇ ਉੱਤੇ ਪੈਂਦੇ ਨੇ ਗੱਡਿਆਂ ਦੇ ਦੁੱਖ ਭਰਦਾ ਹਨ ਦੁੱਖ ਭਰਦੇ ਦੁੱਖ ਨੰਨ ਨੰਨੇ ਦੇ ਨੂੰ ਗੈਨ ਮੈਂ ਉੜਤ ਕੇਤੇ ਜਲ ਮੈਂ ਹਰੈਤ ਕੇਤੇ ਕਿਤੇ ਮਨ ਕਰਕੇ ਆਕਾਸ਼ ਵਿੱਚ ਉੜਦੇ ਨੇ ਪਡਾਰੀਆਂ ਬਾਹਰ ਨੇ ਜਿਹੜੇ ਦੱਸਦੇ ਨੇ ਫਿਊਚਰ ਆ ਜਿਹੜੇ ਆਉਣ ਵਾਲਾ ਸਮਾਂ ਦੱਸਦੇ ਨੇ ਜੋਤਸ਼ੀ ਹੋਏ ਹੋਰ ਹੋਏ ਜੋਗੀ ਸੋ ਸਾਕੀਆਂ ਲਿਖੇ ਨੇ ਇਹ ਕਾ ਚੋਣਨੇ ਵਾਲੇ ਨੇ ਐਵੇਂ ਹੀ ੜਾਰੀਆਂ ਬੰਦੀਆਂ ੜਾਰੀਆਂ ਤੇ ਬਣਾਈ ਜਾ ਤੇਰੀ ਜਲ ਮਹਿਰਤ ਕੇਤੇ ਕਿੰਨੇ ਜਲ ਦੇ ਵਿੱਚ ਰਹਿੰਦੇ ਨੇ ਗਿਆਨ ਕੇ ਬਹੀਨ ਜੱਕ ਜਾਰੇ ਹੀ ਮਰਤ ਹੈ ਬਸ ਸਾਰੇ ਗਿਆਨ ਦੇ ਵਿੱਚ ਜੱਕ ਜਾਰੇ ਹੀ ਮਰਤ ਹੈ ਇਹ ਸਾਰੇ ਜਲ ਕੇ ਆਪਣੇ ਅੰਦਰੇ ਜਿਹੜੀ ਚਿੰਤਾ ਦੀ ਅਗਨਾ ਚੱਲੀ ਜਾਂਦੇ ਨੇ ਚਿੰਤਾ ਸਾਰੇ ਨੂੰ ਖਾ ਰਹੀ ਐ ਪ੍ਰਾਪਤੀ ਕੁਝ ਨਹੀਂ ਹੋ ਰਹੀ ਜਿਹਨੂੰ ਪ੍ਰਾਪਤੀ ਨਹੀਂ ਹੋ ਰਹੀ ਕੰਮ ਕੁਝ ਕਰ ਰਿਆ ਪ੍ਰਾਪਤੀ ਹੋ ਨਹੀਂ ਰਹੀ ਚਿੰਤਾ ਦੇ ਨਾਲ ਖਾਦੇ ਜਾਂਦੇ ਨੇ ਸਾਰੇ ਚਿੰਤਾ ਦੀ ਤ੍ਰਿਸ਼ਨਾ ਦੀ ਅੱਗ ਚ ਸੜੀ ਜਾਂਦੇ ਨੇ ਸਾਰੇ ਸੋਧ ਹਾਰੇ ਦੇਵਤਾ ਵਿਰੋਧ ਹਾਰੇ ਦਾਨੋਂ ਵੱਡੇ ਦੇਵਤਾ ਜੀ ਬਾਰੇ ਸੋਧ ਸੋਧ ਕੇ ਹਾਰ ਗਏ ਕੀ ਕਰੀਏ ਕੀ ਨਾ ਕਰੀਏ ਕੀ ਕਰੀਏ ਤੇ ਕੀ ਨਾ ਕਰੀਏ ਸਾਰੇ ਜ ਤਰੀਕੇ ਫੇਲ ਹੋ ਜਾਂਦੇ ਨੇ ਵਿਰੋਧ ਹਾਰੇ ਦਾਨੋਂ ਵੱਡੇ ਸੋਧ ਕਰ ਕਰਕੇ ਦੇਵਤੇ ਆਪਣੀ ਵਰਤ ਨੂੰ ਸੋਧਦੇ ਰਹੇ ਕਰ ਨੇ ਆਏ ਸੰਤ ਨੇ ਨੇ ਇਹ ਰਾਣੇ ਐਡੀਆਂ ਬੱਤਾਂ ਬਣਾ ਲੀਆਂ ਆਪ ਆਪਣੀ ਬੁੱਧ ਹੈ ਜੇਤੀ ਬਣ ਤੈ ਪਰੇ ਪਰਤ ਹੋਇ ਤੇ ਉਹ ਦੂਸਰੀ ਮਤ ਬਣਾਉਣੀ ਦੂਸਰੀ ਨੂੰ ਸੋਧਣਾ ਹੀ ਹੁੰਦਾ ਦੂਜੀ ਨੂੰ ਇਹ ਨਹੀਂ ਵੀ ਕਾਮਯਾਬ ਹੋਈ ਉਹ ਆਦਰੀਕਾ ਬਣਾ ਲਈ ਇਹ ਵੀ ਨਹੀਂ कामयाब ਹੋਇਆ ਹੁਣ ਆਹ ਤਰੀਕਾ ਆਪਣਾ ਲਈ ਇਹ ਹਾਰ ਗਏ ਸਾਰੇ ਸੋ ਸੋਧ ਕੇ ਬੱਤਾਂ ਬਦਲ ਬਦਲ ਕੇ ਆਜਾ ਬੀਰੀ ਕਮਗਰ ਦੀ ਹੁਣ ਦੂਈ ਫੜ ਲਈਏ ਦੂਈ ਕਾ ਬਿਲਾ ਲਈ ਇਹ ਜਾਬੀ ਨਾਲ ਮੇਰੇ ਨਾਟ ਖੋਲੇ ਦੂਈ ਲਾ ਲਈਏ ਸਾਰੀਆਂ ਜਾਬੀਆਂ ਫੇਲ ਹੋ ਗਏ ਨਾਟ ਨਹੀਂ ਖੋਲੇ ਇਹਨਾਂ ਤੇ ਵਿਰੋਧ ਹਾਰੇ ਦਾ ਨੋ ਵੱਡੇ ਜਿਹੜੇ ਬੜੇ ਬੜੇ ਰਾਜੇ ਸੀ ਉਹਨਾਂ ਨੇ ਬੱਤ ਤਾਂ ਕੋਈ ਬਣਾਈ ਉਹਨਾਂ ਨੇ ਤਾਂ ਵਿਰੋਧ ਹੀ ਕਰਤਾ ਸਾਰੇ ਰਿਐਕਟਰ ਉਹ ਵਿਰੋਧ ਕਰ ਕਰਕੇ ਹਾਰ ਗਏ ਇਸ ਬੱਤਾ ਨਵੀਆਂ ਬਣਾ ਬਣਾ ਕੇ ਹਾਰ ਗਏ ਜਿਹੜੀ ਫੇਲ ਹੋ ਜਾਂਦੀ ਸੀ ਰਾਖੇ ਫੇਲ ਕਰਦੇ ਨਵੀਂ ਕਰ ਲੈਂਦੇ ਉਹ ਫੇਲ ਹੋ ਗਈ ਨਵੀਂ ਕਰ ਲੈਂਦੇ ਉਹ ਫੇਲ ਹੋ ਗਈ ਨਵੀਂ ਕਰ ਇਹ ਵੀ ਹਾਰ ਗਏ ਉਹ ਵੀ ਹਾਰ ਗਏ ਬਾਜੀਦ ਹੋਏ ਹਾਰ ਗਏ ਵਿਰੋਧ ਹਾਰੇ ਧਨਵਾ ਵੱਡੇ ਬੋਧ ਹਾਰੇ ਬੋਧਕ ਪ੍ਰਬੋਧ ਹਾਰੇ ਜਾਪ ਸੀ ਜਿਹੜੇ ਬੋਧਕ ਸੀ ਵਿਦਵਾਨ ਸੀ ਉਹ ਗਣ ਕਤਾਬਾਂ ਲਿਖ ਲੇ ਕੇ ਲੈਕਚਰ ਦੇ ਦੇ ਕੇ ਵੀ ਹਾਰ ਗਏ ਜਿਵੇਂ ਸਾਡੇ ਆ ਲੈਕਚਰ ਦਿੰਦੇ ਰੋਸ ਸੈਮੀਨਾਰ ਬਣਾ ਲੈਂਦੇ ਸੈਮੀਨਾਰ ਕਰੀ ਜਾਂਦੇ ਨੇ ਆਪਣੇ ਆਪ ਨੂੰ ਬੁੱਧੀ ਜਿਹੜੇ ਕਾਉਂਦੇ ਨੇ ਆਪਣੇ ਆਪ ਨੂੰ ਸੈਮੀਨਾਰ ਕਰ ਲੈਣ ਨੇ ਰਿਜ਼ਲਟ ਕੋਈ ਨਹੀਂ ਇਹ ਵੀ ਹਾਰ ਗਏ ਸਾਰੇ ਬੋਧ ਹਾਰੇ ਬੋਧਕ ਬੁੱਧੀ ਜੀ ਵੀ ਹਾਰੇ ਜਾਪ ਸੀ ਪਰ ਹਾਰੇ ਜਾਪ ਸੀ ਜਿਹੜੇ ਜਪਣ ਵਾਲੇ ਸੀ ਸੁਭਜਣ ਵਾਲੇ ਸੀ ਕੀਰੂ ਰਮਨ ਸਮਝਦੇ ਸੀ ਗੀਤਾ ਸਮਝਦੇ ਸੀ ਕਰ ਕਰਦੇ ਨਾ ਨਾ ਕਥਾ ਗੀਤਾ ਦੀ ਇਹ ਪ੍ਰਬੋਧ ਨਹੀਂ ਗਿਆਨ ਨੂੰ ਹੋਰ ਉੱਤੇ ਲੈ ਕੇ ਜਾਣਾ ਗਿਆਨ ਦੇ ਉੱਤੇ ਗਿਆਨ ਲੈ ਕੇ ਜਾਣਾ ਇਹ ਪ੍ਰਬੋਧ ਹੈ ਗਿਆਨ ਪ੍ਰਬੋਧ ਹੁੰਦਾ ਜਿਹੜਾ ਅੱਜ ਤੁਸੀਂ ਚੱਲੂ ਗਿਆਨ ਹੈ ਨਾ ਉਦੋਂ ਅੱਗੇ ਦਾ ਗਿਆਨ ਦੇ ਨਾਲ ਇਹਨੂੰ ਕਰਾ ਲੂ ਕਰਨਾ ਉਦੋਂ ਹੋਰ ਅੱਗੇ ਸਮਝ ਕੇ ਕਥਾ ਕਰਨੀ ਪਰਬੋਧ ਹਾਰੇ ਜਪਸੀ ਜਪਸੀ ਇਹ ਜਪਸੀ ਨੇ ਜਪੜਨਾ ਹੋ ਤਾਂ ਸਮਝਣਾ ਸਮਝਣ ਵਾਲੇ ਪ੍ਰਬੋਧ ਕਰ ਕਰਕੇ ਹਾਰੇ ਉਹ ਜੋ ਗ੍ਰੰਥ ਹੈ ਉਹ ਨਹੀਂ ਤੁਹਾਡੇ ਕੋਲ ਰੜਕਦੇ ਹੀ ਪਾਣੀ ਹੋ ਜਾ ਤੁਸੀਂ ਉਹ ਜੋ ਖੜ ਕੇ ਤੁੰਗੜੇ ਹੋਗਾ ਕਥਾ ਕਹਾਣੀਆਂ ਨੂੰ ਰੜਕਣ ਲੱਗੇ ਹੋਣਾ ਸਮਝਣ ਲੱਗੇ ਉਹ ਤੱਕ ਕੀ ਪੱਲੇ ਪੂਗਾ ਜਿਹੜਾ ਇਤਿਹਾਸ ਰੁਰ ਲੜਕਦੇ ਰਹੇ ਉਹਨਾਂ ਦੇ ਕੀ ਬੱਲੇ ਪੈਜੂ ਤਾਂ ਤੱਹੀ ਨਹੀਂ ਰੜਕਦੇ ਤਾਂ ਉਹ ਚੀਜ਼ਾਂ ਜੀ ਤਾਂ ਤਾਂ ਹੈ ਜੀ ਲੱਭਦੇ ਹੁਤਾ ਤੋਤੋਂ ਤਤ ਕਬ ਲੱਭ ਜਾਂਦੋ ਕਾ ਸਹਾਰੇ ਚੰਦਨ ਲਗਾਏ ਹਾਰੇ ਚਵਾਚਾਰ ਚੰਦਨ ਕਸਾ ਕਸਾ ਵਿਚਾਰੇ ਜੰਦੀਆਂ ਨਾਂਗੀਆਂ ਕਿਸੇ ਨੂੰ ਕੁਝ ਨਹੀਂ ਮਿਲਿਆ ਜਿਹੜੇ ਠਿੱਕੇ ਲਾਉਂਦੇ ਰਹੇ ਲਗਾਏ ਹਾਰੇ ਚਵਾਚਾਰ ਚੰਦਨ ਦੇ ਰਗੜੇ ਹੋਏ ਵਿੱਚ ਕੇਸਰ ਵਾਲਾ ਆਇਆ ਹੋਇਆ ਚੋਆ ਅਚਾਰਨ ਬਧਰਾ ਕਰਦੇ ਰਹੋ ਵੀ ਹਾਰ ਕੇ ਨਹੀਂ ਮਿਲਿਆ ਕਿਸੇ ਨੂੰ ਨਹੀਂ ਮਿਲਿਆ ਕੁਝ ਛੱਡਿਆ ਕੋਈ ਨਹੀਂ ਸਾਰੇ ਲੈ ਲਏ ਹਾਰੇ ਪਾਹਣ ਚੜਾਏ ਹਾਰੇ ਪੱਥਰ ਪੂਜ ਪੂਜ ਕੇ ਕਹਿੰਦੇ ਹਾਰ ਗਏ ਵਿਚਾਰੇ ਵੀ ਥੱਕ ਗਏ ਨਹੀਂ ਗੱਲ ਨਹੀਂ ਬਣੀ ਕਿਸੇ ਨੂੰ ਧੰਨੇ ਦੀ ਤਾਂ ਕਹਾਣੀ ਕਰ ਲਈ ਝੂਠੀ ਦੁਬਾਰਾ ਉਹਦਾ ਝੂਠੀ ਕਹਾਣੀ ਸੀ ਉਹਨੂੰ ਸੱਚ ਬਣ ਕੇ ਜੇ ਕਰੀ ਜਾਂਦਾ ਮਿਲਣਾ ਨਹੀਂ ਇੱਥੋਂ ਕੁਝ ਕਹਾਣੀ ਤਾਂ ਝੂਠੀ ਐ ਝੂਠੀ ਕਹਾਣੀ ਵਗੈਰਾ ਲਾਤੇ ਕੋਈ ਲਾਬਸੀ ਚੜਾਈ ਜਾਂਦੇ ਨੇ ਵੀ ਤੂੰ ਕਹਿੰਦਾ ਤਾ ਮੈਂ ਖਾਊਗਾ ਨਾ ਉਹਨੇ ਖਾਣੀ ਐ ਚੜਾਏ ਹਾਰੇ ਲਾਬਸੀ ਚੜਾ ਲਾਬਸੀ ਜਿਹੜਾ ਹਾਰੇ ਗਏ ਸਾਰੇ ਉਹ ਤਾਂ ਸਾਖੀਓ ਝੂਠੀ ਸੀ ਜੇ ਸੱਚੀ ਹੁੰਦੀ ਤਾਂ ਹੋਰ ਲੋਕੀ ਖਾਣਦਾ ਬਾਅਦ ਚ ਹਾਂ ਗਾ ਹਾਰੇ ਗੋਰਨ ਮਨਾਏ ਹਾਰੇ ਮੜੀਮਟ ਆ ਜਣੀਆਂ ਗੋਰਾ ਨੇ ਕਬਰਾਂ ਨੇ ਇਹਨਾਂ ਨੂੰ ਗਾ ਕੇ ਦਰਸ਼ਨ ਕਰ ਕਰਕੇ ਲੋਕ ਹਾਰ ਗਏ ਰੋਜ਼ ਅੱਠਵੇਂ ਦਿਨ ਜਾਂਦੇ ਰਹੇ ਨਾ ਅੱਠਵੇਂ ਦਿਨ ਕਵਰਾਂ ਦੇ ਮੈਲੇ ਲੱਗਦੇ ਨੇ ਉਹ ਗਾਇਬ ਹੋਣ ਦੇ ਤੌਰ ਕੀ ਕਰਦੇ ਨੇ ਕਾ ਨੂੰ ਗੋਰਾ ਕੇ ਥੱਕ ਗਏ ਬੜੀਆਂ ਮਠਾਂ ਨੂੰ ਬੁਲਾਉਣ ਵਾਲੇ ਛੇੜੇ ਨੇ ਇਸ ਦੂਰ ਹੈ ਉਹ ਮੜੀ ਮਾਟ ਉਹ ਬੁਲਾ ਬੁਲਾ ਕੇ ਵੀ ਹਾਰ ਗਏ ਕੁਛ ਨਹੀਂ ਪ੍ਰਾਪਤੀ ਹੋਈ ਕਿਸੇ ਨੂੰ ਗਿਆਨ ਪ੍ਰਾਪਤ ਨਹੀਂ ਹੋਇਆ ਪਰਮੇਸ਼ਰ ਦਾ ਗਿਆਨ ਵੀ ਪ੍ਰਾ ਆਤਮ ਗਿਆਨੀ ਨਹੀਂ ਬਣੇ ਆਤਮਾ ਨਹੀਂ ਜਾਣੀ ਉਹ ਆਤਮਾ ਨਹੀਂ ਗਰਦਾ ਸਾਰੀ ਉਹਦੇ ਸਰੀਰ ਦੀ ਆ ਉੱਤੇ ਦੱਬਿਆ ਦਾ ਸਰੀਰ ਹੋਇਆ ਜਿੱਥੇ ਤੁਸੀਂ ਗੌਰ ਆਤਮਾ ਦਾ ਗਿਆਨ ਕਿੱਥੋਂ ਆਉਲਦਾ ਹੈ ਆਤਮਾ ਨਾ ਦੇ ਕੰਮ ਬੜੀ ਲੈ ਲਈ ਉਹਦਾ ਪੁੱਠੇ ਪਾਸੇ ਨੂੰ ਤੀਜੀ ਵੀੜੀ ਚਲੀ ਗਈ ਹੋਰ ਲੀਪ ਹਾਰੇ ਭੀਤੋਂ ਲਗਾਏ ਹਾਰ ਛਾਪ ਸੀ ਪੇ ਅਧਵਾਰਾਂ ਲਪਲਪ ਕੇ ਉਹ ਲੋងਾਂ ਦੇ ਸਾਜੀ ਲਾਉਂਦੇ ਨੇ ਹੱਥ ਲਾਉਂਦੇ ਨੇ ਭੱਜੇ ਇਹਨ ਗੰਨਾਂ ਲਪਲਪ ਕੇ ਹਾਰ ਗਏ ਛਾਪਾਂ ਨਾਲ ਆ ਗਏ ਉਹ ਪੱਜੇ ਲਗਾਏ ਹਾਰ ਛਾਪ ਸੀ ਲੋਨਾਂ ਨੇ ਦਵਾਲੀਆਂ ਨੂੰ ਹੋਰ ਹੋਰ ਦਸਾਈਂ ਸਾਜੀ ਲਾਉਂਦੇ ਨੇ ਉਹਦੇ ਕੀ ਇਹ ਲਾ ਲਾ ਕੇ ਹਾਰ ਗਏ ਸਾਰੇ ਗਾਏ ਹਾਰੇ ਗੰਧਰਬ বাজਾਏ ਹਾਰੇ ਕਿਨਰ ਸਭ ਗੰਧਰਵ ਰਾਗ ਬਚਾਉਂਦੇ ਬਚਾਉਂਦੇ ਬਜਾਰੇ ਹਾਰ ਗਏ ਸਾਡੇ ਢੋਲ ਗੀਆਂ ਬਾਜੇ ਲਈ ਫੱਦਨ ਤਪਲੇ ਲਈ ਫੱਦਨ ਸਾਰੇ ਰਾਗੀ ਕੀ ਕਹਿੰਦੀ ਹੈ ਸਾਰੇ ਹਾਰ ਗਏ ਹਾਰੇ ਗੰਧਰਵ ਰਾਗੀ ਨੇ ਗੜਾ ਪਾੜ ਪਾੜ ਕੇ ਥੱਕ ਗਏ ਹਾਰੇ ਕਿਨਰ ਸਭ ਕਿਨਰ ਜਿਹੜੇ ਨੇ ਬਜਾ ਬਜਾ ਕੇ ਥੱਕ ਕੇ ਤਪਤਾ ਹਰੇ ਤਪਸੀ ਜਿਹੜੇ ਪੰਡਤ ਨੇ ਵਿਚਾਰੇ ਕਥਾ ਵਾਚਕ ਨਾ ਸਾਡੇ ਵਿਦਵਾਨ ਪੰਡਤ ਹੁੰਦੇ ਉਹ ਚ ਹਰੇ ਪੰਡਤ ਉਹ ਵੀ ਪੱਜ ਗਏ ਉਹਨਾਂ ਨੂੰ ਵੀ ਕੁਝ ਨਹੀਂ ਮਿਲਿਆ ਤਪਤਾ ਹਰੇ ਨਾ ਉਹ ਵੀ ਪੱਜ ਗਏ ਤਪਤਾ ਹਰੇ ਤਪਸੀ ਅਰੇ ਦੂ ਦੂਏ ਨੇ ਸਾਡੇ ਕਈ ਤਪ ਕਰਨ ਵਾਲੇ ਨੇ ਸਾਡੇ ਵੀ ਜਿਹੜੇ ਕਹਿੰਦੇ ਨੇ ਜੀ ਆ ਕਿਸੇ ਦਾ ਝੂਠਾ ਨਹੀਂ ਖਾਣਾ ਉਹ ਨਹੀਂ ਖਾਣਾ ਆਪੇ ਬਣਾ ਕੇ ਖਾਣਾ ਉਹ ਵੀ ਪੰਜ ਹਾਰੇ ਕਿਸੇ ਨੂੰ ਕੁਝ ਨਹੀਂ ਪ੍ਰਾਪਤ ਹੋਇਆ ਉਹ ਵੀ ਪੱਛ ਗਏ ਸਾਰੇ ਕਰ ਦੇ ਦਰਦੇ ਬਿਵੇਕ ਧਾਰਨ ਕਰੀ ਫਿਰਦੇ ਅਸੀਂ ਹੱਥ ਨਹੀਂ ਲਾਉਣ ਦਿੰਦੇ ਦੂਏ ਨੂੰ ਦੁੱਧ ਸਾਡੀਆਂ ਮਾਸ ਦਾ ਪਜਾ ਉਹਨਾਂ ਦੇ ਚਲਾ ਗਿਆ ਨਾ ਪਰਲੇ ਜ ਫੇਰ ਹੀ ਗੁਗਲ ਤੁਸੀਂ ਲਾ ਸਕਦੇ ਫੇਰ ਆਲੇ ਫੇਰ ਫਟਿਆ ਗਿਆ ਪਹਿਲਾਂ ਆਪੇ ਜੋਏ ਉਸੇ ਦਾ ਦੁੱਧ ਉਸ ਨੂੰ ਹੱਥ ਨਹੀਂ ਲਾਉਣ ਦਿੰਦੇ ਫੈਲਾਂ ਜਾਂ ਕੁਛ ਵੀ ਹੋਵੇ ਜਾਂ ਉਹਨਾਂ ਦੇ ਪੰਡੇ ਚ ਪੈ ਗਿਆ ਫਿਰ ਹੱਥ ਨਾਲ ਲਓ ਫਿਰ ਉਹ ਪੰਡਤ ਵਾਲੀ ਉਹ ਗੱਲ ਹੋ ਗਈ ਨਾ ਚੌਕੇ ਉੱਪਰ ਕਿੱਥੇ ਉਹਨਾਂ ਦੇ ਪਾਲੀ ਨੂੰ ਹੱਥ ਲਾ ਤਾਂ ਫਿਰ ਗਿਆ ਉਹਦੇ ਚੱਕੀ ਦਾ ਆਟਾ ਥੋੜਾ ਉਸੇ ਤੋਂ ਸਾਡਾ ਪਰ ਉਹਨਾਂ ਕੋਲ ਜੇ ਆਟਾ ਆ ਗਿਆ ਫਿਰ ਨਹੀਂ ਹੱਥ ਲਾ ਸਕਦੇ ਕੀ ਗਿਆ ਗੱਲ ਸਾਰੀ ਕਿਤੇ ਗਿਆ ਅੰਤਗਿਆਨ ਗਿਆਨ ਕਿਥੇ ਰਹਿ ਗਿਆ ਗਿਆਨ ਉਹ ਦੂਰ ਵਿਗੜ ਗਿਆ ਗਿਆਨ ਹੋਰ ਜਗ੍ਹਾ ਰਹਿ ਗਿਆ ਇਹ ਤਾਂ ਪੜਨਤਾਲਾ ਦਾ ਫੜ ਲਿਆ ਇਹ ਤਾਂ ਪੜਨਤਾਲਾ ਰਾਸੀ ਇਹ ਸਰਾ ਕੁਛਲੀ ਸੀ ਪ੍ਰਾਪਤੀ ਅਗਿਆਨਤ ਹੋ ਰਹਾ ਹੈ ਤਾਂ ਪਹਿਲਾਂ ਲੋਕ ਕਰਦੇ ਹੀ ਸੀ ਉਹੀ ਅਸੀਂ ਕਰਨਾ ਇਹ ਤਾਂ ਛਡਾਇਆ ਸੀ ਰਾ ਇਹ ਤਾਂ ਛਡਾਇਆ ਸੀ ਰਾ ਜਿਹੜੇ ਰਾ ਪੈ ਗਏ ਇਹ ਤਾਂ ਬੰਦ ਕਰਦਾ ਹੀ ਸੀ ਦੇਗੇ ਚੌਕਾ ਕੱਢੀਕਾਰ ਤਾਂ ਕਰਦਾ ਹੀ ਸੀ ਫਿਰ ਅਸੀਂ ਵੀ ওই ਗੱਲ ਨਾਲ ਕੇ ਪ੍ਰਾਪਤੀ ਕਿ ਹੋਈ ਕੁਛ ਵੀ ਨਾ ਰਾਗੰ ਨਾ ਰੰਗੰ ਨਾ ਰੂਪੰ ਨਾ ਰੇਖੰ ਨਾ ਰਾਗੰ ਨਾ ਰੰਗੰ ਰਾਗ ਤੇ ਪਰੇ ਹੈ ਤੂੰ ਪਰ ਰਾਗੀ ਰਾਗਿਆਂ ਦੇ ਹੱਥ ਚੱਕੀ ਪਈ ਐ ਰਾਗਿਆਂ ਦੇ ਹੱਥ ਚੱਕੀ ਪਈ ਐ raag wala raagyan de school khulde na college khulde na oh kanda raag to pare raagna da raag to pare raag na prapti nahi hai raag e na de bahar raag na to pare tu raag to da awaaz jehdi ho nad hai raag a tune tune da na raag ਰੱਲਤਾ ਰਿਉਂਦਾ ਨਾ ਹਾਂ ਤੂੰ ਆਵਾਜ਼ ਜਿਹੜੀ ਨਿਕਲਦੀ ਹੈ ਉਹ ਨਾਦ ਆਵਾਜ਼ ਵਿੱਚ ਗਿਆਨ ਹੈ ਨਾ ਰாகੇ ਨਾਦੇ ਬਾਹਰ ਚਾਹੇ ਨਾਦ ਵੀ ਹੈ ਚਾਹੇ ਗੁਰਬਾਣੀ ਵੀ ਤੁਸੀਂ ਕਹੋਦੇ ਹੋ ਪਰ ਚੇਤਨ ਉਹਦੇ ਬਾਹਰ ਖੜਾ ਆਤਮਾ ਆਤਮਾ ਨਹੀਂ ਹੈ ਉਹਦੇ ਵਿੱਚ ਆਵਾਜ਼ ਦੇ ਵਿੱਚ ਆਤਮਾ ਬੋਲ ਰਹੀ ਹੈ ਜਰੂਰ ਆਤਮਾ ਬੋਲ ਰਹੀ ਆ ਆਤਮਾ ਨੀ ਹੁੰਦੀ ਆਵਾਜ਼ ਦੇ ਵਿੱਚ ਆਹ ਜੋ ਬੋਲ ਰਹੀ ਆ ਉਹ ਆਤਮਾ ਹੈ ਆਤਮਾ ਪਿੱਛੇ ਖੜੀ ਆ ਆਵਾਜ਼ ਅੱਗੇ ਜਾਂਦੀ ਹੈ ਆਵਾਜ਼ ਆਤਮਾ ਕਿੱਥੇ ਹੁੰਦੀ ਹੈ ਨਾਲ ਆਤਮਾ ਕਿੱਥੇ ਹੁੰਦੀ ਹੈ ਉਹ ਤਾਂ ਮੂੰਹ ਦਾ ਕਹਿਬਾਉ ਹੈ ਜਿੰਨਾ ਚਿਰ ਇਹ ਦੋਹਾਂ ਗੱਲਾਂ ਨੂੰ ਨਹੀਂ ਸਮਝਦੇ ਕੱਖਰੀ ਬੱਲੇ ਪੈ ਸਕਦਾ ਮੂੰਹ ਕਹਿ ਕੀ ਹੈ ਭਾਉ ਬਹੁਤ ਜਾਦੂ ਹੁੰਦੀ ਹੈ ਬਹੁਤ ਆਤਮਾਨੀ ਹੁੰਦੀ। ਬਹੁਤ ਆਤਮ ਨੂੰ ਜਗਾ ਸਕਦੀ ਹੈ। ਕਿਸੇ ਦੂਸਰੀ ਆਤਮ ਨੂੰ ਜਗਾ ਸਕਦੀ ਹੈ। ਬਹੁਤ ਇੱਕ ਗਿਆਨ ਹੁੰਦਾ, ਗਿਆਨ ਜੇ ਲੱਗ ਜਾ ਤੀਰ ਉਹਦੇ। ਬਹੁਤ ਜੇ ਬਾਣ ਬਾਣੀ ਜੇ ਬਾਣਣ ਕੇ ਲੱਗ ਜਾ ਕਿਸੇ ਤੇ। ਕਬੀਰ ਖਾਂ ਦਾ ਗਵੀਰ ਸਾਧਗੁਰ ਬਾਣ ਜੋ ਹੈ ਇੱਕ। ਇਹਦਾ ਬਾਣ ਨੇ ਬਾਣੀ ਦੇ ਚਲਾਈ ਦੇ ਹੁੰਦੇ। ਇਹ ਤਾਂ ਆਤਮ ਜਗਾਉਣ ਵਾਸਤੇ। ਬਾਣੀ ਦੇ ਬਾਣ ਤੀਰ ਚਲਾਏ ਨੇ ਇਹਨਾਂ ਨੂੰ ਉਹਦਾ ਹੰਦ। ਪ੍ਰਾਂਧੀ ਜੀ ਨੂੰ ਉਹਦਾ ਰੁਖ ਆਖਰੀ ਮਿਲਦਾ ਹੁੰਦਾ। ਜਿਹਨੂੰ ਬਾਣੀ ਪਰੇਸ਼ਾਨ ਨਹੀਂ ਕਰਦੀ ਉਹਨੂੰ ਕੱਖ ਨਹੀਂ ਮਿਲਦਾ ਤੂੰ। ਇਹਨਾਂ ਪਰੇਸ਼ਾਨ ਕਰਦੀ ਹੈ ਪਰੇਸ਼ਾਨ ਕਰਨਾ ਚਾਹੀਦਾ ਇਹਨੂੰ ਤੂੰ। ਮਲੇ ਆਉ ਨੂੰ ਆਜ ਪਰੇਸ਼ਾਨ ਕੀਤਾ ਇਹ। ਮੇਰਾ ਕੁਝ ਖੋ ਗਿਆ ਮੈਂ ਉੱਡੇਰਾ ਪੈ ਗਿਆ ਬਹੁਤ ਦੂਰ ਚਲਾ ਗਿਆ। ਕਿ ਇਹ ਕਿਹਦਾ ਹੋਊਗਾ ਜਿਹੜਾ ਰਾਹ ਭੁੱਲ ਕੇ ਆदमी 40 ਸਾਲ ਕੋਈ ਤੁਰਦਾ ਤੁਰਦਾ ਗਲਤ ਰਸਤੇ ਚਲਾ ਗਿਆ ਜਦੋਂ ਉਹ ਰਸਤੇ ਦਾ ਪਤਾ ਲੱਗਣਾ ਪਰੇਸ਼ਾਨੀ ਹੋਊ ਤਾਂ ਕੀ ਹੋਊਗਾ ਧੀਆਂ ਕਮਾਈ ਨਹੀਂ ਕੀਤਾ ਸ਼ੁਰੂ ਗੁਰਦੁਆਰੇ ਜਾਂਦੇ ਰੇ 50 ਸਾਲ ਹੋ ਗਏ ਜਦੋਂ ਉਹਨੂੰ ਪਤਾ ਲੱਗਿਆ ਪਰੇਸ਼ਾਨੀ ਹੋਊ ਤਾਂ ਕੀ ਹੋਊਗਾ ਤੇਰੇ 50 ਸਾਲ ਖਰਾਬ ਹੋ ਗਏ ਅਨੰਦ ਕਿਹੜੀ ਗੱਲ ਦਾ ਹੁੰਦਾ ਉਨਾ ਨੋਨਾ ਸਰਪੀਡ ਦੀ ਗੋਲੀ ਦਾ ਜਿਹੜਾ ਨੇ ਰਾਗ ਨੂੰ ਕਰਨ ਰਸ ਬਣਾਇਆ ਹੋਇਆ ਹੈ ਨਾ ਉਹ ਨਾਲੇ ਰੂ ਜੇ ਸਰਪੀਡ ਹੁੰਦੀ ਹੈ ਗੋਲੀ ਲੈ ਲਈ ਹਟ ਗਈ ਸਮਝ ਆਈ ਕਿ ਟੈਂਪਰੀਰੀ ਇਲਾਜ ਕਰ ਲਿਆ ਉਹ ਨਸ਼ਾ ਹੋ ਗਿਆ ਜੇ ਨਹੀਂ ਸੁਣਦੇ ਤਾਂ ਸਿਰ ਦੁਖਦਾ ਨਹੀਂ ਗੋਲੀ ਲੈਂਦੇ ਸਿਰ ਦੁਖਦਾ ਇਹ ਤਾਂ ਨਸ਼ਾ ਹੈ ਇਹ ਨਸ਼ਾ ਹੈ ਇਹ ਰਿਸ਼ਾਇਤੀ ਲਾਉਣੋ ਗਿਆਨ ਵਿਚਾਰ ਕਰਨੀ ਸੀ ਗਿਆਨ ਵਿਚਾਰ ਗਿਆਨ ਵਿਚਾਰ ਨਸ਼ਾ ਪਰ ਜਿਆ ਗਿਆਨ ਵਿਚਾਰ ਵਾਲਾ ਰਿਹਾ ਲੱਗ ਜਾ ਫਿਰ ਗਿਆਨ ਵਿਚਾਰ ਛੁੱਟਦੀ ਹੋਣੀ ਹੈ ਫੇੜੀ ਛੁੱਟਦੀ ਹੈ ਗਿਆਨ ਵਿਚਾਰ ਨਸ਼ਾ ਹੈ ਆਪਣੇ ਆਪ ਚ ਜੇ ਨਾ ਕੇ ਨਸ਼ਾ ਕਰੋ ਨੀ ਨਸ਼ਾ ਤਾਂ ਚੱਲ ਨਹੀਂ ਸਕਦਾ ਆ ਨਸ਼ਾ ਇਹ ਤਾਂ ਨਸ਼ਾ ਹਰ ਵਕਤ ਇਹ ਨਸ਼ੇ ਦੇ ਖਿਲਾਫ ਨੇ ਨਾ ਆਪਣੇ ਆਪ ਵਿੱਚ ਇੱਕ ਨਸ਼ਾ ਹੈ ਬੱਚੀ ਨੂੰ ਪਾਣੀ ਦਾ ਨਸ਼ਾ ਹੈ ਜੇ ਪਾਣੀ ਥੋੜਾ ਹੋ ਜਾਣਾ ਉਲਜਿੰਤਾ ਲੱਗ ਜਾਂਦੀ ਹੈ ਪਾਣੀ ਘਟਣ ਲੱਗ ਜਾ ਜਿੱਥੇ ਉਹ ਰਹਿੰਦੀ ਹੈ ਚਿੰਤਾ ਲੱਗ ਜਾਂਦੀ ਹੈ ਜਿੰਨਾ ਪਾਣੀ ਜ਼ਿਆਦਾ ਹੋਵੇ ਉਹਨੂੰ ਕੋਈ ਚਿੰਤਾ ਨਹੀਂ ਹੈ ਹੋਰ ਵੀ ਆਵੇਂ ਵੀ ਉਹ ਨਿਕੜਾ ਡੁੱਬਣ ਦੇ ਵਰਦੇ ਵਿੱਚ ਗਿਆਨ ਜਿੰਨਾ ਵੀ ਹੋਵੇ ਉਹਨਾਂ ਹੀ ਥੋੜਾ ਹੈ ਜਿੰਨਾ ਥੋੜਾ ਹੈ ਜਿਹੜੇ ਗਿਆਨ ਦੀ ਥਾ ਹੈਗੀ ਮੈਨੂੰ ਪਤਾ ਮੇਰੇ ਕੋਲ ਕਿੰਨਾ ਗਿਆਨ ਹੈ ਉਹ ਥੋੜਾ ਹੈ ਉਹ ਥੋੜਾ ਹੈ ਮੇਰੀ ਬਾਤ ਥੋੜੀ ਨਾ ਜਿੰਨਾ ਮੇਰੇ ਕੋਲ ਥੋੜਾ ਹੈ ਮੈਨੂੰ ਹੋਰ ਚਾਹੀਦਾ ਜਿੰਨਾ ਹੋ ਮੇਰੇ ਕੋਲ ਆ ਗਿਆ ਉਹ ਵੀ ਥੋੜਾ ਹੋਰ ਚਾਹੀਦਾ ਜਿੰਨਾ ਹੋਰ ਆ ਗਿਆ ਉਹ ਵੀ ਹੋਰ ਥੋੜਾ ਹੋਰ ਚਾਹੀਦਾ ਮੱਛੀ ਆ ਉਹਨੂੰ ਪਾਣੀ ਉਹਦੀ ਭੁੱਖ ਕਿੱਥੇ ਗਈ ਪਾਣੀ ਦੋ ਉਹਦੋਂ ਜੂਗੀ ਪਾਣੀ ਨੂੰ ਪਾਣੀ ਨੂੰ ਪੂਰ ਜੂਗੀ ਹਰ ਬਸਰ ਜੂਗਾ ਹਰ ਬਸਰ ਤੇ ਸਦਾ ਖਵਾਰੀ ਫਿਰ ਹੈ ਕੋਣਾ ਤੋ ਨਾੜ ਜਗਦੇ ਪੂਰਾ ਹੋਇਆ ਕਿਸੇ ਦਾ ਨਾਮ ਪਿਆ ਜੇ ਲਾਲ ਜੀ ਦੀ ਹੈ ਜਿੱਦਣ ਨਾੜ ਕੇ ਬੰਦ ਹੋ ਗਿਆ ਨਾ ਨਾਮ ਦਾ ਲੋੜ ਆਪਾਂ ਨੂੰ ਬਸ ਜਦ ਤੱਕ ਹਰਵੇਂ ਸਰਗਿਆ ਖਵਾਰੀ ਸ਼ੁਰੂ ਹੋਗੀ ਨਾ ਰਾਗੰ ਦਾ ਰੰਗੰ ਨਾ ਰੂਪੰ ਨ ਰੇਖੰ ਨਾ ਦਾ ਰੂਪ ਹੈ ਨਾ ਕੋਈ ਰੇਖ ਹੈ ਨਾ ਰਾਗਾ ਰਾਂਗਾ ਉਹਨੂੰ ਰਾਗ ਕੋਈ ਨਹੀਂ ਹੈ ਕੋਈ ਰਾਗ ਤਾਂ ਸਾਨੂੰ ਇਹ ਕੋ ਰਾਗ ਲੱਪ ਉਹਦੀ ਭੁੱਖ ਕੋਈ ਨਹੀਂ ਭੁੱਖ ਰਾਗ ਹੈ ਸਾਡਾ ਤਾਂ ਉਹ ਨਹੀਂ ਕਰਦਾ ਨਾ ਮੋਹਨ ਦਾ ਕਰੋਹ ਨਾ ਦਰੋਹੋਂ ਨਾ ਦੇਖੰ ਦੇਖੋ ਸਾਰੇ ਚਾਹੇ ਸਾਰੇ ਜੀਵ ਹੁੰਦੇ ਨੇ ਪਰ ਉਹ ਕਿੱਜ਼ਾ ਨਹੀਂ ਹੈ ਉਹ ਤਾਂ ਹੋਵੇ ਉਹ ਤਾਂ ਉੱਥੇ ਮੇਰਾ ਹੈਗਾ ਮੇਰਾ ਹੈ ਨਹੀਂ ਉਹਦਾ ਉੱਤੇ ਹੁੰਦਾ ਸਾਰੇ ਉਹਦੇ ਨਾਲ ਹੋ ਗਈ ਦੇ ਨਾਲ ਉੱਤੇ ਮੋਹ ਨਹੀਂ ਹੁੰਦਾ ਜਿੱਥੇ ਉੱਤੇ ਪ੍ਰੇਮ ਹੁੰਦਾ ਜਿੱਥੇ ਪ੍ਰੇਮ ਹੁੰਦਾ ਤੇ ਮੋਹ ਨਹੀਂ ਹੁੰਦਾ ਜਿੱਥੇ ਮੋਹ ਹੁੰਦਾ ਉੱਤੇ ਪ੍ਰੇਮ ਨਹੀਂ ਹੁੰਦਾ ਮੋਹ ਹੁੰਦਾ ਕੁਝ ਮੋਹ ਹੈ ਬੰਦਿਆਂ ਜੋ ਕੁਝ ਆਪੜੇ ਪੁਣਾ ਲਗੋ ਉਹ ਜਿਹੜਾ ਉਹਨਾਂ ਨਾਲ ਪ੍ਰੇਮ ਆ ਉਹਨੂੰ ਮੋਹ ਕਹਿੰਦੇ ਨੇ ਇਹ ਸਾਰੇ ਹੀ ਆਪਣੇ ਨੇ ਤੇ ਬੰਨੋ ਉਹਦੇ ਕੋਈ ਚੀਜ਼ ਨਹੀਂ ਫਿਰੋਤ ਨਾ ਕਰੋ ਹੰ ਨਾ ਗੁੱਸਾ ਕਰੋਦਾ ਗੁੱਸਾ ਕੀ ਦੇਤੇ ਰੁੱਸਿਆ ਬੰਦਰ ਨੂੰ ਨਾ ਰਾਇ ਰੁੱਸਿਆ ਬੰਦੇ ਨੂੰ ਗੁੱਸਾ ਨਹੀਂ ਦਿੰਦਾ ਰੁੱਸਿਆ ਦਾ ਗੁੱਸਾ ਹੁੰਦਾ ਦਾ ਗੁੱਸਾ ਲਾਉਣ ਰੁੱਸਿਆ ਰੁੱਸਿਆ ਆਇਆ ਬੰਦਾ ਜਿਹੜੇ ਬੰਦਾ ਰੁੱਸਿਆ ਹੋਇਆ ਹੋਵੇ ਕੋਈ ਗਿਆਨੀ ਹੋਵੇ ਕੋਈ ਨਿਆਣਾ ਹੋਵੇ ਉਹ ਤਾਂ ਗੁੱਸਾ ਕਰੀਦਾ ਹੁੰਦਾ ਕੁਛ ਨਾ ਨਹੀਂ ਉਹਦੇ ਬਨਣ ਦੇ ਹੋਰ ਤਰੀਕੇ ਬਹੁਤ ਨੇ ਉਹ ਸਾਰੀ ਟੈਕਨੀਕ ਬਣਾਈ ਹੋਈ ਹੈ ਗੁਰਬਾਣੀ ਚ ਗੁਰਬਾਣੀ ਦੇ ਰੁੱਸੇ ਨੂੰ ਬਣਾਉਣ ਦੀ ਉਹ ਗੱਲ ਕੀਤੀ ਹੈ ਕਹਿੰਦਾ ਰੁੱਸੇ ਨੂੰ ਬਣਾਈਏ ਨਾ ਪਾਟੇ ਨੂੰ ਸੋਹੇਰ ਗੱਲ ਕਿਵੇਂ ਬਣੇ ਪਾਟੇ ਨੂੰ ਸੁਣਾ ਵੀ ਹੈ ਰੁੱਸੇ ਨੂੰ ਬਣਾਇਆ ਹੈ ਸੋਨੇ ਦੀ ਰੂਪੇ ਦਾ ਤਾਗਾ ਨਾ ਮੈਂ ਕਹੇਦਾ ਹਰ ਸਭ ਲਾਗਾ ਸੁਦਾ ਪਟ ਪਟਿਆ ਸਨ ਕਰੀ ਹੋਇਆ ਇਹ ਰੂਸੀਆ ਮਨ ਹੈ ਪਟਿਆ ਸਨ ਗੁਰਬਾਨੀ ਇਹੀ ਕੰਮ ਕਰਦੀ ਹੈ ਨਾ ਦਰੋਹ ਨਾ ਦਵੇਖਣ ਅ ਦਰੋਹਾ ਨਾਲ ਹੋਣਾ ਆਪਣੇ ਨਾਲ ਧਰੋਹ ਕਰੀਦਾ ਹੁੰਦਾ ਕਿਹਦੇ ਵਾਸਤੇ ਧਰੋਹ ਕਰਨਾ ਵਾਸਤੇ ਕਰਨਾ ਧਰੋਹ ਨਾ ਦਵੇਖਣ ਕੋਈ ਦੇਸ਼ ਕਿਹਦੇ ਨਾਲ ਕਰਦੀ ਹੈ ਦੁਆ ਨ ਕਰੀ ਤੇ ਦੁਆ ਹੈ ਹੀ ਨਹੀਂ ਕੋਈ ਜੇ ਤੇ ਦੁਆ ਨਹੀਂ ਦੁਆ ਹੀ ਹੁੰਦਾ ਹੀ ਨਾ ਜਾਤੰਗ ਕਰਮ ਵੀ ਕੋਈ ਨਹੀਂ ਕਰਨ ਨੂੰ ਕੁਝ ਨਹੀਂ ਜੋ ਚਾਹੁੰਦਾ ਕਰਮ ਦਾ ਉਹ ਕਰਦਾ ਜਿਹਦੇ ਚਾਹੇ ਤੇ ਕੁਝ ਹੋਵੇ ਨਾ ਜਿਹਦੇ ਚਾਹੇ ਤੇ ਜੋ ਹੋ ਜਵੇ ਜਿਹਦੇ ਘਰ ਵਿੱਚ ਸਭ ਕੁਝ ਹੋਵੇ ਤੂੰ ਉਹ ਕਰਮ ਕਰਦਾ ਰਹੇਗਾ ਕਰਤਾ ਤੇਰੇ ਸਭ ਕੁਝ ਹੈ ਨਾ ਕੋਈ ਕਰਮ ਕੀ ਗੱਲ ਹੈ ਨਾ ਪਰਮੰਗ ਨਾ ਪਰਮ ਨੂੰ ਕੋਈ ਨਾ ਕਰਮ ਹੈ ਪਰਮ ਵੀ ਕੋਈ ਨਹੀਂ ਨਾ ਜਨਮੰਗ ਨਾ ਜਾਤੰ ਤਾਂ ਜਨਮ ਵੀ ਕੋਈ ਨਹੀਂ ਵੀ ਕੋਈ ਜਾਤ ਦਾ ਮਤਲਬ ਸਰੀਰ ਹੁੰਦਾ ਨਾ ਮਿਤਰੰਗ ਨਾ ਸ਼ਤਰੰਗ ਨਾ ਪਿਤਰੰਗ ਨਾ ਮਾਤੰ ਨਾ ਕੋਈ ਮਿੱਤਰ ਹੈ ਬਿੱਤਰ ਤਾਂ ਤਾਂ ਜੇ ਮਿੱਤਰ ਉਹਦਾ ਸ਼ਤਰੂ ਵੀ ਹੋਗਾ ਕੋਈ ਦਸ਼ਮਲੀ ਹੋਊਗਾ ਸ਼ਤਰੂ ਵੀ ਕੋਈ ਨਹੀਂ ਮਿੱਤਰ ਵੀ ਕੋਈ ਨਹੀਂ ਸਾਵੇ ਆਪਣੇ ਨੇ ਛਤ੍ਰੂ ਵੀ ਤੁਸ ਤਾਂ ਹੋਵੇ ਕੁਛ ਆਪਣੇ ਨੇ ਕੁਛ ਆਪਣੇ ਨਹੀਂ ਹੈਗੇ ਨਾ ਪਿਤਰੰਗ ਨਾ ਮਾਤਮ ਨਾ ਪਿਤਰ ਨਾ ਪਿਤਾ ਨਾ ਮਾਈ ਉਹਨੇ ਤੇ ਤਾਂ ਪਿਤਾ ਮਾ ਹੈਗੇ ਨੇ ਜਿੰਨੀਆਂ ਸਾਖੀਆਂ ਨੇ ਸਾਡੀਆਂ ਪਿਤਾ ਮਾਂ ਦਾ ਬਲੋਦ ਕਰਦੀਆਂ ਸਾਰੀਆਂ ਸਾਖੀਆਂ ਕੋਹ ਸਰੀਰ ਨਾਲ ਜੋੜਦੀਆਂ ਨੇ ਇਸੇ ਕਰਕੇ ਕਿਹਾ ਸੀ ਗੁਰ ਕੀ ਕਰਨੀ ਕਹਾ ਹੈ ਗੁਰ ਕਹਾ ਸਾਰਕਮਾ ਬੋ ਜੇ ਆਹ ਕੱਲ ਬੰਨਾਂਗੇ ਤਾਂ ਉਰੀ ਪੜ ਸਕਦੇ ਇਤਿਹਾਸ ਗੁਰੂਆਂ ਨੇ ਤਾਂ ਆਹੀ ਵੀ ਸੀ ਲਿਖੇ ਇਤਹਾਸ ਲਿਖਣਾ ਮਤਲਬ ਹੈ ਸੀ ਗੁਰਬਾਣੀ ਨੂੰ ਤੋੜਨਾ ਜਿਹਨਰ ਆਤਮਾ ਨਾਲ ਚੱਲਣਾ ਹੈ ਇਤਹਾਸ ਨਹੀਂ ਲਿਖ ਸਕਦਾ ਇਤਹਾਸ ਨਹੀਂ ਲਿਖ ਸਕਦਾ ਨਾ ਨੇਹੰ ਨਾ ਗਹਿੰ ਨਾ ਕਾਮਨ ਨਾ ਤੁਮ ਨੇ ਸਨੇਰੀਏ ਕਿਸ ਨਾਲ 라ਉਣਾ ਕੋਈ ਘਰ ਹੈ ਕਰਨ ਵਾਲੇ ਹੁੰਦਾ ਨਾ ਆਪਣਾ ਜਿਹਾ ਘਰ ਹੈ ਕੋਈ ਉਦਨ ਆਪਣਾ ਦੇਵੇਂ ਹੁੰਦਾ ਨਾ ਕਾਮੰ ਵੀ ਹੁੰਦਾ ਪੀਰਾ ਤੇਰਾ ਵੀ ਹੁੰਦਾ ਲਗਾਉਂਦੀ ਹੁੰਦਾ ਨਾ ਕਰਮੇ ਨਾ ਪੀਤਰਬ ਨਾ ਕਾਮੰ ਨਾ ਤਾਮੰ ਕਾ ਗਾਵਨਾ ਇੱਛਾ ਵੀ ਕੋਈ ਨਹੀਂ ਕੋਈ ਖਾਸ ਘਰ ਵੀ ਨਹੀਂ ਹੈ ਪੁੱਤਰ ਵੀ ਤਾਂ ਨਹੀਂ ਹੋਣਾ ਜੈਜੇ ਸੰਸਾਰੀ ਦੇ ਨਾ ਪਾਮੰ ਪਾਮੰ ਨਾ ਘਰ ਵਾਲੀ ਐ ਔਰਤ ਵੀ ਨਹੀਂ ਕੋਈ ਅਲੇਖੰ ਅਪੇਗੰ ਅਜੋਨੀ ਸਰੂਪੰ ਚ ਵੀ ਨਹੀਂ ਆ ਸਕਦਾ ਚੇਤਨ ਨੂੰ ਅੱਖਰਾਂ ਚ ਕਿਵੇਂ ਬੰਦ ਕਰ ਲੋਗੇ ਚੇਤਨ ਅੱਖਰਾਂ ਚ ਨਹੀਂ ਹੁੰਦਾ ਅਲੇਖੰ ਨਾਮ ਬਣੀ ਉਹਦਾ ਅੱਖਰਾਂ ਦਾ ਨਾਮ ਨੂੰ ਅੱਖਰਾਂ ਚ ਕਿਵੇਂ ਕਰ ਲੋਗੇ ਆਪਣਾ ਗਿਆਨ ਅੱਖਰਾਂ ਚ ਸਿਰਫ ਜੇ ਸੁਣਨਾ ਤੇ ਨਾਮ ਜੇ ਤਾਂ ਪੇਖੜੇ ਤਾ ਤਿਆਨ ਜੇ ਜੇ ਤਾਂ ਬੋਲਣ ਤੇ ਤਾ ਗਿਆਨ ਹੈ ਦੁਸ਼ਟ 170 ਜਾ ਕੇ ਇੱਕ ਸਮਾਨ ਹੈ ਦੁਸ਼ਟਰ ਸ਼ਤਰੂ ਜਿਹਨੂੰ ਇੱਕ ਸਮਾਨ ਦੁਸ਼ਟ ਬੀਤ ਜਾ ਕੇ ਇੱਕ ਸਮਾਨ ਹੈ ਦੁਸ਼ਟ ਬੀਤ ਜਾ ਕੇ ਇੱਕ ਸਮਾਨ ਜਿਹਨੂੰ ਦੁਸ਼ਟ ਔਰ ਬਿੱਤਰ ਬਰਾਬਰ ਨੇ ਜਿਹਦੇ ਵਾਸਤੇ ਜੇ ਬੋਲਣ ਤੇ ਤਾ ਗਿਆਨ ਜਿੰਨਾ ਬੋਲੂ ਸਾਰਾ ਗਿਆਨ ਉਹ ਆ ਬਾਣੀ ਬੋਲੀ ਗਿਆਨ ਨਾ ਨਾਮ ਨਹੀਂ ਹੈ ਇਹ ਗਿਆਨ ਹੈ ਕਿਹੜਾ ਗਿਆਨ ਨਾਮ ਕੀ ਹੁੰਦਾ ਨਾਮ ਦਾ ਗਿਆਨ ਹੈ ਨਾਮ ਕੀ ਹੈ ਨਾਮ ਤੱਕ ਪਹੁੰਚਾਉਂਦੀ ਹੈ ਨਾ ਉਹਦਾ ਬਿਨਾ ਕੰਨਾਂ ਤੇ ਸੁਣਨ ਵਾਲਾ ਉਹ ਬਿਨਾਂ ਕੰਨਾਂ ਤੇ ਸੁਣਨ ਵਾਲਾ ਹੁੰਦਾ ਨਾ ਆਪੇ ਅਜੂਨੀ ਸਰੂਪੰ ਤੇਤਾ ਬੋਲਣ ਤੇਤਾ ਗਿਆਨ ਹੈ ਜੇ ਤਾਂ ਸੁਣਨਾ ਤੇ ਤਾਂ ਨਾਮ ਜਿਹਨੂੰ ਸੁਣੇ ਰਾ ਉਹਨਾਂ ਨੇ ਬਿਨਾਂ ਕਰਨਾ ਤੇ ਨਾ ਹੋ ਸੀ ਜੇ ਤਾਂ ਭੇਖੜ ਤੇ ਤਾਂ ਤੇ ਜੇ ਉਹਨਾਂ ਦੀ ਸਤੀ ਹੈ ਜੜੀ ਉਹਦੀ ਦੇਖਦੇ ਨੇ ਧਿਆਨ ਮੈਂ ਤੇ ਹੰਮ ਤੇ ਹੰਤੇ ਜਾਣ ਮੈਂ ਧਿਆਨ ਉਹਨਾਂ ਦਾ ਤੇ ਹੰਗਾ ਜੇ ਤੋ ਵਿੱਚ ਹੋ ਬਿਨਾਂ ਕਰਨਾ ਤੇ ਆਵਾਜ਼ ਸੁਣਨ ਵਾਲੀ ਵਿੱਚ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖੀ ਅਕਾਥ ਕਹਾਣੀ ਆ ਅਕਾਥ ਕਥਾ ਫੇਰ ਲਿਖੀ ਹੈ ਫੇਰ ਇਹ ਅਕਾਥ ਕਥਾ ਲਿਖੂਦੀ ਹੈ ਇਹ ਗੁਰੂ ਖਾਨ ਦਾ ਕੰਮ ਆਇਆ ਕਹਤਾ ਲਿਖਣੀ ਇਹ ਸਾਰੀ ਆਗਮਨ ਤੋਂ ਪਰੇ ਦੀ ਗੱਲ ਹੈ ਸਾਰੀ ਬੁੱਧੀ ਤੋਂ ਪਰੇ ਦੀ ਗੱਲ ਹੈ ਆਪੇਖੰਗ ਬਸਾਰ ਕੇ ਫਿਰ ਚੀਜ਼ ਮਿਲਦੀ ਹੈ ਹਾਂ ਆਪੇਖੰਗ ਅਜੂਨੀ ਸਰੂਪਨ ਆਪੇਖੰਗ ਹੈ ਕੋਈ ਵੇਖਣੀ ਹੈ ਅਜੂਨੀ ਹੈ ਅਜੂਨੀ ਸਰੂਪ ਤੋਂ ਪਰ ਸਰੀਰ ਤੋਂ ਬਿਨਾ ਸਰੂਪ ਹੈ ਪਰ ਸਰੀਰ ਨਹੀਂ ਹੈ ਸਰੀਰ ਦਾ ਖੰਡ ਦੇਖਣਾ ਸਰੂਪ ਅੱਖਾਂ ਨੂੰ ਚੀਜ਼ਾਂ ਦੇਖੋ ਇਹ ਕੋਈ ਦਾ ਰੂਪ ਹੈ ਕੋਈ ਸਰੂਪ ਸਵੈਮ ਦਾ ਰੂਪ ਹੈ ਉਹਦਾ ਸਵੈਮ ਦਾ ਰੂਪ ਜਿਹੜਾ ਹੈ ਉਹ ਸਰੂਪ ਹੁੰਦਾ ਪਰ ਤੁਝੋ ਸਰੂਪ ਰੂਪ ਨਹੀਂ ਆਇਆ ਰੂਪ ਅੱਖਾਂ ਨੂੰ ਦੇਖਣਾ ਹੁੰਦਾ ਕੰਨ ਦੇ ਘਣਾ ਰੂਪ ਜੋ ਦੀਸੇ ਸੋ ਤੇਰਾ ਰੂਪ ਤੇ ਰੂਪ ਨਹੀਂ ਆਇਆ ਹਿਆ ਤੇ ਸੰਸਾਰ ਕੀ ਹੈ ਸੰਸਾਰ ਹਕਮ ਦਾ ਰੂਪ ਹੈ ਹਕਮ ਨਹੀਂ ਹੈ ਸੰਸਾਰ ਕਿਹਨੂੰ ਬਚਣਾ ਦਾ ਸੰਸਾਰ ਕਿਹਨੂੰ ਪੁੱਜਣਾ ਪਊਗਾ ਜੋ ਹੋ ਰਿਹਾ ਉਹਦਾ ਜੋ ਵਰਤੇ ਸੋ ਤੇਰਾ ਜੋ ਵਰਤੇ ਅੱਖਾਂ ਦੇ ਸਾਹਮਣੇ ਜੋ ਵਰਤ ਰਿਹਾ ਤਾਂ ਅੱਖਾਂ ਦੇ ਸਾਹਮਣੇ ਰੂਪ ਕੀ ਦਾ ਪਾੜੇ ਦਾ ਜੋ ਬੱਤੇ ਤੋਂ ਤੇਰਾ ਰੂਪੋ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਰੂਪੰ ਇਹ ਐਸਾ ਕੋਈ ਬਣਾ ਨਹੀਂ ਸਕਦਾ ਹੱਤ ਸੁੰਦਰਾ ਬਾਰ ਅਰੂਪ ਹੈ ਸਦਾ ਸਿੱਧ ਦਾ ਬੁੱਧ ਦਾ ਸਦਾ ਸਿੱਧ ਦਾ ਬੁੱਧ ਦਾ ਸੋਚੀ ਵਾਲਾ ਸਿੱਧੂ ਦੀ ਸੋਚੀ ਬੁੱਧ ਦਾ ਸਿੱਧ ਦਾ ਸੋਚੀ ਸੋਜੀ ਕਾ ਦੀ ਬੁੰਦੀ ਦੀ ਅਕਲ ਬਿਰਧ ਰੂਪਮ ਬਿਰਧ ਰੂਪਮ ਬਿਰਧ ਦਾ ਬਧਾਉਣਾ ਸੋਜੀ ਨੂੰ ਵਧਾਉਣ ਵਾਲਾ ਬੁੱਧੇ ਅਕਲ ਨੂੰ ਵਧਾਉਣ ਵਾਲਾ ਰੂਪ ਹੈ ਤੇਰਾ ਫਿਰ ਕੀ ਰੂਪ ਹੈ ਗਿਆਨ ਤੂੰ ਸੋਜੀ ਨੂੰ ਅਕਲ ਦੀ ਜੋ ਅਕਲ ਹੈ ਨਾ ਸਾਡੀ ਅਕਲ ਬੁੱਧੀ ਹੈ ਉਹਦੀ ਸੋਜੀ ਨੂੰ ਹੋਰ ਵਧਾਉਣ ਵਾਲਾ ਰੂਪ ਹੈ ਤੇਰਾ ਉਹ ਕੀ ਹੈ ਗਿਆਨ ਹੈ ਫਿਰ ਨਹੀਂ ਜਾਣ ਜਾਈ ਕਛੂਰੋ ਗਿਆਨ ਹੈ ਕੋ ਕਬੀਰ ਮੈਂ ਐਸੋ ਗੁਰ ਪਾਇਓ ਜਾ ਕਾ ਨੋ ਬਵੇਕੋ ਉਹ ਬਵੇਕ ਹੈ ਗੁਰ ਪ੍ਰਸੰਤਾ ਸਭੁਜ ਬੁੱਧੀ ਬੰਦੀ ਬਦੀਰ ਵੇਲ ਬੁੱਧੀ ਹੁੰਦੀ ਬਵੇਕ ਹੁੰਦੀ ਬਮਜਦੀ ਬਵੇਕ ਪਰਮੇਸ਼ਰ ਦੀ ਬੁੱਧ ਬਵੇਕ ਦੀ ਬੁੱਧ ਬਵੇਕ ਬੁੱਧ ਸਤਿ ਕਰਤੇ ਪਾਈ ਜਦੋਂ ਉਹ ਬੁੱਧੀ ਆ ਜਾਂਦੀ ਹੈ ਬਵੇਕ ਬੁੱਧੀ ਫਿਰ ਜਿਹੜੇ ਮੋਤੀ ਮਾਰਗ ਵਿੱਚ ਰੇ ਹੋਏ ਨਾ ਮੋਤੀ ਮਾਰਗ ਵਿੱਚ ਰੰਦਾ ਲਿਖਿਆ ਜਾਏ ਫਿਰ ਇਹਦਾ ਨਹੀਂ ਰੰਦਾ ਖਾਰਾ ਹੋ ਜਾਂਦਾ ਬਵੇਕ ਬੁੱਧੀ ਆਖੇ ਬਵੇਕ ਬੁੱਧੀ ਹੀ ਆਖਾ ਤੀਸਰੀ ਅੱਖ ਜੜੀ ਫਿਰ ਰੰਦਾ ਦਾ ਰਹਿਣਾ ਨਹੀਂ ਕਬੀਰ ਕਹਿ ਰਿਹਾ ਬਵੇਕ ਬੁੱਧੀ ਤੇ ਜਿਹੜੇ ਸਖਰੇ ਰਹੋ ਨਾ ਮਿਤਵਾਰਨਾਂ ਨੂੰ ਕਹਿ ਰਿਹਾ ਮਿਤਵਾਰਨ ਬਵੇਕ ਬੁੱਧੀ ਦੇ ਸਖਰੇ ਹੁੰਦੇ ਨੇ ਜਦੋਂ ਬਵੇਕ ਬੁੱਧੀ ਆਹੀ ਫਿਰ ਫੇਰੋ ਹੋ ਗਰਮ ਖੋ ਜਾਂਦਾ ਫਿਰ ਉਹ ਗੁਰੂ ਹੋ ਜਾਂਦਾ ਗੁਰਮਖ ਫਿਰ ਵਿਦਵਾਨ ਨਹੀਂ ਜਾਏ ਜੋਤ ਬਣਾ ਜਗਦੀਸ਼ ਕੀ ਇਹ ਜਗਦੀਸ਼ ਦੀ ਜੋਤ ਹੈ ਬੇਵਕੁੱਦੀ ਜਗਤ ਉਲੰਘੇ ਜਾਏ ਸੰਸਾਰ ਨੂੰ ਪਤਾ ਹੀ ਨਹੀਂ ਇਸ ਕੀ ਕਰ ਰਹੇ ਕਿ ਅਸੀਂ ਗੁਰਬਾਨੀ ਚ ਕੋਈ ਪਤਾ ਨਹੀਂ ਕਾਇਨਾ ਚੁਬਦੇ ਰੇ ਰੇ ਨੂੰ ਅੱਲਾ ਚੁਬਦੀਆਂ ਨਾ ਗੁਰਬਾਨੀ ਦੀਆਂ ਚੁਬਦੀਆਂ ਰੇ ਕਹਿੰਦਾ ਥੋੜੀ ਹੁੰਦੀ ਆ ਤਾਂ ਥੋੜੀ ਉਹਦੇ ਵਿੱਚ ਪ੍ਰਾਪਤੀ ਚੱਕ ਕੇ ਬਾਹਰ ਸੜਨਾ ਚੁੱਕੇ ਇਹਨਾਂ ਨੇ ਚੁੱਕ ਕੇ ਆ ਜੋ ਬਾਹਰ ਸੜਦੀ ਰਹੇ ਉੱਥੇ ਕੀ ਇਤਿਹਾਸ ਲੈ ਅੱਦੋ ਉਹ ਵਧੀਆ ਲੱਗਦਾ ਗੁਰਬਾਣੀ ਨਹੀਂ ਕੰਗੀ ਲੱਗਦੀ ਲੋਕਾਂ ਨੂੰ ਜਿਹੜੇ ਗੁਰਦਾਰੇ ਉਹ ਕਹਿੰਦੇ ਇਤਿਹਾਸ ਸੁਣਾਓ ਕੋਈ ਸਾਖੀ ਸੁਣਾਓ ਉਹਨਾਂ ਦੇ ਸੁਭਾਅ ਨਾਲ ਸਾਖੀਆਂ ਬੇਲ ਖਾਂਦੀਆਂ ਨੇ ਉਹਨਾਂ ਦੇ ਸੁਭਾਅ ਨਾਲ ਗੁਰਬਾਣੀ ਬੇਲ ਨਹੀਂ ਖਾਂਦੀ ਗੁਰਬਾਨ ਦਾ ਟੈਸਕ ਉਹਨਾਂ ਦੇ ਸੁਭਾਣਾ ਗੁਰਬਾਨੀ ਵੇਲ ਨਹੀਂ ਖਲਦੀ ਜੁਬਦੀਆਂ ਨੇ ਗੱਲਾਂ ਗੁਰਬਾਨੀ ਦੀਆਂ ਸਾਖੀਆਂ ਸੁਭਾਣਾ ਵੇਲ ਖੰਡੀਆਂ ਸਾਖੀਆਂ ਹੈ ਜਿਹਾ ਉਹਨਾਂ ਕਿਤੇ ਕੁਝ ਮਿਲਦਾ ਕਿਤੇ ਕੁਝ ਮਿਲਦਾ ਕਿਤੇ ਕੁਝ ਮਿਲਦਾ ਕਿਤੇ ਕੁਝ ਚਾਹੁੰਦੇ ਹੀ ਨੇ ਸਿੱਖੀ ਨਹੀਂ ਕਹਿੰਦੇ ਕਹੀਦੀ ਸਾਨੂੰ ਸੰਸਾਰ ਚਾਹੀਦਾ ਉਹ ਜਾਣਦੇ ਸੀ ਉਹਨਾਂ ਨੂੰ ਪਤਾ ਸੀ ਕਮਜ਼ੋਰੀ ਦਾ ਉਹਨਾਂ ਨੇ ਇਹ ਜਿਹੇ ਸਾਖੀਆਂ ਬਣਾਈਆਂ ਬੜੀਆਂ ਉਹਨਾਂ ਸਵਾਦ ਲੀਆਂ ਬਣਾਤੀਆਂ ਜਾਵੇਂ ਵਰਤ ਲੋੜ ਨਹੀਂ ਜਾਣ ਜਾਈ ਕਛੂ ਰੇਖ ਕਿਹਦਾ ਹੈ ਇਹ ਜਾਣ ਨਹੀਂ ਜਾ ਸਕਦਾ ਸਨਸਾਰ ਜਾਣੀ ਕੋਸ਼ਿਸ਼ ਕਰਦੇ ਹਾਂ ਸੁਥਾ ਸੰਸਾਰ ਫੇਲ ਹੋ ਰਿਹਾ ਨਹੀਂ ਜਾਣਾ ਜਾ ਸਕਦਾ ਕਹਵਾਸ ਤਾਕੋ ਫਿਰੇ ਕੌਣ ਦੇਖੇ ਕਹੇ ਆ ਤੇਰਾ ਭੇਖ ਹੈ ਕੋਈ ਨਹੀਂ ਜਾਣਦਾ ਕੋਈ ਨਹੀਂ ਜਾਣ ਕੋਈ ਨਹੀਂ ਕਰਨੇ ਲੋਕ ਜਾਣਦੇ ਕਹਾਂ ਉਹ ਤਾਂ ਕਹਿੰਦਾ ਨਾ ਜਾਣਾ ਕਿਸ ਬੇਸਮੈਨ ਨਾਰਾਇਣ ਮਿਲ ਜਾਏ ਜਿਹੜਾ ਕਹਿੰਦਾ ਨਾਰਾਇਣ ਕਿਸੇ ਭੇਖ ਚ ਮਿਲ ਉਹ ਗੁਰਮਤਿ ਦਾ ਖਰਾਬ ਹੈ ਉਹ ਆਦਮੀ ਦੀ ਯੂਨੀ ਕਿੱਥੇ ਬੰਦਦਾ ਫਿਰ ਉਹ ਯੂਨੀ ਕਿੱਥੇ ਬੰਦਦਾ ਉਹਨੂੰ ਤੁਰ ਜੀ ਸੰਸਾਰ ਮੈਂ ਸਭ ਤੋਂ ਮਿਲਿਆ ਢਾਏ ਨਾ ਜਾਣੇ ਕਿਸ ਵਹਿਸਬੇ ਨਾਰਾਇਣ ਬਲ ਜਾਏ ਉਹ ਤਾਂ ਭੇਜ ਚ ਬੰਨ ਲਾ ਗੁਰਮਤੋਂ ਤੇ ਖਿਲਾਫ ਹੈ ਇਹਨਾਂ ਲਈ ਜਿਹੜੀ ਰਵਾਇਣ ਲਈ ਫਿਰਦੇ ਭੇਜ ਚ ਉਹ ਕਹਿੰਦੇ ਭੇਜ ਤੇ ਭਰੇ ਦੋ ਗੱਲਾਂ ਦਾ ਹਾਮਿਲ ਅਸ ਅੱਲਾ ਕਹਾ ਨਾਮ ਤਾਕੋ ਜਿਹੜਾ ਨੇ ਗੁਰਬਾਣੀ ਤੇ ਕਿੱਥੇ ਪਹੁੰਚ ਜਾਣਗੇ ਜਿਨਾ ਗੁਰਬਾਣੀ ਸੁਣਨੇ ਰੋਜ਼ ਆ ਇਹਦੇ ਵਿੱਚ ਇਹ ਤਾਂ ਉਲਟੇ ਰਹਾ ਪਾ ਰਹੀ ਹੈ ਕਹਾ ਨਾਮ تاکੋ ਕਹਾ ਕਹਿ ਕਹਾਵਾ ਕਹਾ ਨਾਮ تاکੋ ਕੀ ਨਾਮ ਆਉਦਾ ਕਹਾ ਦਾ ਤਹੁੰਦਾ ਦਾ ਕੋਈ ਦੱਸੂਗਾ ਆਪਣਾ ਕੀ ਐਡਰੈਸ ਦਾ ਇਹ ਵੀ ਨਹੀਂ ਪਤਾ ਕਿ ਸਾਨੂੰ ਮਿਲਿਆ ਹੋਵੇ ਤਾਂ ਦੱਸੇ ਕਹਾ ਕਹਿ ਬਖਾਨੋ ਕਹਿ ਮੂਨਾ ਹੋਵੇ ਤੁਸੀਂ ਦੱਸੋਗੇ ਕੀ ਕਿਸੇ ਨੂੰ ਬਲਿਆ ਹੀ ਨਹੀਂ ਪੁੱਛਿਆ ਹੀ ਨਹੀਂ ਦੱਸਿਆ ਹੀ ਨਹੀਂ ਉਹਨੇ ਕਾ ਕ ਬਖਾਨੂ ਕਹੇ ਮੋਨਾਵੇ ਜੇ ਕੋਈ ਪੁੱਛੇ ਸਾਥੇ ਮੈਂ ਕੀ ਦੱਸਾਂ ਵੀ ਕਿੱਥੇ ਜਾ ਬਈ ਉਹ ਕਾਹੇ ਬੋਨਾਵੇ ਮੈਰੀ ਦੱਸ ਸਕਦਾ ਹੈ ਯਾ ਮੈਨੂੰ ਪਤਾ ਹੀ ਪੁੱਛਿਆ ਪਤਾ ਹੀ ਨਹੀਂ ਕਿਸੇ ਨੂੰ ਕਿੱਥੇ ਜਾ ਦੱਸੇ ਕੋਈ ਕੀ ਮੈਂ ਵੀ ਨਹੀਂ ਜਾ ਸਕਦਾ ਇਹ ਗੱਲ ਹਾਂਜੀ ਨਾ ਰੋਗੰ ਨਾ ਸੋਗੰ ਨਾ ਮੋਹੰ ਨਾ ਮਤੰ ਨਰ ਇਨਾਂ ਨੇ ਦੱਸਿਆ ਹੈ ਨਾ ਵੀ ਇਹਨਾਂ ਯੋਜਨਾ ਫਲਾਣੇ ਦੇ ਨਾ ਨ ਸੋਗੰ ਨਮੋਹੰ ਨ ਮਤੰ ਨਾ ਰੋਗ ਨ ਸੋਗ ਹੈ ਉਹਨੂੰ ਜੇ ਰੋਗ ਹੈ ਨੀ ਰੋਗ ਦਾ ਸੋਗ ਕਰਨ ਜਾਂਦੇ ਆ ਆਪ ਅਫਸੋਸ ਨਾ ਮੋਹ ਹੈ ਨ ਕੋਈ ਮਾਤਾ ਪਤਾ ਨਾ ਕਰਮੰ ਨ ਭਰਮੰ ਨ ਜਨਮੰ ਨ ਜਾਤੰ ਨਾ ਕੋਈ ਕਰਮ ਨਾ ਕੋਈ ਜਕਸਮ ਦਾ ਕੋਈ ਭਰਮ ਹੈ ਨਾ ਕੋਈ ਜਲਬ ਹੋਇਆ ਹੈ ਨਾ ਕੋਈ ਸਰੀਰ ਹੈ ਸਰੀਰ ਵੀ ਕੋਈ ਨਹੀਂ ਜਲਬ ਜਲਬ ਨਹੀਂ ਹੋਇਆ ਸਰੀਰ ਕਿਥੋਂ ਲ ਹਾਂਜੀ ਅਦਵੈਖੰ ਆਪੇਖੰ ਨਹੀਂ ਕਿਸੇ ਨਾਲ ਹੈ ਕਿਸੇ ਨਾਲ ਬਹਿਰ ਬਰੋਧ ਨਹੀਂ ਹੈ ਨਮੋ ਇੱਕ ਰੂਪੇ ਨਮੋ ਇੱਕ ਰੂਪੇ ਨਮੋ ਇੱਕ ਰੂਪੇ ਨਮੋ ਇੱਕ ਰੂਪੇ ਏ ਗਰੂ ਬਾਲੇ ਤੈਨੂੰ ਨਮਸਕਾਰ ਹੈ ਹੈ ਸੱਚ ਸਰੂਪ ਸਤ ਸਰੂਪ ਤੈਨੂੰ ਨਮਸਕਾਰ ਹੈ ਸੱਚੇ ਕੋ ਦਰਾ ਇੱਕ ਰੂਪ ਹੈ ਬੰਦਾ ਸਤਿ ਰੂਪ ਹੈ ਸਤਿ ਸਰੂਪ ਹੈ ਤੂੰ ਆਦ ਸੱਚ ਹੈ ਸੱਚ ਹੁੰਦਾ ਕਿ ਸੱਚ ਦੋਸਦਾ ਹੀ ਨਹੀਂ ਨਮੋਇਕ ਰੂਪੇ ਨਮੋਇਕ ਰੂਪੇ ਇੱਕ ਕੋ ਰੂਪ ਹੈ ਤੇਰਾ ਦੂਜਾ ਰੂਪ ਹੁੰਦਾ ਹੀ ਨਹੀਂ ਦੂਜਾ ਰੂਪ ਆਇਆ ਜੈ ਪ੍ਰੇਂਗਪਰਾ ਪਰਮ ਪ੍ਰਗਿਆ ਪ੍ਰਕਾਸੀ ਪ੍ਰੇਂਗਪਰਾ ਪਰਮ ਪ੍ਰਗਿਆ ਪਰਕਾਸ਼ੀ ਪਰ ਪ੍ਰਗਿਆ ਉਹਦਾ ਜਿਹੜੀ ਬਵੇਕ ਬਵੇਕ ਬੁੱਧੀ ਕਹ ਲੋ ਤੁਸੀਂ ਤਤ ਗਿਆਨ ਕਰ ਲੋ ਅਸਲ ਚ ਬ੍ਰह्म ਵਿਦਿਆ ਕਰਦੇ ਪ੍ਰਗਿਆ ਇਹ ਬ੍ਰह्म ਵਿਦਿਆ ਕਹਿੰਦੇ ਅੰਦਰ ਬ੍ਰह्म ਵਿਦਿਆ ਦਾ ਪ੍ਰਕਾਸ਼ ਕਰਨ ਵਾਲਾ ਪ੍ਰਗਿਆ ਦਾ ਪ੍ਰਕਾਸ਼ ਕਰਨ ਵਾਲਾ ਪ੍ਰਗਿਆ ਦਾ ਪ੍ਰਕਾਸ਼ ਕਰਨ ਵਾਲਾ ਅਸ਼ੇਦੰ ਅਸ਼ੈ ਆਦ ਅਦਵੈ ਅਬਨਾਸ਼ੀ ਅਸ਼ੇਦੰ ਤੈਨੂੰ ਕੋਈ ਸ਼ੇਦ ਨਹੀਂ ਕਰ ਸਕਦਾ ਤਰਕ ਕੋਈ ਐਸਾ ਨਹੀਂ ਜਿਹੜਾ ਤੇਰੇ ਤੇ ਲਾਗੂ ਹੋਵੇ। ਮੈਂ ਸੱਚ ਤੇ ਕੀ ਹੈ ਅਬਨਾਸ਼ੀ। ਆਦ ਹੈ ਤੂੰ ਸਭ ਦਾ, ਬੁੱਢਾ ਸਭ ਦਾ, ਸਭ ਕੁਝ ਤੇਰੇ ਤੋਂ ਪਹਿਲਾਂ ਹੈ, ਗਿਆਤ ਨਾ ਜਿਹ ਨਾ ਜਾਤੰ ਨਾ ਰੰਗੇ। ਨਾ ਜਾਤ ਹੈ ਕੋਈ ਨਾ ਪਾਤ ਹੈ ਧਰੂਪ ਹੈ ਨਾ ਰੰਗ ਇਹ ਤੋਂ ਪਰੇ ਏ ਤੂੰ ਸਭ ਨਮੋ ਆਦ ਅਪੰਗੇ ਨਮੋ ਆਦ ਅਪੰਗੇ ਨਮੋ ਆਦ ਅਪੰਗੇ ਨਮੋ ਆਦ ਅਪੰਗੇ ਹੈ ਆਦ ਅਪੰਗੇ ਤੈਨੂੰ ਖੁਸ਼ਕਾਰ ਹੈ ਹੈ ਆਦ ਅਪੰਗੇ ਅਪੰਗੇ ਹੈ ਤੈਨੂੰ ਕੋਈ ਥੋੜ ਨਹੀਂ ਸਕਦਾ ਤੇਰੀ ਬਿਰਤੀ ਬਗਦੀ ਨਹੀਂ ਹੁੰਦੀ ਤੇਰੀ ਸਮਾਧੀ ਨਹੀਂ ਟੁੱਟਦੀ ਤੇਰੀ ਅਡੋਲਤਾ ਨਹੀਂ ਟੁੱਟਦੀ ਅਡੋਲਤਾ ਨਹੀਂ ਟੁੱਟਦੀ ਭੰਗ ਨਹੀਂ ਹੁੰਦੀ ਅਡੋਲਤਾ ਬਸ ਵੀ ਹੁੰਦੀ ਤੇਰੀ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਉਪਾਏ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਉਪਾਏ ਕਿਤੇ ਕ੍ਰਿਸ਼ਨ ਬਣ ਕੇ ਕੀੜੇ ਕਰੋੜਾਂ ਪੈਦਾ ਕੀਤੇ ਨੇ ਕ੍ਰਿਸ਼ਨ ਬਣ ਕੇ ਕੀੜੇ ਕਰੋੜਾਂ ਪੈਦਾ ਕੀਤੇ ਨੇ ਉਹ ਸਾਰੇ ਗੜੇ ਫਿਰ ਮਿੱਟੀ ਬਣਾਏ ਉਹ ਸਾਰੇ ਗੜੇ ਘੜੇ ਫਿਰ ਆ ਫਿਰ ਸਰੀਰ ਦਿੱਤਾ ਉਹਨਾਂ ਨੂੰ ਫਿਰ ਬਣਾਏ ਫਿਰ ਬਣਾਏ ਇਹ ਕੰਮ ਕਰਦਾ ਹੀ ਰਹਿੰਦਾ ਤੂੰ ਇਹ ਉਦਾ ਹੀ ਰਹਿੰਦਾ ਅਗਾਦੇ ਅਪੈ ਆਦ ਅਦਵਾ ਅਵਨਾਸ਼ੀ ਅਗਾਦੇ ਅਗਾਰ ਬੋਧ ਬੁੱਧੀ ਤੋਂ ਪਰੇ ਹੈ ਜਿਹੜਾ ਅਗਾਦ ਕਹਿੰਦੇ ਕੋਈ ਬੁੱਧੀ ਐਸੀ ਨਹੀਂ ਜਿਹੜੀ ਤੈਨੂੰ ਸਮਝ ਲਵੇ ਅਰਧਾ ਜਾਲ ਲਾ ਲਵੇ ਅਰਧਾ ਜਾਲ ਲਾ ਆਦ ਅਵਨਾਸ਼ੀ ਆਦ ਹੈ ਅਦਵਾ ਹੈ ਅਵਨਾਸ਼ੀ ਹੈ ਅਵਨਾਸ਼ ਹੈ ਪਰੇੰਪਰ ਪਰਮ ਪੂਰਨ ਪ੍ਰਕਾਸ਼ੀ ਪਰੇੰਪਰ ਪਰੇ ਤੋਂ ਪਰੇ ਨੂੰ ਕਿੰਨੇ ਦੂਰਾ ਕੋਈ ਨਹੀਂ ਦੱਸਦਾ ਕਿਹੜਾ ਗਿਆਨ ਪਰੇ ਤੋਂ ਪਰੇ ਪਿਆ ਤੇਰੀ ਬੁੱਧੀ ਪਰੇ ਤੋਂ ਪਰੇ ਪਰੇ ਤੋਂ ਪਰੇ ਫੇਲ ਤੂੰ ਜਿੰਨਾ ਵਰਜੀ ਕੋਈ ਗਿਆਨ ਹਾਸਲ ਕਰ ਲਵੇ ਉਹ ਤੋਂ ਵੀ ਗਾਂ ਫੇਲ ਤੂੰ ਪ੍ਰੇਮ ਪਰਾ ਪੂਰਨ ਪ੍ਰਕਾਸ਼ੀ ਪਰਮ ਪੂਰਨ ਪ੍ਰਕਾਸ਼ੀ ਪ੍ਰਕਾਸ਼ ਕਰ ਦੇਣ ਵਾਲੇ ਜਿੰਨਾ ਪ੍ਰਕਾਸ਼ ਨੂੰ ਚਾਹੀਦਾ ਨਾ ਉਹਨਾਂ ਪ੍ਰਕਾਸ਼ ਮਿਲ ਜਾਂਦਾ ਜਿੰਨਾ ਪ੍ਰਕਾਸ਼ ਦੀ ਲੋੜ ਹੈ ਗਿਆਨ ਦੀ ਲੋੜ ਹੈ ਤੈਨੂੰ ਮਿਲ ਜਾਂਦਾ ਹੋਰ ਕੋਈ ਘਰ ਨਹੀਂ ਦੱਸਦੇ ਫਿਰ ਤੂੰ ਮੈਂ ਹੋਰ ਕੋਈ ਘਰ ਦੀ ਹੋਰ ਕਿਸੇ ਤਰ੍ਹਾਂ ਦੀ ਲੋੜ ਹੈ ਨਾ ਨਾ ਤੇਰੇ ਘਰੋਂ ਸਭ ਕੁਝ ਉੱਥੇ ਹੀ ਮਿਲ ਜਾਂਦਾ ਸਭ ਕੁਝ ਹਾਂਜੀ ਨਾ ਆਦਨ ਨਾ ਵਿਆਦਨ ਆਗਾਦਨ ਸਰੂਪੇ ਨਾ ਆਦ ਹੈ ਕੋਈ ਨਾ ਓਗੜਾਂ ਦੇ ਵਿੱਚ ਤਾਂ ਹੀ ਓਗੜ ਹੋਊ ਆਗਾਦਨ ਸਰੂਪੇ ਆਗਾਦ ਸਰੂਪ ਆਗਾਦ ਸਰੂਪ ਬੁੱਧੀ ਸਰੂਪ ਤਾਂ ਹੈ ਤੇਰਾ ਐਨੀ ਐ ਤੂੰ ਕੋਈ ਸਹੀ ਦੀ ਐਨਾ ਕੁਝ ਕਹ ਤਾ ਕੋਈ ਕਹਿ ਮੇ ਤਾ ਕੁਛ ਹੈ ਹੀ ਨਹੀਂ ਸਰੂਪ ਹੈ ਤੇਰਾ ਸਵੈਮ ਦਾ ਪਰ ਬੁੱਧੀ ਤੋਂ ਪਰ ਹੈ ਅਗਾਂ ਅਕਲ ਤੋਂ ਪਰ ਦਾ ਸਰੂਪ ਹੈ ਐਸੇ ਜਿਹੜੀ ਮਨੁੱਖੀ ਬੁੱਧੀ ਐਸ ਵੇਲੇ ਦੀ ਹੈ ਇਹ ਤੋਂ ਪਰ ਹੈ ਉਹ ਜਿਹੜਾ ਬੋਲ ਰਿਹਾ ਉਹਦੀ ਬੁੱਧੀ ਤੋਂ ਪਰ ਹੈ ਉਹ ਤਾਂ ਦੇਖ ਕੇ ਦੱਸ ਰਿਹਾ ਨਾ ਜਿਹੜਾ ਬੋਲ ਰਿਹਾ ਉਹ ਤੇ ਪਰੇ ਨਹੀਂ ਆ ਉਸ ਬੁੱਧੀ ਤੇ ਇਹਨਾਂ ਨੂੰ ਦੱਸ ਰਿਹਾ ਉਹਨਾਂ ਦੀ ਬੁੱਧੀ ਤੇ ਪਰੇ ਜਿਨ੍ਹਾਂ ਨੂੰ ਦੱਸ ਰਿਹਾ ਉਹਨਾਂ ਦੀ ਬੁੱਧੀ ਤੋਂ ਭਰੇ ਐ ਜਿਹੜਾ ਦੱਸ ਰਿਹਾ ਉਹਦੀ ਬੁੱਧੀ ਤੋਂ ਭਰੇ ਨਹੀਂ ਹੈ ਕਿ ਉਹਦੇ ਕੋਲ ਤਾਂ ਉਹਦੇ ਉਹਦੀ ਬੁੱਧੀ ਦਿੱਤੀ ਸੋ ਬੋਲਣਾ ਜੋ ਪੇਖੇ ਪਰ ਜਿਨ੍ਹਾਂ ਨੂੰ ਦੱਸ ਰਿਹਾ ਹੈ ਕਹਿ ਰਿਹਾ ਵੀ ਮੈਂ ਜੋ ਕਹਿ ਰਿਹਾ ਠੀਕ ਕਹਿ ਰਿਹਾ ਮਨੁੱਖੀ ਬੁੱਧੀ ਤੋਂ ਭਾਈ ਭਰੇ ਆ ਤੁਹਾਡੇ ਕੋਲ ਮਨੁੱਖੀ ਬੁੱਧੀ ਹੈ ਜੀ ਕੱਲ ਆ ਪ੍ਰਤਾਪ ਆਹ ਅਛਾਇਆ ਬਿਭੂਤੇ ਅਖੰਡਤ ਪ੍ਰਤਾਪ ਜਿਹੜਾ ਤੇਰਾ ਪ੍ਰਤਾਪ ਹੈ ਲੋ ਪ੍ਰਤਾਪ ਹਮ ਦਾ ਤੇਰੀ ਜਿਹੜੀ ਸੋਚ ਹੈ ਸੋਚ ਉਹ ਖੰਡਤ ਨਹੀਂ ਹੋਦਾ ਅਸੀਂ ਸੋਚਾਂ ਕਈ ਸੋਚਦੇ ਆ ਫਿਰ ਢਾਦਨੇ ਬਣਾ ਲੈਂਦੇ ਤੇਰਾ ਕੋਈ ਪਲਾਨ ਹੈ ਜਿਹੜਾ ਉਹਦੇ ਚ ਕੋਈ ਦੁਕਸਦਾ ਹੀ ਨਹੀਂ ਨਾ ਇਸ ਕਰਕੇ ਖੰਡਤ ਨਹੀਂ ਕਰਨ ਦੀ ਲੋੜ ਪੈਂਦੀ ਕੋਈ ਉਹਦੇ ਚ ਗੱਲ ਹੁੰਦੀ ਹੈ ਨਹੀਂ ਗਲਤ ਇਸ ਗੱਲ ਕੇ ਖੰਡਲ ਨਹੀਂ ਕਰ ਸਕਦਾ ਆਦ ਅਛੈ ਬਿ부ਤੇ ਆਦ ਅਛੈ ਬਿ부ਤੇ ਅਛੈ ਆਦ ਹੈ ਤੂੰ ਸਭ ਦਾ ਬੁੱਢਾ ਅਛੈ ਬਿ부ਤੇ ਅਛੈ ਅਛੈ ਕੋਈ ਬਿ부ਤ ਹੈ ਨਾਮ ਤਨ ਹੈ ਨਾਮ ਬਸ ਹੈ ਪਦਾਰਥ ਹੈ ਨਾਮ ਇਹ ਨਹੀਂ ਕਿ ਕੁਛ ਹੈ ਨਹੀਂ ਤਾਂ ਪਦਾਰਥ ਹੈ ਪਰ ਅਛੈ ਵਪੂਤ ਹੈ ਨਾਸਵੰਤ ਨਹੀਂ ਹੈ ਨਾ ਜਨਮੰ ਨਾ ਮਰਨੰ ਨਾ ਬਰਨੰ ਨਾ ਵਿਆਦ ਨਾ ਜਨਮੰ ਨਾ ਬਰਨ ਜਲਬੜ ਤੋਂ ਪਰੇ ਨਾ ਬਰਨੰ ਨਾ ਵਿਆਦ ਹੈ ਨਾ ਬਰਨ ਕੋਈ ਉਹਦਾ ਸਰੀਰ ਹੈ ਕੋਈ ਉਹਦਾ ਵੜ ਚਾਰ ਬੜਨ ਜਿਵੇਂ ਬਣਾਏ ਨੇ ਨਾ ਵਿਆਦ ਹੈ ਨਾ ਕੋਈ ਵਿਆਦ ਹੈ ਆਦ ਬਿਆਦ ਨਾ ਕੋਈ ਉਹਦਾ ਬਦਲਣਾ ਬਦਲਣ ਦੇ ਵਿੱਚ ਦਿੱਤ ਹੋਗਾ ਅਖੰਡੇ ਪ੍ਰਚੰਡੇ ਅਦੰਡੇ ਅਸਾਧੇ ਅਖੰਡ ਹੈ ਤੂੰ ਜੋਤ ਰਗਾਤਾ ਚਲਦੀ ਹੈ ਤੇਰਾ ਜਿਹੜੀ ਵਿੱਤੀ ਖੰਡ ਨਹੀਂ ਹੁੰਦੀ ਅਖੰਡੇ ਪ੍ਰਚੰਡੇ ਪ੍ਰਚੰਡ ਹੈ ਐਡਾ ਪ੍ਰਚੰਡ ਰੋਸ਼ਨੀ ਹੈ ਘਟਦੀ ਹੈ ਤੇਰੇ ਤੇ ਕੋਈ ਕਿਸੇ ਦਾ ਡੱਡਾ ਨਹੀਂ ਹੈ ਤੇਰੇ ਤੇ ਕੋਈ ਹੁਕਮ ਉਤੇ ਨਹੀਂ ਹੈ ਤੇਰੇ ਕੋਈ ਅਸਾਦੇ ਅਸਾਦੇ ਤੇਰੀ ਸਾਧਨਾ ਨਾਲ ਹੀ ਤੇਰੀ ਪ੍ਰਾਪਤੀ ਹੈ ਜੀ ਕੋਈ ਐਸੀ ਸਾਧਨਾ ਨਾਲ ਨਹੀਂ ਕੋਈ ਹੋਰ ਸਾਧਨਾ ਨਾਲ ਨਹੀਂ ਮਨ ਤਾਂ ਸਾਧਨੋਂ ਪੈਂਦਾ ਆਪਣਾ ਮਨ ਆਪਣੇ ਆਪ ਨੂੰ ਸਾਧਨਾ ਬੈਦਦਾ ਕੋਈ ਹੋਰ ਚੀਜ਼ ਸਾਧਦੀ ਕੋਈ ਸਾਧਨਾ ਐਸੀ ਨਹੀਂ ਹੈ ਤੇ ਤੈਨੂੰ ਪ੍ਰਾਪਤ ਕਰਨ ਵਾਲੀ ਨਾ ਨੇਹੰ ਨਾ ਗੇਹੰ ਸਨੇਹੰ ਨਾਲ ਸਾਥੇ ਨਾ ਨਹੀਂ ਹੰਗ ਨਾ ਗਿਆ ਹਮ ਸਨੇਹਨ ਨਾਲ ਸਾਥੇ ਸਨੇਹਨ ਨਾਲ ਸਾਥੇ ਨਾ ਕੋ ਤੇਰਾ ਸਾਥੀ ਹੈ ਨਾ ਕੋ ਦੇ ਬਹੁਤੀ ਸੈਂਸ ਵਿੱਚ ਆਉਂਦਾ ਨਾ ਕੋਈ ਘਰ ਹੈ ਉਹ ਡੰਡੇ ਅ ਮੰਡੇ ਪ੍ਰਚੰਡੇ ਪਰਮਾਥੇ ਉਹ ਡੰਡੇ ਪ੍ਰਚੰਡੇ ਅ ਮੰਡੇ ਤੂੰ ਸਗੋਂ ਸਾਰਿਆਂ ਤੇ ਹਕੂਮਤ ਕਰੂ ਵਾਲਾ ਤੇਰੀ ਹਕੂਮਤ ਆ ਸਗੋਂ ਸਾਰਿਆਂ ਤੇ ਤੇਰੇ ਦੇ ਘੇੜੇ ਹਕੂਮਤ ਤੇ ਤੂੰ ਪ੍ਰਚੰਡ ਹੈ ਸਾਰਿਆਂ ਨੂੰ ਤੇਜ ਹੈ ਤੇਰਾ ਗਿਆਨ ਸਭ ਤੋਂ ਤੇਰਾ ਸਰੂਪ ਜਿਹੜਾ ਹੈਗਾ ਅ ਰੋਬ ਇਕਲੋ ਤੇਰਾ ਰੋਬ ਹੈ ਸਾਰਿਆਂ ਤੇ ਕਿਸੇ ਤੇ ਤੇਰਾ ਰੋਬ ਨਹੀਂ ਤੇਰੇ ਬਾਣੇ ਸਾਰੇ ਦੇ ਕਿਸੇ ਤੇ ਤੇਰਾ ਕੋਈ ਜੋਰ ਨਹੀਂ ਚੱਲਦਾ ਨਾ ਜਾਤੇ ਨਾ ਪਾਤੇ ਨਾ ਛਤਰੇ ਨਾ ਮਿੱਤਰੇ ਨਾ ਕੋ ਜਾਤਾ ਨਾ ਪਾਤਾ ਨਾ ਕੋ ਸਤਰੂ ਅਨ ਮਿੱਤਰ ਮਿੱਤਰ ਵੀ ਨਹੀਂ ਕੋਈ ਸਤਰੂ ਵੀ ਨਹੀਂ ਸਾਰੇ ਆਪਣੇ ਨੇ ਨਾ ਕੋ ਜਾਤਾ ਨਾ ਪਾਤਾ ਤੇ ਸਤਰੂ ਅਨ ਮਿੱਤਰ ਸੁਪੂਤੇ ਭੁਵਿਖੇ ਭਵਾਨੇ ਅਛਤਰੇ ਸੁਪੂਤੇ ਭਵਾਨੇ ਭੁਵਿਖੇ ਤੇਰੇ ਗੁਣਾ ਤਿੰਨਾਂ ਕਾਲਾਂ ਚ ਰਹਿੰਦੇ ਨੇ ਚੌਥੇ ਚਾਰਾਂ ਕਾਲਾਂ ਚ ਰਹਿੰਦੇ ਨੇ ਸੁਝੂ ਮਝ ਨਹੀਂ ਹਮੇਸ਼ਾ ਇਹ ਕਹਿੰਦਾ ਤੇਰੇ ਫਣਿਆ ਰਹੇ ਤੇ ਐ ਨਹੀਂ ਹੈਗਾ ਵੀ ਕਿਸੇ ਜੁਗ ਚ ਤੇਰੇ ਕੋਲੇ ਘਟ ਜਾਣ ਵਜ ਜਾਣ ਤੇਰੇ ਦੇ ਕੋਈ ਅਸਦੀ ਹਮੇਸ਼ਾ ਇਹ ਕਹਿੰਦੇ ਤੇਰੇ ਹਮੇਸ਼ਾ ਇੱਕੋ ਇਹ ਸਾਰੇ ਲਗਾਤਾਰ ਇਸ ਰੂਪ ਤੇਰਾ ਬਣਿਆ ਰਹਿੰਦਾ ਇਹਦੇ ਕੋਈ ਘਾਟਵਾਦ ਨਹੀਂ ਹੁੰਦੀ ਬਾਦ ਘਾਟਾ ਨਹੀਂ ਹੁੰਦਾ ਇਸ ਰੂਪ ਦੇ ਵਿੱਚ ਨਾਰਾਇਣ ਨ ਨਾ ਤੂੰ ਰਾਜਾ ਕੋਈ ਨਾ ਰੰਕੰ ਨ ਰੂਪ ਨਾ ਨੂਗ੍ਰੀਵਾ ਨ ਤੇਰਾ ਕੋ ਰੂਪ ਨਾ ਰੇਖੰ ਨਾ ਉਹਦੇ ਚ ਕੋਈ ਰੂਪ ਚਿੱਤਰ ਬਣਾਇਆ ਜਾ ਸਕਦਾ ਰੇਖਾ ਖਿੱਚੀ ਜਾ ਸਕਦੀ ਹੈ ਨਾ ਕੋਈ ਨਿਸ਼ਾਨੀਆਂ ਤੇਰੀ ਇਹ ਜੀ ਹੋਵੇ ਇਥੇ ਦੀ ਨਾ ਗਿਆ ਪੈਣੇ ਸਈ ਉਹਦੀ ਨਾ ਤੇਰੇ ਅੰਦਰ ਕੋਈ ਲੋਭ ਹੈ ਨਾ ਤੇਰੇ ਅੰਦਰ ਕੋਈ ਚੇਤਾ ਚੋਭ ਹੈ ਅਪੂਤੰ ਅਪੇਖੰ ਅਪੂਤੰ ਤੂੰ ਅਪੂਤੰ ਅਬੂਦ ਪੂਰਬ ਉਹਦਾ ਜਿਹਦਾ ਕੋਈ ਆਦ ਹੈ ਲੋਰੀ ਪੂਤ ਉਹ ਨਾ ਪਹਿਲਾਂ ਹੋ ਚੁੱਕਿਆ ਉਹ ਤੋਂ ਪਹਿਲਾਂ ਕੋਈ ਵੀ ਨਹੀਂ ਸੀ ਤੂੰ ਸਭ ਤੋਂ ਅਬੂਤ ਨਾ ਸ਼ਤਰੰਗ ਨਾ ਮਤਰੰਗ ਨਾ ਨੇਹੰਗ ਨਾ ਗਹਿੰ ਨਾ ਸ਼ਤਰੰਗ ਨਾ ਮਤਰੰਗ ਨਾ ਨੇਹੰਗ ਨਾ ਗਹਿੰ ਸਦਾਇਵੰ ਸਦਾ ਸਰਵ ਸਰਵਤਰ ਸੁਨੇਹੰ ਸਦਾ ਹੀ ਬਗ ਸਦਾ ਤੂੰ ਸਦਾ ਸਦਾ ਹੀ ਹੈ ਹਮੇਸ਼ਾ ਹਮੇਸ਼ਾ ਰਹਿਣਾ ਸਰਬ ਸਰਵਤਰ ਦੇ ਵਿੱਚ ਹੈ ਸਰਬ ਦੇ ਵਿੱਚ ਹਾਜ਼ਰ ਹੈ ਸਾਰਿਆਂ ਦੇ ਅੰਦਰ ਹੈ ਸਰਵਤਰ ਹੈ ਉਹਨਾਂ ਨੂੰ ਕੁਝ ਦੇਣ ਵਾਸਤੇ ਹੈ ਉਹਨਾਂ ਦੀ ਮਦਦ ਕਰਨ ਵਾਸਤੇ ਹੈ ਸਾਰਿਆਂ ਦੀਵਾਂ ਨੂੰ ਦੀ ਰੱਖਿਆ ਕਰਨ ਵਾਸਤੇ ਮਦਦ ਕਰਨ ਵਾਸਤੇ ਉਹਦੇ ਨਾਲ ਨਾ ਕਾਮੰਗ ਨ ਕਰੋਗੰਗ ਨ ਲੋਭੰਗ ਨ ਮੋਹੰ ਨ ਤੇਰੇ ਅੰਦਰ ਨਾ ਕੋਈ ਕਰੋਧ ਹੈ ਨਾ ਲੋਭ ਨਾ ਮੋਹ ਹੈ ਕੁਝ ਵੀ ਨਹੀਂ ਆ ਜੋਨੀ ਅਛਾ ਆਦ ਅਦਾਇਵੰ ਅਜੋਨੀ ਤੂੰ ਸਦਾ ਹੀ ਅਜੋਦੀ ਰਹੇ ਨਾ ਆ ਤੋ ਲੈ ਕੇ ਅਜੋਦੀ ਅਜੋਹੰ ਅਜੋਹੰ ਕੋਈ ਤੇਰੇ ਉੱਤੇ ਕਿਸੇ ਦੀ ਐਨੀ ਜੋੜ ਨਹੀਂ ਰਹੇ ਹ ਕੋਈ ਤੇਰੇ ਤੇ ਕੋਈ ਜਿਵੇਂ ਕਿਸੇ ਤੇ ਕੋਈ ਭਾਰ ਕਰਨ ਦੀ ਇੱਛਾ ਰੱਖਦਾ ਹੋਵੇ ਜੋ ਨਾ ਸਕੇ ਜਮ ਕਾਲ ਤੇਰੇ ਤੱਕ ਨਹੀਂ ਕਿਸੇ ਵਖਤ ਖੋਲਾ ਨਾ ਜਨਮਨ ਨ ਮਰਨਨ ਵਰਨਨ ਨ ਬਿਆਦ ਕਿਸੇ ਦੀ ਕਿਸੇ ਦੀ ਨਿਗਾਹ ਨਹੀਂ ਹੈ ਤੇਰੇ ਤੇ ਕਿਸੇ ਦੀ ਦੇਖ ਰਹੀ ਹੈ ਕੰਮ ਕਰਦ ਨਾ ਜਨਮਨ ਨ ਮਰਨਨ ਨ ਵਰਨਨ ਨ ਜਨਮ ਤੋਂ ਪਰੇ ਆ ਨਾ ਰੋਗਨ ਨ ਸੋਗਨ ਆ ਭੈ ਨਿਰ ਨਾ ਰੋਗਾਉਨਾ ਸੋਗੰ ਆਪਾ ਨਿਰ ਵਿਖਾ ਦੂੰ ਆਪਾ ਦੇਰ ਮੁਖਾਦਮ ਬਖਾਦ ਨਹੀਂ ਹੈ ਤੇਰੇ ਚ ਬਖਾਦ ਹੁੰਦਾ ਮੈਂ ਝਗੜਾ ਵਧਾਈ ਜਾਂਦਾ ਬਖਾਦ ਕਰਨਾ ਝਗੜਾ ਨਹੀਂ ਵਧਾ ਰਿਹਾ ਝਗੜੇ ਨੂੰ ਨਿਪਟਾਉਣ ਵਾਲਾ ਤੂੰ ਝਗੜਾ ਬਣਾਉਣ ਵਾਲਾ ਨਹੀਂ ਝਗੜੇ ਖਤਮ ਕਰਨ ਵਾਲਾ ਆਛੇਦੰ ਅਪੇਦੰ ਅਕਰਮੰ ਅਕਾਲੰ ਆਛੇਦੰਗਾ ਪੇਦੰ ਕਰਮੰ ਅਕਾਲੰ ਆਛੇਦਾ ਪੇਤੋ ਰਹਤੈ ਅਕਰਮਾ ਕਰਮ ਤੋਂ ਰਹਤਾਂ ਕਾਲਾਂ ਕਾਲ ਤੋਂ ਰਹਤਾਂ ਕਾਲ ਨਹੀਂ ਹੈ ਤੇਰਾ ਤੇਰੇ ਉੱਤੇ ਕੋਈ ਕਾਲ ਸਮੇਂ ਦਾ ਅਸਰ ਨਹੀਂ ਹੈ ਸਮੇਂ ਦਾ ਵੀ ਅਸਰ ਨਹੀਂ ਕੋਈ ਤੇਰੇ ਤੇ ਜੋਤ ਉੱਤੇ ਸਮੇਂ ਦਾ ਅਸਰ ਹੁੰਦਾ ਹੀ ਨਹੀਂ ਹੈ ਜੋਤ ਉੱਤੇ ਸਮੇਂ ਦਾ ਅਸਰ ਨਹੀਂ ਹੁੰਦਾ ਅਖੰਡੰ ਅਪੰਡੰ ਪ੍ਰਚੰਡੰ ਅਪਾਲੰ ਅਖੰਡਾ ਖੰਡਾ ਕਰ ਸਕਦਾ ਤੂੰ ਕੋਈ ਤੇਲੂ ਅਪੰਡੰ ਸਾਜ ਨੂੰ ਕੌਣ ਖੰਡਨ ਕਰ ਦੂਗਾ ਗੁਰਬਾਣੀ ਤੇ ਕੋਈ ਉਂਗਲੀ ਠਾਲਦਾ ਨਹੀਂ ਜਰ ਤ ਤਾਂ ਕਰੇ ਰਾਜੇ ਕੋ ਝੂਠ ਹੋਵੇ ਖੱਡਣਾ ਨਾ ਖੱਡਣਾ ਪਰ ਆਪਣ ਢੰਗ ਆਪਣਾ ਨਾ ਤੇਰੀ ਕੋਈ ਪੜ ਪੜ ਸਕਦਾ ਤੈਨੂੰ ਪੜ ਵੀ ਕੋਈ ਬੁਰਾਈ ਨਹੀਂ ਸਕਦਾ ਨਾ ਬੁਰਾਈ ਹੋਣੀ ਕੋਈ ਪੱਡੇ ਕੌਣ ਕਰੂਗੇ ਤੇ ਹੈ ਤੇਰੀ ਕੋਈ ਬਾਲਣਾ ਨਹੀਂ ਕਰਦਾ ਕੋਈ ਰਖਸ਼ਕ ਹੋਵੇ ਤੇਰਾ ਉੱਤੇ ਵੀ ਤੇਰਾ ਕੋਈ ਬਚਾਉਣ ਵਾਲਾ ਹੋਵੇ ਇਹ ਵੀ ਨਹੀਂ ਹੈ ਨਾ ਤਾਤੰ ਨਾ ਮਾਤੰ ਨਾ ਜਾਤੰ ਨਾ ਕਾਇੰ ਕਿਤਾ ਤੋਂ ਕੋਈ ਨਹੀਂ ਦਵਾਂ ਨਾ ਪਿਓ ਹੈ ਨਾ ਜਾਤੰ ਨਾ ਕਾਇੰ ਨਾ ਜਾ ਨਾ ਕੋ ਯਾਤ ਹੈ ਸਰੀਰ ਹੈ ਨਾ ਕਾਇਆ ਕਾਇਆ ਵੀ ਨਹੀਂ ਹੈ ਤੋ ਨਾ ਨੇਹੰ ਨਾ ਗਹਿਨ ਕਾਇਆ ਕੀ ਹੁੰਦੀ ਹੈ ਕਾਇਆ ਜਦੋਂ ਜਿਹੜੀ ਕਾਇਆ ਹੁੰਦੀ ਹੈ ਨਾ ਆਏ ਸਰੀਰ ਵਿੱਚ ਬਾਹਿਆ ਦੇ ਸਰੀਰ ਤੇ ਬਣੌਣ ਵਾਲੀ ਜਿਹੜੀ ਅੰਦਰਲਾ ਸਰੀਰ ਦਾ ਕਾਇਆ ਉਦੋਂ ਪੈਦਾ ਹੁੰਦੀ ਹੈ ਜਦੋਂ ਆਹ ਸਰੀਰ ਹੁੰਦਾ ਉਹ ਕਾਇਆ ਕਰਕੇ ਇਹ ਅਧਰੈ ਜਾਂਦਾ ਓਹਦੀ ਕਾਇਆ ਰਹਦੀ ਓਹੀ ਰਲਦੀ ਹੈ ਸਰੀਰ ਦੇ ਵਿੱਚ ਮਿੱਟੀ ਦੇ ਉਹ ਜਿਹੜਾ ਮਨ ਕੰਡਿਆ ਨਾ ਕਾਇਆ ਰੂਪ ਹੈ ਮਰੂ ਇਹ ਸ੍ਰੀ ਚਰਲਿਆ ਉਹ ਸਾਨੂੰ ਕਾਇਆ ਕਹਿੰਦੇ ਨੇ ਉਹ ਦਿਖਾਇਆ ਕਿ ਦੌਲੀ ਜ ਕਾਇਆ ਤਾਂ ਤਾਂ ਉਹ ਰਹਿ ਜੀ ਸਰੀਰ ਤੁਹਾਨੂੰ ਹੋਵੇ ਇਹ ਸਰੀਰ ਲੈਣਾ ਹੈ ਜੀ ਉਹ ਤਾਂ ਕਾਇਆ ਵਿੱਚ ਰਹਿੰਦੀ ਨਾ ਨਿਹੰਗ ਨ ਗਹਿੰਗ ਭਰਮੰਗ ਨ ਭਾਇੰ ਨਾ ਨੇ ਹੈ ਨਗੇ ਨਾ ਪਰਮਾ ਨ ਭਾਇੰ ਨਾ ਭਾਇਆ ਕੋਈ ਮਰਮਰ ਜਿੱਤੇ ਪਰਬਉ ਪੈ ਨਾਲ ਹੋ ਜੇ ਆ ਗਿਆ ਪੈ ਨਾਲ ਹੀ ਆ ਜਾਣੀ ਨਾ ਰੂਪੰ ਨਾ ਊਪੰ ਨਾ ਕਾਇੰਨ ਕਰਮੰ ਨਾ ਰੂਪ ਹੈ ਕੋਈ ਨਾ ਤੂੰ ਕੋਈ ਰਾਜਾ ਹੀ ਹੈ ਕੋਈ ਵੀ ਰਾਜਾ ਹੀ ਕੋਈ ਹਕੂਮਤ ਨਹੀਂ ਕਰਦਾ ਇਸ ਤਰੀਕੇ ਨਾਲ ਨਾ ਰਾਜੇ ਕਰਦੇ ਨੇ ਐ ਜਾਨੀ ਵਿਸ਼ਨੂੰ ਬਣਾਇਆ ਇਹਨਾਂ ਨੇ ਵਿਸ਼ਨੂੰ ਬਣਾਇਆ ਹੈ ਐਸਾ ਨਹੀਂ ਕੋਈ ਕੋਈ ਰਾਜਾ ਨਹੀਂ ਹੈ ਨਾ ਕਾਇੰਗ ਨਾ ਕਰਮੰ ਨਾ ਕੋਈ ਕਾਇਆ ਸਰੀਰ ਹੈ ਤੇਰਾ ਚਲੋ ਕਾਇਆ ਉਹ ਦੂਆ ਸਰੀਰ ਵੀ ਹੁੰਦਾ ਹੈ ਨਾ ਇਹਨਾਂ ਦਾ ਜਿਵੇਂ ਦੇਵਤਿਆਂ ਦੇ ਸਰੀਰ ਕਹਿੰਦੇ ਨੇ ਹੁੰਦਾ ਦੇਵ ਲੋਕ ਵਾਲੇ ਉਹ ਕਾਇਆ ਉਹ ਵੀ ਰਹੀ ਦੇ ਕਾਇਆ ਨਾ ਕਰਮੰ ਨਾ ਕੋਈ ਕਰਮ ਨਾ ਤਰਾਸੰਗ ਨਾ ਪ੍ਰਾਸੰਗ ਨਾ ਭੇਦੰਗ ਨਾ ਪਰਮੰ ਨਾ ਤਰਾਸ ਤੈਨੂੰ ਕੋਈ ਤਰਾਸ ਚਿੰਤਾ ਹੁੰਦੀ ਹੈ ਨਾ ਪ੍ਰਾਸੰਗ ਨਾ ਪ੍ਰਾਸ ਨਾ ਪ੍ਰੀਰਪ ਕਰਨ ਦੀ ਲੋੜ ਹੈ ਤੈਨੂੰ ਨਾ ਭੇਦੰਗ ਨ ਭਰਮੰ ਨ ਤੈਨੂੰ ਕੋ ਭੇਦ ਸਕਦਾ ਨਾ ਕੋ ਭਰਮ ਸਦਾਵੰਗ ਕਾਇਆ ਹੋਊਗੀ ਤਾਂ ਉਹਨੂੰ ਕੋਈ ਕਰਨਾ ਪਊਗਾ ਪ੍ਰਿਸ਼ਰਮ ਕਰਨਾ ਪਊਗਾ ਪ੍ਰਿਸ਼ਰਮ ਕਰਨਾ ਪਊਗਾ ਸਦਾਵੰਗ ਸਦਾ ਸਿੱਧ ਬ੍ਰਿੱਧੰ ਸਰੂਪੇ ਸਦਾਵੰਗ ਸਦਾ ਅਸੰਤ ਬ੍ਰਿੱਧੰ ਸਰੂਪੇ ਕੀ ਹੈ ਸਦਾਇ ਤੂ ਬੁੱਧੀ ਰੂਪ ਪ੍ਰਚੰਡ ਕਰਨ ਵਾਲ ਸਦਾਇਮ ਰੁਕੀਆ ਦੀ ਬੁੱਧੀ ਰੂਜੀਵਾ ਦੀ ਬੁੱਧੀ ਰੂ ਰੋਸ਼ਨ ਕਰਨ ਵਾਲਾ ਸਿੱਧ ਸਿੱਧ ਹੁੰਦਾ ਸੋਜੀ ਬ੍ਰੁੱਧਮ ਵਾਦਾ ਕਰਨਾ ਸੋਜੀ ਚ ਸਰੂਪ ਹੈ ਤੂੰ ਇਹਨਾਂ ਦਾ ਗਿਆਨ ਨਾ ਸੰਸਾਰੀ ਜੀਵ ਜਿੱਡੇ ਵੀ ਹੈਗੇ ਸਾਰਿਆਂ ਨੂੰ ਜਿਹ ਵਾਦਾ ਕਰਨ ਵਾਲਾ ਹੀ ਹੋਵੇ ਸ਼ ਨਮੋ ਇੱਕ ਰੂਪੇ ਨਮੋ ਇੱਕ ਰੂਪੇ ਨਮੋ ਇੱਕ ਰੂਪੇ ਤੋ ਇੱਕ ਰੂਪੇ ਰੂਪੇ ਤੇਰੁਲ ਬਸ਼ਕਾਰ ਹੈ ਹੈ ਇੱਕ ਰੂਪੇ करुरु घोषकार है निरुक्तं प्रवाह आद अनुक्तं परतापे द्रक्तं प्रवाह प्रवाह तेरा ऐसा है को रोका नहीं जा सकता जेकेनु कोई चीज धवे तो को रोक नहीं सकदा जो तू को तू तुक करदा उन को रोक नहीं सकदा निरुक्त प्रवाह प्रवाह ऐसा है रुकदा नहीं प्रवाह निरुक्त प्रवाह आ अनुक्तं ਤੇਰੀ ਜੋਤ ਆ ਨਾ ਜੋਤ ਤੇਰੀ ਜੋਤ ਆ ਜੇ ਕਿਸੇ ਨੂੰ ਗਿਆਨ ਦੇਣਾ ਦੇਣਾ ਉਹਨੇ ਕੀ ਹੈ ਵਸਤੂ ਦਾ ਦੇੜੀ ਨਹੀਂ ਕੋਈ ਤੇਰੀ ਪ੍ਰਵਾਹ ਹੈ ਉਹ ਕਿਸ ਬੁਰੇ ਕੁਛ ਭਰਮ ਆ ਕੋਈ ਚੀਜ਼ ਰੋਕ ਨਹੀਂ ਸਕਦੀ ਕੋਈ ਐਸਾ ਚੀਜ਼ ਨਹੀਂ ਬਣੀ ਉਹਨੂੰ ਰੋਕ ਲਵੇ ਆਦ ਅਨੁਕੰ ਪ੍ਰਤਾਪੇ ਅਨੁਕੰ ਪ੍ਰਤਾਪੇ ਪ੍ਰਤਾਪ ਤੇ ਰਗੀ ਅਨੁਕਤੀ ਹੈ ਯੁਕਤੀ ਉਕਤੀ ਉਹਦੀ ਅੰਦਰ ਕੋਈ ਗਲਤੀ ਨਹੀਂ ਹੋ ਸਕਦੀ ਤੇਤੋ ਗਲਤੀ ਨਹੀਂ ਹੋ ਸਕਦੀ ਕੋਈ ਤੇਤੋ ਤੇ ਗਲਤੀ ਤੋ ਕੋਈ ਗਲਤ ਕੰਮ ਨਹੀਂ ਕਰਾ ਸਕਦਾ ਨਾ ਭੁੱਲੇ ਕਿਸਾ ਭੁਲਾਇਆ ਭੁਲਣੀ ਹੋ ਸਕਦੀ ਤੇਤੋ ਕੋਈ ਉੱਥੇ ਭੁੱਲ ਹੈ ਹੀ ਨਹੀਂ ਕੋਈ ਤਾਂ ਦੇਵ ਵੀ ਕਹਿੰਦਾ ਖਤਾਈ ਖਤਾ ਹੋਈ ਨਹੀਂ ਸਕਦੀ ਕੋਈ ਖੋ ਕੋਈ ਹੈ ਨਹੀਂ ਖਤਾ ਕੋਈ ਹੈ ਨਹੀਂ ਤਰਸ ਹੈ ਨਹੀਂ ਉੱਥੇ ਚਿੰਤਾ ਹੈ ਨਹੀਂ ਜ਼ਵਾਲ ਹੈ ਨਹੀਂ ਜ਼ਵਾਲ ਦੀ ਚਿੰਤਾ ਹੁੰਦੀ ਹੈ ਥੱਲੇ ਸੀਰ ਥੱਲੇ ਹੋ ਜਾਣੀ ਅਯੁਕਤੰ ਅਛੈ ਆਦ ਅਵਿਖਤੇ ਅਥਾਪੇ ਅਯੁਕਤੰ ਅਛੈ ਅਛੈ ਆਦ ਅਵਿਖਤੇ ਅਥਾਪੇ ਆਦ ਅਵਿਖਤੇ ਅਥਾਪੇ ਤੋਂ ਆਦ ਤੋ ਲੈ ਕੇ ਜਿਹੜੇ ਅਥਾਪੇ ਥੱਪ ਜਿਹੜੇ ਅਥਪੇ ਨੇ ਜਿਹੜੇ ਨਹੀਂ ਟਿਕੇ ਉਹਨਾਂ ਨੂੰ ਟਿਕਾਉਂਦਾ ਰਹਿੰਦੇ ਵਿਪੁਕਤੰ ਅਛੈ ਆਦ ਅਛੈ ਸਰੂਪੇ ਵਿਪੁਕਤੰ ਅਛੈ ਆਦ ਅਛਾਏ ਸਰੂਪ ਹੈ ਆਦ ਅਛਾਏ ਸਰੂਪ ਹੈ ਆਦ ਸਰੂਪ ਹੈ ਅਛਾਏ ਸਰੂਪ ਹੈ ਤੂੰ ਵਿਪੁਕਤਨ ਨਮੋਏਕ ਰੂਪੇ ਨਮੋਏਕ ਰੂਪੇ ਨਮੋਏਕ